₹1550 एएम पे ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਜਿਲ੍ਹਾ 11:05 ਹੋਏ ਨੇ 8 ਫਰਵਰੀ ਦਾ ਦਿਨ ਹੈ ਵਰਾ 2017 ਦਾ ਬੁੱਧਵਾਰ ਹੈ 26 ਮਾਘ ਨਾਨਕਸਹਿਬਤ 548 ਨਿਗਾਹ ਹਰਦਿਕ ਸਮਾਗਮ ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ ਗੱਲਾਂ ਬਾਤਾਂ ਜੀ ਸੰਗੀਤ ਸੁਰਖ ਦੇ ਮਸਲੇ ਤੇ ਗੱਲਬਾਤ ਹੋਏਗੀ ਪਹਿਲੇ ਹਿੱਸੇ ਦੇ ਵਿੱਚ ਕੋਸ਼ਿਸ਼ ਕਰ ਰਹੇ ਪੰਜਾਬ ਦੇ ਵਿੱਚੋਂ ਲੱਖਾ ਸੁਧਾਨਾ ਇੱਕ ਮੁੰਡਾ ਨਾਉ ਉਸੀਂ ਜਾਣਦੇ ਹਾਂ ਜਿਹਦੇ ਤੇ ਬਹੁਤ ਵੱਡਾ ਹਮਲਾ ਹੋਇਆ ਸੀ ਜਿਸਨੇ ਵੀਡੀਓ ਪਾਈ ਹੈ ਜਿਹੜੀ ਕਿ ਭਾਈ ਰੂਪੇ ਦੇ ਇੱਕ ਸੰਘਰਸ਼ ਜਿਹੜੀ 150 ਕਲਾ ਜ਼ਮੀਨ ਦਾ ਰੌਲਾ ਹੈ ਉਹਦੇ ਵਿੱਚ ਇੱਕ ਗੁਰਸਿੱਖ ਬੰਦੇ ਨੂੰ ਥਾਣੇ ਦੇ ਵਿੱਚ ਜਾਂ ਕਿਤੇ ਹੋਰ ਉਹ ਦੱਸੇਗਾ ਨੰਗਾ ਕਰਕੇ ਉਸ ਇੱਕ ਵੀਡੀਓ ਬਣਾਈ ਹੈ ਤੇ ਉਹ ਮੈਂ ਵੀਡੀਓ ਫੇਸਬੁੱਕ ਤੇ ਪਾਈ ਹੈ ਉਸ ਦੀ ਗੱਲਬਾਤ ਇਸ ਨੌਜਵਾਨ ਮੁੰਡੇ ਤੋਂ ਕਰਾਂਗੇ ਜਿਹੜਾ ਪਿਛਲੇ ਦਿਨੀਆਂ ਦੀਆਂ ਵੀਡੀਓ ਬਹੁਤ ਆਈਆਂ ਉਹਨੇ ਆਪਣੀ ਜ਼ਿੰਦਗੀ ਦੇ ਬਾਰੇ ਦੱਸਿਆ ਕਿ ਸਾਡੀ ਜ਼ਿੰਦਗੀ ਕੀ ਹੈ ਸਾਡੇ ਤੇ ਹਮਲਾ ਕੀ ਹੈ ਤੇ ਸਾਡਾ ਆਖਰ ਗੱਲ ਕਿੱਥੋਂ ਸਾਡੀ ਸ਼ੁਰੂਆਤ ਹੁੰਦੀ ਹੈ ਬਹੁਤ ਵਿੱਭ ਕੇ ਗੱਲ ਕਰਦਾ ਮੁੰਡਾ ਤੇ ਉਸ ਦੀ ਉਹਦੇ ਨਾਲ ਗੱਲਬਾਤ ਹੋਏਗੀ 12 ਤੋਂ 1 ਵਜੇ ਤੱਕ ਤੁਹਾਨੂੰ ਖਬਰਾਂ ਸੁਣਾਵਾਂਗਾ 1 ਤੋਂ 2 ਵਜੇ ਤੱਕ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਅੱਜ ਕਹਾਣੀ ਬਾਈ ਜੱਗੀ ਕੁੱਸੇ ਦੀ 18442471550 ਉਹ ਇਹ ਨੰਬਰ ਰਹੇਗਾ krpiaradio.com ਤੇ ਤੁਸੀਂ ਸਿੱਧਾ ਪ੍ਰਸਾਰਣ ਸੁਣ ਰਹੇ ਹੋ ਤੇ ਨਾਲ ਹੀ ਐਪ ਡਾਊਨਲੋਡ ਕਰ ਸਕਦੇ ਹੋ ਤੇ ਖਬਰਨਾਮਾ ਤੇ YouTube ਦੇ ਇਸ ਚੈਨਲ ਤੇ ਲੋਕ ਸਾਥ ਤੁਹਾਡੇ ਲਈ ਪਾਈ ਜਾਂਦੀ ਹੈ ਧੰਨਵਾਦ ਹੈ ਇਟਲੀ ਦੇ ਵਿੱਚ ਰਹਿੰਦੇ ਨੌਜਵਾਨ ਮੁੰਡਿਆਂ ਦਾ ਸਾਰੇ ਹਾਈਡਰਟ ਕਰਕੇ ਉਹ ਪ੍ਰੋਗਰਾਮ ਪਾਉਂਦੇ ਆ ਨਹੀਂ ਤਾਂ ਇੱਕ ਮਹੀਨਾ ਪ੍ਰੋਗਰਾਮ ਤੁਹਾਡੇ ਲਈ ਲੋਡ ਨਹੀਂ ਸੀ ਹੋਣਾ ਕਿਉਂਕਿ ਪਵਨਜਵਨ ਦਾ ਪੰਜਾਬ ਹੈ ਤੇ ਆਕੇ ਮਾਰਚ ਦੇ ਪਹਿਲੇ ਹਫਤੇ ਫੇਰ ਤੁਹਾਡੇ ਲਈ ਲੋਕ ਸੱਤ ਦੇ YouTube ਚੈਨਲ ਤੇ ਦੁਆਰਾ ਪ੍ਰੋਗਰਾਮ ਪਾਇ ਜਾਣਗੇ ਖਬਰਨਾਮਾ ਤੇ ਵੀ ਨਾਲ-ਨਾਲ ਪਾਏ ਜਾਂਦੇ ਆ 18442471550 ਤੇ ਨਿਮੀਡਾਲਾ ਜੀ ਦਾ ਨੰਬਰ 60444064@info@krpiaradio.com ਇਹ ਜਿਹੜਾ ਉਹਨਾਂ ਦਾ ਈਮੇਲ ਹੈ ਹਰਜੀਤ ਸਿੰਘਲ ਦਾ ਫੇਸਬੁੱਕ ਦਾ ਪੇਜ ਤੇ ਅਕਾਊਂਟ ਜਿੱਥੇ ਤੁਸੀਂ ਕੋਈ ਨਾ ਕੋਈ ਸੁਖ ਸੁਨੇਹਾ ਕੱਲਦੇ ਹੋ ਤੇ ਨਾਲ ਹੀ harjit.gsrpioreadio.com ਇਸ ਪੰਜਾਬੇ ਪਾਣੀ ਆਇਆ ਧਰਤ ਪਈ ਸ਼ਰਮਾਏ ਰਸ ਤਰੇ ਔਰ ਸਭ ਥਾਈਂ ਸਭ ਨਗਰ ਹਰਿਆਏ ਇਸ ਪੰਜਾਬੇ ਅੱਖਰ ਵਲਿਆ ਇਸ ਪੰਜਾਬੇ ਅੱਖਰ ਫਲਿਆ ਧੰਨ ਧੰਨ ਪਾਠ ਕਰਾਏ ਇਸ ਪੰਜਾਬ ਦੇ ਥੋਰਾ ਦੇ ਫੁੱਲ ਗੀਤਾਂ ਦੇ ਵਿੱਚ ਗਾਏ ਇਸ ਪੰਜਾਬੋਂ ਹੀਰਾ ਉਠੀਆਂ ਵਾਰਸ ਬਣਤ ਬਣਾਏ ਡੰਡੀਆਂ ਥੱਲੇ ਬੈਠਾ ਬੱਬਾ ਖਾਕ ਪਿਆ ਵੜਿਆਏ ਬੰਨਿਆਂ ਉੱਤੇ ਨੱਚਦੇ ਫਿਰਦੇ ਮੋਹਰਾ ਦੇ ਹਮਸਾਏ ਸੋਨ ਸੁਨਹਿਰੀ ਕਣਕਾਂ ਉਤੇ ਮੀਕਾ ਤੋਂ ਵਰਾਏ ਸੋਨ ਮਹੀਨੇ ਦੀਆਂ ਲੱਗੀਆਂ ਅੱਸੂ ਕਾਜਰ ਚਾਏ ਲਹਿੰਗਿਆਂ ਦੇ ਵਿੱਚ ਹਾਣਦੀਆਂ ਨੇ ਥੱਬਾ ਥੱਬਾ ਬਲ ਪਾਏ ਚੜਦੇ ਪਾਸੇ ਰੋਹੀ ਦੇ ਕੋਈ 나ਗ ਲਪੇਟਾ ਖਾਏ ਅੰਡੇ ਧਰਤੇ ਉੱਡ ਗਏ ਤਲੀਅਰ ਅੰਡੇ ਧੜਕੇ ਉੱਡ ਕੇ ਤਿਹੇੜ ਕਿਹੜਾ ਮਗਰੇ ਜਾਏ ਇਸ ਪੰਜਾਬੋਂ ਨਾਨਕ ਤੁਰਿਆ ਤੁਰਿਆ ਚੋਂ ਦਸਾਏ ਇਸ ਪੰਜਾਬੇ ਗੋਬਿੰਦ ਕੇ ਸਿੱਖ ਗੱਤ ਕਾ ਖੇਡਣਾ ਇਸ ਪੰਜਾਬ ਨੂੰ ਰੱਜ ਕੇ ਲੁੱਟਿਆ ਹਾਥੀ ਘੋੜੇ ਤਾਏ ਜਿਹੜੇ ਇਸ ਟੁਕੜੇ ਹੋ ਗਏ ਮੁੜ ਨਾ ਫੇਰਥ ਆਏ ਜਿਹੜੇ ਇਸ ਦੇ ਟੁਕੜੇ ਹੋ ਗਏ ਮੁੜ ਨਾ ਥੇ ਹਰਮਨਜੀਤ ਰਾਣੀ ਤਤ ਹੂੰ 11 ਕੇ 11 ਮਿੰਟ ਹੋਏ ਨੇ ਜੀ ਜਿੱਥੇ ਵੀ ਤੁਸੀਂ ਬੈਠੇ ਹੋ ਨਿਗਾ ਹਾਰਦਿਕ ਸਵਾਗਤ ਹੈ ਤੁਹਾਡਾ ਪੰਜਾਬ ਦੇ ਪਾਣੀਆਂ ਦੇ ਵਿੱਚ ਅਜਿਹੀ ਇੱਕ ਉਸਤਰਤ ਤੇ ਉਹਦੇ ਪਾਣੀਆਂ ਦੇ ਵਿੱਚ ਕਿਤੇ ਇੱਕ کشਸ਼ ਹੈ ਉਸ ਤਰਤੀ ਤੋਂ ਕਦੇ ਵੀ ਅਣਖ ਨਹੀਂ ਮੁਕਦੀ ਬਹੁਤ ਕੁਝ ਹੋਇਆ ਬਹੁਤ ਕੁਝ ਛੱਲਿਆ ਪੰਜਾਬ ਨੇ ਅੱਜ ਨਹੀਂ ਲਾ 16 ਮਿਸਤਾਰ ਮਿਠਾਰ ਮੀ ਉਦੋਂ ਪਹਿਲਾਂ ਵੀ ਦਰਾਨੀਆਂ ਅਬਦਾਲੀਆਂ ਇਰਾਨੀਆਂ ਨੇ ਗੇੜੇ ਕੱਢੇ ਜਾਜੀ ਕਰਦਾ ਤਮੂਰ ਲੰਗੋਣੀ ਘੋੜਿਆਂ ਤੇ ਚੜ ਕੇ ਧਗੜ ਧਗੜ ਧਗੜ ਕਰਦੇ ਧਰਤੀ ਦੇ ਉੱਪਰ ਦੀ ਲੰਗ ਕੇ ਜਾ ਦਿੱਲੀ ਵਰਦੇ ਜਸੋਮਨਾਥ ਦੇ ਮੰਦਰਾਂ ਨੂੰ ਪੈਂਦੇ ਅਬਦਾਲੀ ਅਰਗੇ ਤੇ ਬਨ ਕੇ ਸਮਾਨ ਸਣੇ ਅਜ਼ਮਤ ਨੂੰ ਲੈ ਆਉਂਦੇ ਤੇ ਪੰਜਾਬ ਦੇ ਯੋਧੇ ਜਾ ਕੇ ਚਨਾਅ ਦੇ ਕੰਢਿਆਂ ਤੋਂ ਮੁਸ਼ਕਾਂ ਬਨ ਬਨ ਕੇ ਤੁੰਬੇ ਖਾਣਿਆਂ ਨੂੰ ਪੁੱਠੀਆਂ ਮੁਸ਼ਕਾਂ ਬੰਨ ਬੰਨ ਕੇ ਲੈ ਕੇ ਆਉਂਦੇ ਆ ਚਲੋ ਵਾਪਸ ਕਿੱਥੇ ਨੂੰ ਚੱਲਿਓ ਤੁਸੀਂ ਉਸੇ ਪੰਜਾਬ ਨੇ ਜਿਨੇ ਸਾਰਾ ਕੁਝ ਇਹ ਕਹਿੰਦੇ ਆ ਇਤਿਹਾਸਕਾਰ ਵੀ ਕਹਿੰਦੇ ਆ ਕਿ ਉਸ ਧਰਤ ਦੇ ਵਿੱਚ ਉਸ ਜਗ੍ਹਾ ਦੇ ਵਿੱਚ ਪਤਾ ਹੀ ਨਹੀਂ ਕੀ ਹੈ ਕਿ ਜਿੱਥੇ ਸਭ ਕੁਝ ਚੰਗਾ ਹੋਈ ਜਾਵੇ ਉਹ ਨਾਂ ਗਹਿਣ ਪਰ ਜਦ ਉਸ ਪੰਜਾਬ ਦੇ ਵਿੱਚ ਕੋਈ ਧੱਕਾ ਹੁੰਦਾ ਹੈ ਪ੍ਰੋਫੈਸਰ ਮੋਹਨ ਸਿੰਘ ਨੂੰ ਸਰਦ ਪ੍ਰੋਫੈਸਰ ਪੂਨ ਸਿੰਘ ਨੂੰ ਮੋਢਿਆਂ ਤੇ ਡਾਂਗਾ ਲੈ ਕੇ ਜਰਮਾਣੇ ਨੂੰ ਕਹਿੰਦੇ ਨੇ ਖੜਕੇ ਗੱਲ ਸੁਣ ਓਏ ਇੱਧਰ ਨੂੰ ਤੁਰਿਆ ਜਾਣਾ ਮਰਜੀ ਆ ਭੂਆ ਦੇ ਪਿੰਡ ਤੁਰਿਆ ਫਿਰਦਾ ਤੂੰ ਕਦੇ ਵੀ ਚੱਲਦੇ ਨਹੀਂ ਤਵਾ ਰੀਖਾਂ ਗਵਾਹ ਨੇ ਕਿ ਜਦ ਸਭ ਕੁਝ ਚੰਗਾ ਹੋਵੇ ਤਾਂ ਲੰਮੀਆਂ ਤਾਣ ਕੇ ਸੌਂਦੇ ਐ ਤੇ ਜਦ ਵੀ ਖੜਕਾ ਹੋ ਜਾਏ ਤਾਂ ਉਹ ਅੱਖ ਦੇ ਵਿੱਚ ਅੱਖ ਜੁਰਮਾਨੇ ਦੀ ਪਾ ਕੇ ਜਿੱਡਾ ਮਰਜੀ ਵੱਡਾ ਜੁਰਮਾਨਾ ਹੋਵੇ ਢਾੜ ਲਈ ਫਿਰਦਾ ਹੋਵੇ ਉਹਦੇ ਮੂਹਰੇ ਖੜ ਕੇ ਗੱਲ ਕਰਦੇ ਆ ਤੂੰ ਕਰਦਾ ਕੀ ਹੈ ਚਾਹੇ ਬਾਹਰ ਲਿਆਨੇ ਚਾਹੇ ਆਪਣੇ ਹਨ ਜਦ ਵੀ ਪੰਜਾਬ ਦੇ ਨਾਲ ੱਤਕਾ ਕੀਤਾ ਪੰਜਾਬ ਦੀ ਅਣਖ ਕਦੇ ਨਹੀਂ ਮੁੱਕੀ ਬਹੁਤ ਵਾਰ ਤੁਸੀਂ ਬਹੁਤ ਵੀਡੀਓ ਦੇ ਵਿੱਚ ਇੱਕ ਨੌਜਵਾਨ ਮੁੰਡੇ ਦਾ ਬਠਿੰਡੇ ਜ਼ਿਲ੍ਹੇ ਦੇ ਦਾ ਲਖੇ ਸਿਧਾਣੇ ਦਾ ਨਾਂ ਬਹੁਤ ਸੁਣਿਆ ਉਸ ਲਈ ਮਿੱਤਰ ਪਿਆਰੇ ਫੂਲ ਅੱਗੇ ਮੁੰਡੇ ਇੱਥੇ ਰਹਿੰਦੇ ਆ ਵਾ ਵ ਚਿਰ ਹੋ ਗਿਆ ਮੈਂ ਨੰਬਰ ਲਿਆ ਸੀ ਵੀ ਯਾਰ ਮੈਂ ਗੱਲ ਕਰਨੀ ਹੈ ਜਦ ਇੱਕ ਵਾਰ ਲਖੇ ਨੇ ਆਪਣੀ ਸੰਘਰਸ਼ ਪੋਸਟ ਪਾਈ ਸੀ ਕਿ ਸਾਡੀ ਜ਼ਿੰਦਗੀ ਕੀ ਜਿਹੜੇ ਜਾਂ ਤਾਂ ਸੰਘਰਸ਼ ਸ਼ੁਰੂ ਹੀ ਨਹੀਂ ਕਰਦੇ ਜਾਂ ਤੋੜ ਸਿਰੇ ਤੱਕ ਨਹੀਂ ਕਰਦੇ ਨਾਲੇ ਹਾਰ ਉਸ ਵੇਲੇ ਇਨਸਾਨ ਦੀ ਹੁੰਦੀ ਆ ਜਿਸ ਵੇਲੇ ਅਸੀਂ ਹਾਰ ਮੰਨ ਲੈਂਦੇ ਸੋ ਉਸ ਸਮੇਂ ਗੱਲ ਕੀਤੀ ਕੁਦਰਤੀ ਅੱਜ ਸੁਨੇਹਾ ਜਦ ਇੱਕ ਨਵੀਂ ਉਸਨੇ ਵੀਡੀਓ ਪਾਈ ਮੈਂ ਫੇਸਬੁੱਕ ਤੇ ਕੋਸ਼ਿਸ਼ ਕੀਤੀ ਤੇ ਗੱਲ ਲੱਖੇ ਨਾਲ ਹੋ ਗਈ ਲੱਖਾ ਸੁਧਾਣਾ ਮੇਰੇ ਨਾਲ ਹੈ ਹੁਣ ਗੱਲਬਾਤ ਉਸ ਵੀਡੀਓ ਦੇ ਬਾਰੇ ਸੁਣਨੇ ਜਿਹੜੀ ਭਾਈ ਰੂਪੇ ਦੀ 150 ਕਿਲੇ ਜ਼ਮੀਨ ਦੇ ਵਿੱਚ ਸੰਘਰਸ਼ ਕਮੇਟੀ ਦੇ ਇੱਕ ਸਾਫ ਸੂਰਤ ਦਸਤਾਰ ਸਿੱਖ ਨੂੰ ਨੰਗਿਆਂ ਕਰਕੇ ਉਹਦੀ ਵੀਡੀਓ ਬਣਾਈ ਗਈ ਉਹਦੇ ਬਾਰੇ ਲੱਖਾ ਕੀ ਕਹਿੰਦਾ ਭਾਈ ਜੀ ਤੁਹਾਡਾ ਛੋਟੇ ਭਾਈ ਸਵਾਗਤ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੱਛਾ ਇਹਦੇ ਵੀਡੀਓ ਬਾਰੇ ਪਹਿਲੀ ਤੇ ਗੱਲ ਤੁਸੀਂ ਲੋਕ ਸੱਤ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਗੱਲਬਾਤ ਕਰ ਰਹੇ ਹਾਂ ਤੇ ਗੁਰੂ ਕਿਰਪਾ ਨਾਲ ਪ੍ਰੋਗਰਾਮ ਨੂੰ ਸਾਰੇ ਸੁਣਿਆ ਜਾਂਦਾ ਆਸਟ੍ਰੇਲੀਆ ਯੂਰਪ ਦੇ ਵਿੱਚ ਇੱਥੇ ਤੇ ਤੁਹਾਡੀ ਆਵਾਜ਼ ਬਹੁਤ ਦੂਰ ਤੱਕ ਅੱਜ ਪਹੁੰਚਣੀ ਹੈ ਇਸ ਵੀਡੀਓ ਬਾਰੇ ਦੱਸਿਓ ਕਿ ਵੀਡੀਓ ਹੈ ਤਾਂ 2015 ਦੀ ਤੇ ਹੁਣ ਤੁਸੀਂ ਇਹ ਜਿਹੜੀ ਅੱਜ ਆਪਣੀ ਇਹ ਫੇਸਬੁੱਕ ਤੇ ਪਾਈ ਉਹਦੇ ਪਿੱਛੇ ਕਾਰਨ ਕੀ ਹੈ ਕਾਰਨ ਇਹ ਵੀਡੀਓ ਜਿਹੜੀ ਕੱਲ ਹੀ ਲਾਨ ਹੋਈ ਹੈ अच्छा जी ये ना ਜਿਹੜਾ ਧਰਮ ਸਿੰਘ ਦਾ ਫਾਇਰ ਸੀ ਸੁਣ ਲਿਆ ਨਾ ਪਿਛਲੇ ਦਿਨੀ ਜਦੋਂ ਵੋਟਾਂ ਸੀਗੀਆਂ ਕਾਲੀਗੜ੍ਹ ਦੇ ਕੁਝ ਬੰਦੇ ਪੈਸੇ ਵੰਦੇ ਸੀ ਉਹ ਦੇ ਮਤਲਬ ਜਿਹੜੇ ਫਾਇਰ ਸੁਣ ਲਿਆ ਉੱਚੀ ਬੋਲਿਓ ਥੋੜਾ ਜਿਹਾ ਉੱਚੀ ਬੋਲੋ ਥੋੜਾ ਜਿਹਾ ਹਾਂ ਆਉਂਦੀ ਆਵਾਜ਼ ਹੁਣ ਠੀਕ ਆ ਹੁਣ ਠੀਕ ਆ ਹੁਣ ਠੀਕ ਆ ਅੱਛਾ ਜੀ ਇਹਨਾਂ ਨੇ ਪਤਾ ਕੀ ਕੀਤਾ ਨਾ ਪਿਛਲੇ ਦਿਨੀ ਇਹਨਾਂ ਨੇ ਕੁਝ ਬੰਦੇ ਜਿਹੜੇ ਮਲੂਕੇ ਦੇ ਬੰਦੇ ਸੀਗੇ ਖਾਲੀ ਧੰਦੇ ਪੈਸੇ ਬੰਦੇ ਵੀ ਫਾਇਰਪੋਸਟ ਲੱਗੇ ਇਹਨਾਂ ਨੇ ਪਰ ਮੁਕੰਗਰ ਗਏ ਮੈਂ ਉਹਨਾਂ ਕੇ ਰੋਕਿਆ ਵੀ ਐਸੇ ਬੰਦੇ ਨਾ ਤੇ ਦੇ ਵਿੱਚ ਆ ਕੇ ਜਿਹੜਾ ਜ਼ਮੀਦਾਰ ਸਤਨਾਮ ਭਾਏ ਇਹ ਮਲੂਕੇ ਦਾ ਖਾਸ ਮੁਖਾਸ਼ ਉਸ ਬੰਦੇ ਉਹਦੇ ਪੋਤੇ ਨੇ ਕੱਲ ਜਿਹੜੀ ਵੀਡੀਓ ਆ WhatsApp ਗਰੁੱਪਾਂ ਦੇ ਵਿੱਚ ਪਾਤੀ ਹਾਂ ਇਹਨਾਂ ਕੋਲ ਪਹਿਲੇ ਸੀ ਇਹ ਜਰੋ ਜਰੋ ਸਾਨੂੰ ਸਵੇਰੇ ਅੱਜ ਪਤਾ ਲੱਗਿਆ ਇਸ ਗੱਲ ਦਾ ਤਾਂ ਸਭੀ ਇਹਦੇ ਖਾਸ ਜਿਹੜਾ ਉੱਕੇ ਜਿਹੜੀ ਆਵਾਜ਼ ਆਪਣੀ ਬੁਲੰਦ ਕੀਤੀ ਹੈ ਅੱਛਾ ਲਖੇ ਇੱਕ ਕਿ ਇਹ ਭਾਈ ਸ਼੍ਰੋਮਣੀ ਕਮੇਟੀ ਦੀ ਜ਼ਮੀਨ ਹੈ ਉਹਦੇ ਲਈ ਕਿਉਂਕਿ ਸ਼ੇਮੇ ਪਾਸ਼ਾ ਇਸੇ ਮੀਰੀ ਪੀਰੀ ਦੇ ਮਾਲਕ ਰਹੇ ਨੇ ਤੁਹਾਡੇ ਇਸ ਖਿੱਤੇ ਨੂੰ ਮਾਣ ਹੈ ਜੋਦੇ ਜੰਮਦੇ ਆ ਬਠਿੰਡੇ ਦੀ ਧਰਤੀ ਤੇ ਤੇ ਇਹ ਇਸ ਜਗ੍ਹਾ ਤੋਂ ਆ ਕੇ ਉਹਨਾਂ ਦੇ ਚੋਲਿਆਂ ਦੇ ਉਹਨਾਂ ਦੇ ਸ਼ਹਿਰਿਆਂ ਦੇ ਦਰਸ਼ਨ ਇੱਥੋਂ ਸਿੰਘ ਕਰਾ ਕੀਰਤਨ ਦੇ 5-7 ਸਾਲ ਪਹਿਲਾਂ ਇਹ ਜ਼ਮੀਨ ਦਾ ਰੌਲਾ ਕੀ ਦੇ ਵਿੱਚ ਕੀ ਕਿੱਲੇ ਪੈੜੀਆ ਤੇ ਗੁਰਦੁਆਰਾ ਸਾਹਿਬ ਹਨ ਲੰਕਾ ਸ੍ਰੀਨ ਅਰੇਸਟਰ ਉਹਦੇ ਨਾਂ ਉਹ ਜਿਹੜੀ 166 ਕਿੱਲੇ ਕਿਲ੍ਹੇ ਦੇ ਲੋਕਾਂ ਦੀ ਕੋਈ ਦਿੱਤੀ ਹੋਈ ਜ਼ਮੀਨ ਸੀ ਇਹテム ਲੋਕ ਨੇ ਪੁਲਸ ਦੇ ਕਹਿ ਰਹੇ ਹੈ ਇਸ ਰੋਮਨੀ ਕਮੇਟੀ ਤੋਂ ਪਿਛਲੇ 2 ਸਾਲ ਪਹਿਲਾਂ 2015 ਦੇ ਵਿੱਚ ਕੰਮ ਜਾਰਾ ਕਰਤਾ ਸੀ ਸਾਡੀ ਉਹ ਦੋ ਜਗ੍ਹਾ ਦੇ ਮਤਲਬ ਕਿ ਸੀ ਪਿੰਡ ਦੇ ਕਾਫੀ ਟਾਈਮ ਦਾ ਕਹਿ ਰਹੇ ਹੈ ਜਿਹੜਾ ਪਿੰਡ ਫਰਾਹੋ ਪਰ ਬੜੀ ਬੜੀ ਲੋਕਾਂ ਦੇ ਵਰਕੇ ਪੁਰਕੇ ਬਹੁਤ ਨਜਾਇਜ਼ ਸਾਰੇ ਲੋਕਾਂ ਦੇ ਟੈਕਟਰ ਵੀ ਬਹੁਤ ਇਨਰ ਫਾਨੇ ਨਿਕੜਾ ਕੇ ਰੱਖੇ ਅਗਰ ਹੀਰ ਪਿੰਡ ਤੇ ਜਿਹੜੇ ਮੁਕੱਦਮੇ ਉਹ ਦਰਜ ਕੀਤੇ ਸੀ ਇਹਨਾਂ ਨੇ ਉਸ ਉਸ ਸਿੰਘ ਅਸਕਮਿਟੀ ਦਾ ਜਿਹੜਾ ਇਹ ਧਰਮ ਸਿੰਘ ਖਾਲਸਾ ਸੀਗਾ ਜਿਹੜਾ ਇਸ ਮਤਲਬ ਕਿ ਖੇਡ ਦੇ ਵਿੱਚ ਇਸ ਹੜ ਦੇ ਵਿੱਚ ਸਾਡੇ ਨਾਲ ਖੇਡਦਾ ਹੈ ਸਾਡੇ ਨਾਲ ਉਹਨੂੰ ਦਾ ਖੇਡਦਾ ਪਰ ਆਉਂਦਾ ਇਹ ਸਿਰਫ ਉਹਦੇ ਇਹਨਾਂ ਨੇ ਪਾਈ। ਬਾਈ ਜੀ ਉਹਨਾਂ ਦੀ ਫੋਟੋ ਦਿਖਦੀ ਆ ਚਿਹਰਾ ਵਿਖਦਾ ਹੈ ਉਹ ਮੇਰੇ ਖਿਆਲ 40 ਸਾਲ ਤੋਂ ਉੱਪਰ ਦੀ ਉਮਰ ਹੈ ਦਾੜਾ ਪ੍ਰਕਾਸ਼ ਗਿਆ ਕਰਕੇ ਯਾਰ ਪੰਜਾਬ ਦੀ ਇਸ ਧਰਤ ਤੇ ਤੁਹਾਡੇ ਇਸ ਖਿੱਤੇ ਦੇ ਵਿੱਚ ਕੱਲਾ ਲੱਖਾਂ ਸਦਾਣਾ ਨਹੀਂ ਬਹੁਤ ਵੱਡਾ ਏਰੀਆ ਯੋਧਿਆਂ ਦਾ ਇਹ ਖਿਲਾਫ ਬਈ ਲੋਕ ਲੋਕ ਹੈ ਗੱਲ ਨਹੀਂ ਹੈਗੀ ਲੋਕ ਕਹਿੰਦੇ ਅੱਜ ਮੈਨੂੰ ਇਸ ਵੀਡੀਓ ਤੋਂ ਬਾਅਦ 10 ਮੁੰਡਿਆਂ ਦੇ ਫੋਨ ਆ ਗਏ ਹੋਣੇ ਆ ਇਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਬਈ ਸਾਡੇ ਨਾਲ ਵੀ ਫੂਲ ਥਾਣੇ ਦੇ ਵਿੱਚ ਇਹਨਾਂ ਮੁਲਾਜ਼ਮਾਂ ਨੇ ਵੀ ਵੀਡੀਓ ਬਣਾਇਆ ਤੇ ਥਾਣੇ 'ਚ ਕੰਮ ਕਰਦੇ ਨੇ ਉਹ ਕਹਿੰਦੇ ਬਈ ਜੀ ਇਹ ਜਦੋਂ ਵੀ ਕੋਈ ਬੰਦਾ ਫੜ ਲਿਆਉਂਦੇ ਆ ਅੰਦਰ ਹਵਾ ਲਾਚ ਤਾੜ ਕੇ ਅੰਦਰ ਜੰਦਾ ਦਾ ਲੰਬੇ ਥਾਣੇ ਦੇ ਗੇਟ 'ਤੇ ਦੁਨੀਆ ਵੀਡੀਓ ਬਣਾਉਂਦੇ ਨੇ ਸੋ ਇਹ ਜੀ ਗੱਲ ਨਹੀਂ ਹੈਗੀ ਬਾਈ ਉੱਠਣ ਦੇ ਲੋਕ ਤਮੇ ਰਿਆਲਟ ਦੇਵਾਂਗੇ ਇਸ ਗੱਲ ਦਾ ਇਹ ਗੱਲ ਯਾਦ ਰੱਖਿਓ ਕਿਉਂਕਿ ਇਹ ਇਹ ਇਹ ਇਹ ਜਿਹੜੀ ਠੀਕ ਹੈ ਕਿਸੇ ਨਾਲ ਤੁਹਾਡੀ ਹੈ ਹੈ ਤੁਸੀਂ ਪਰਚਾ ਦੇ ਦਿੰਨੇ ਹੋ ਪੁਲਿਸ ਫੜ ਲੈਂਦੀ ਹੈ ਪੁਲਿਸ ਕੁੱਟਦੀ ਹੈ ਮਾਰਦੀ ਹੈ ਅੱਗੇ ਵੀ ਨੰਗਿਆਂ ਕਰਕੇ ਕੁੱਟਦੇ ਰਹੇ ਮਰ ਪਰ ਇਉਂ ਥੋੜਾ ਹੁੰਦਾ ਵੀ ਯਾਰ ਤੁਸੀਂ ਦੁਸ਼ਮਣ ਵੀਡੀਓ ਬਣਾ ਕੇ ਉਹਨੂੰ ਵਾਇਰਲ ਕਰੇ ਇਹ ਕੁੱਟ ਦੀ ਜਿਹੜੀ ਜਿਹੜੀ ਸੱਟ ਹੈ ਉਹ ਤਾਂ ਬੰਦਾ ਚੱਲ ਜਾਂਦਾ ਪਰ ਜਿਹੜੀ ਆ ਚੀਜ਼ ਹੈ ਇਹ ਤਾਂ ਬੰਦੇ ਨੂੰ ਨਿੱਜੀ ਤੌਰ ਤੇ ਉਹਨੂੰ ਰੂਹ ਦੇ ਤੌਰ ਤੇ ਮਾਰ ਦੂਗੀ ਆ ਪਿੰਡ ਛੱਡ ਚੁੱਕਿਆ ਕਿਸੇ ਰਿਸ਼ਤੇਦਾਰੀ ਜਾ ਚੁੱਕਿਆ ਮੈਨੂੰ ਇਹ ਡਰ ਹੈ ਕਿ ਉਹ ਬੰਦਾ ਸੁਸਾਇਸਾਈਡ ਨਾ ਕਰ ਕਿਉਂਕਿ ਦੋ ਦੀਆਂ ਕੁੜੀਆਂ ਨੇ ਨੌਜਵਾਨ ਬਿਓ ਨਾਲੀਆਂ ਉਹਦਾ ਮੁੰਡਾ ਗੱਭਰੂ ਦੇਖੋ ਕਿਵੇਂ ਬਰਬਾਰਤ ਕਰੂਗਾ ਬੰਦਾ ਕਮਾਲ ਹੋ ਗਿਆ ਅੱਛਾ ਨਾਲ ਹੋ ਥੋੜਾ ਥੋੜਾ ਜਿਹਾ ਮੈਂ ਹੋਰ ਫਾਇਦਾ ਲੈਣਾ ਚਾਹੁੰਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਕਿਤੇ ਤੋਂ ਦਾ ਬਿਆਨ ਕੀਤਾ ਕੀਤਾ ਸੀ ਕਿ ਲੱਖਾਂ ਕਹਿੰਦਾ ਕੀ ਹੈ ਅੱਛਾ ਮੈਨੂੰ ਇਹੋ ਦੱਸਿਓ ਕਿ ਤੁਸੀਂ ਕਬੱਡੀ ਖੇਡਦੇ ਤਕੜੇ ਤੁਹਾਡੇ ਨਾਲ ਦੇ ਮੁੰਡੇ ਇੱਥੇ ਸਾਡੇ ਕੋਲ ਨੇ ਚੰਗੇ ਤੁਸੀਂ ਪਲੇਅਰ ਤਕੜੇ ਜਵਾਨ ਮੁੰਡੇ ਇਹ ਰਾਹ ਜਿਹੜਾ ਜਿਹਦੇ ਤੇ ਤੁਹਾਨੂੰ ਇੱਕ ਬਦਮਾਸ਼ੀ ਦਾ ਰਾਹ ਲੋਕ ਕਹਿੰਦੇ ਨੇ ਪਰ ਮੈਨੂੰ ਲੱਗਦੀ ਨਹੀਂ ਬਦਮਾਸ਼ੀ ਜਿਹੜੀ ਆ ਉਹਨਾਂ ਦੇ ਉਹਨਾਂ ਦਾ ਅਣਖਾਂ ਨਾਲ ਕਿਸੇ ਦੀ ਇੱਜ਼ਤਾਂ ਨਾਲ ਨਹੀਂ ਸੰਬੰਧ ਹੁੰਦਾ ਉਹ ਲੋਕਾਂ ਦੇ ਨਾਲ ਨਹੀਂ ਖੜਦੇ ਮੈਂ ਇਹ ਸ਼ਬਦ ਜਿਹੜਾ ਗਲਤ ਹੈ ਤੁਹਾਡੇ ਲਈ ਨਹੀਂ ਇਹ ਠੀਕ ਨਹੀਂ ਜਿਹੜੇ ਰਾਹ ਤੇ ਤੁਸੀਂ ਹੋ ਪੜਦੇ ਪੜਦੇ ਖੇਲਦੇ ਖੇਲਦੇ ਇਹ ਰਾਹ ਜਿਹੜਾ ਜਿੱਧਰ ਨੂੰ ਤੁਸੀਂ ਤੁਰੇ ਫਿਰ ਬਹੁਤ ਵੱਡਾ ਤੁਹਾਡੇ ਤੇ ਹਮਲਾ ਹੋਇਆ ਪੰਜ ਚਾਰ ਮਿੰਟ ਵਾਰੇ ਉਹ ਵੀ ਦੱਸੋ ਇਹ ਗੱਲ ਕਿਵੇਂ ਬਣੀ ਸਾਰੀ ਇਹ ਤਾਂ ਬਈ ਜੀ ਕਾਲ ਪੜਦੇ ਉਮਰੋ ਕੇ ਅਰਿਆਂ ਦੇ ਹੱਥ ਚੜ ਗਏ ਉਹ ਤਾਂ ਮੈਂ ਪਹਿਲਾ ਸਾਰਾ ਇੰਟਰਵਿਊ ਦੇ ਵਿੱਚ ਵੀ ਸਹੀ ਗੱਲ ਆਵਾਜ਼ ਦਿੱਤੀ ਇਹਦੀ ਬੜੀ ਮਾਰੀ ਹੁੰਦੀ ਹੈ ਉਸ ਆਪ ਵਿੱਚ ਅਸੀਂ ਵੀ ਆ ਗਏ ਸਾਨੂੰ ਵੀ ਚੜਦੀ ਫਰੇਸ ਚੜਦੀ ਉਮਰੇ ਨਹੀਂ ਪਤਾ ਹੁੰਦਾ ਬੰਦੇ ਉਹ ਕਿੱਦਾਂ ਜਾ ਰਹੇ ਸੋ ਸਾਨੂੰ ਜਿਵੇਂ ਇਹਨਾਂ ਨੂੰ ਲੋਟ ਲੱਗਿਆ ਉਹਨਾਂ ਵਰਤੀ ਗਏ ਜਦੋਂ ਸਾਨੂੰ ਲੱਗਿਆ ਕਿ ਅਸੀਂ ਗਲਤ ਰਾਹ ਨੂੰ ਛੱਡਣ ਦੀ ਕੋਸ਼ਿਸ਼ ਕੀਤੀ ਉਹਨੋਂ ਵਰ ਜਿਵੇਂ ਆਪ ਵੀ ਦਿਖਾਇਆ ਜਾਂਦਾ ਦੇਖਦੇ ਆ ਇਹਨਾਂ ਬੰਦਿਆਂ ਨੇ ਸਾਨੂੰ ਮੈਨੂੰ ਦੁਆਰੀ ਮੇਦੇ ਬੈਕ ਹੋਇਆ ਮੱਲਾਹਾ ਮਰਵਾਉਣ ਦੀ ਕੋਸ਼ਿਸ਼ ਕੀਤੀ। ਉਹ ਹੌਲੀ ਹੌਲੀ ਗਏ। ਹੁਣ ਕਿਹਰ ਬੈਜ ਦਸ਼ਮਣਾਂ ਦੀ ਇੱਲਿਆ ਕੀ ਬੰਦਾ ਦੇਖ ਕੇ ਵੱਟ ਲਵੇ। ਜਦ ਚੋਣਾ ਤੇ ਤੁਹਾਡੇ ਤੇ ਜਿਹੜਾ ਮਲੂਕਾ ਨਾ ਹੂੰ ਇਹ ਤਾਂ ਤੁਸੀਂ ਐ ਨਾ ਪਗਲਾ ਮਨ ਦੀ ਗੱਲ ਟੱਪ ਚੁੱਕਿਆ ਮੇਰੇ ਕੋਲ ਰਕਾਰ ਪਿਆ ਬੰਦੇ ਦਾ ਸਾਰਾ ਵੀ ਸਾਡੇ ਤਿੰਨ ਥਾਣੇ ਪੈਂਦੇ ਆ ਰਾਂਫਰਾ ਫੂਲ ਤੇ ਭਗਤਾ ਤਾਈ ਦਾ ਨਾ ਥਾਣਿਆਂ ਦੇ ਲੋਕਾਂ ਦੇ ਸਾਡੇ ਹਲਕੇ ਦੇ ਵਿੱਚ 14 ਕਤਲ ਹੋਏ ਨੇ ਇਸਦੇ 50 ਜਿਹਦੇ ਪਿੱਛੇ ਮਲੂਕੇ ਦਾ ਹੱਥ ਹੈ ਸਾਡੇ ਤਾਂ ਲੋਕ ਤਰਾਸਦਾ ਕਰਦੇ ਆ ਦੀਕ ਦੇ ਟਾਈਮ ਵੀ ਕਦੋਂ ਇਹੋ ਮਤਲਬ ਕਿ ਕਰਾ ਜੋ ਕਲੋਸਟ ਕਰਾ ਹੁਗਾ ਪਰ ਲੋਕੋ ਤੇ ਨੂੰ ਪੈਂਦੇ ਵੀ ਨੇ ਤੇ ਪਿੱਛੇ ਅਸੀਂ ਸੁਣਾਈ ਹੋਣਾ ਵੀਰਗੜ ਪਿੰਡ ਬਜ਼ੁਰਗ ਨੇ ਇਹਦਾ ਲੀਡਰ ਆਇਆ ਜਿਹੜਾ ਤੇ 200 ਦਾ ਮੁੰਡਾ ਨਿਕਲੇ ਕਦੇ ਲੋਕਾਂ ਨੇ ਲੀਡਰ ਤੇ ਨਿੱਜੀ ਤੌਰ ਤੇ ਤੁਹਾਨੂੰ ਜਿਹੜੀ ਜਦ ਹੁਣ ਵੋਟਾਂ ਦੇ ਵਿੱਚ ਜਿਹੜਾ ਤੁਹਾਡੇ ਤੇ ਹਮਲਾ ਹੋਇਆ ਸੀ ਉਹਦੇ ਉਹ ਉਹਦੇ ਬਾਰੇ ਵੀ ਲੋਕਾਂ ਨੂੰ ਮਹਾਰਾਜ ਦੱਸੋ ਲੋਕ ਭੁੱਲ ਜਾਂਦੇ ਆ ਉਹ ਕਿਹੜੀ ਇਲੈਕਸ਼ਨ ਸੀ ਉਹ ਦੇ ਵੀ ਤੁਹਾਡੇ ਹਾਂਜੀ ਭਾਈ ਉਹ 15 2013 ਦੀ ਗੱਲ ਹੈ ਉਹਦਾ ਜ਼ਿਲ੍ਹਾ ਪ੍ਰੀਸ਼ਦ ਵਿੱਚ ਚੋਣਾਂ ਦਾ ਦੇ ਕਿਤੇ ਮੈਂ ਕਿਤੇ ਸਬੋਧਨ ਕਰ ਰਿਹਾ ਸੀ ਜਾਂ ਜਲਸੇ ਨੂੰ ਉੱਥੇ ਟੈਕ ਹੋਇਆ ਈ ਮੇਰੇ ਤੇ ਇੱਕ ਮੁੰਡੇ ਦੇ ਨਾਲ ਸਾਥੀ ਦੀ ਮੌਤ ਹੋ ਗਈ ਸੀ ਤਿੰਨ ਮੁੰਡੇ ਸੀ ਉੱਥੇ ਜਿਹੜੇ ਇੰਜਰਡ ਹੋ ਗਏ ਸੀ ਇਸ ਤੋਂ ਪਹਿਲਾਂ ਇੱਕ ਅਟੈਕ ਹੋਇਆ ਮੇਰੇ ਤੇ ਮੈਂ ਪਿੰਡ ਉਹ ਜੰਮ ਚ ਪੈਰਸ ਕਰਦਾ ਕਿ ਉਹ ਮੇਰੇ ਗੋਲੀਆਂ ਮਾਰਦੀਆਂ ਸੀ ਉਹ ਸਾਰਾ ਇਹ ਕਰਨ ਕਰਾਉਣ ਵਾਲਾ ਮਲੂਕੇ ਇਹ ਕੇਸ ਨਹੀਂ ਕਿਸੇ ਤੇ ਅਦਾਲਤ ਚ ਕੋਈ ਕੇਸ ਨਹੀਂ ਚੱਲ ਰਿਹਾ ਇਸ ਤਰ੍ਹਾਂ ਨੌ ਕਿਵੇਂ ਲਿਆ ਜਾ ਸਕਦਾ ਜਦੋਂ ਆਪਣੇ ਕੋਲ ਸਬੂਤ ਜਦੋਂ ਮੈਂ ਬਿਆਨ ਦਸਾ ਰਿਹਾ ਸੀ ਨਾ ਐਸਪੀ ਅਗੇ ਮਲੂਜਾ ਮੇਰੇ ਬਿਆਨ ਲਿਖਦੇ ਆ ਜਦੋਂ ਮੈਂ ਦੱਸ ਦਿੱਤੀਗਾ ਸੱਤ ਦਾ ਕੋਈ ਨਾ ਲਿਆ ਮਸਾ ਮਲੂਕੇ ਦਾ ਹੱਥ ਹੈ ਇਸ ਕੰਮ ਚ ਤੂੰ ਸੱਸੀ ਰੰਗ ਦੱਸਣਾ ਗੱਲ ਹੈ ਗੈਂਗਵਾਰ ਆ ਤੁਹਾਡੀ ਆਪਸੀ ਦੁਸ਼ਮਣੀ ਹੈ ਤਨੂ ਤੇ ਉਹਦੇ ਵਿੱਚ ਤੇ ਮੈਂ ਕੋੜੀਆਂ ਮਾਰ ਗਏ ਤੇਰੇ ਨਾਲ ਤੇ ਨੂੰ ਮਾਰਤਾ ਮਲੂਕੇ ਦਾ ਕੀ ਰੋਲ ਹੈ ਪੁਲਿਸ ਨੇ ਕਿਸੇ ਨੇ ਮੇਰੀ ਬੈਲੀ ਵਿੱਚ ਕੋਈ ਲਿਖਿਆ ਪਸੂਦਾ ਹੂੰ ਤੇ ਪਰ ਹੁਣ ਇਹ ਉਸ ਮਾਰਕ ਦੀ ਗੱਲ ਪੁਲਿਸ ਵਾਲੇ ਮੇਰੇ ਚੰਗੇ ਬਾਰੇ ਕੁਝ ਦੱਸੋ। ਮਾਇਆ ਦਾ ਫੋਟੋ ਕੀ ਗੱਲ ਲੰਗਾ ਵਾਰਾ। ਅੱਜ ਵੀ ਮਤਲਬ ਕਿ ਪੁਲਿਸ ਦੇ ਅੱਖ ਚ ਖੜੀ ਆ ਜਾਂ ਐਸ ਤਰ੍ਹਾਂ ਇਹਦੇ ਮਿਲ ਇਹਦੇ ਡਰਾਈਵਰ ਦਾ ਫੋਨ ਆਇਆ ਮੇਵੇ ਦਾ। ਹਮਮ ਜਿਹੜਾ। ਅੱਛੇ। ਨਾ ਤੂੰ ਆ ਸਾਡੇ ਖਿਲਾਫ ਸਾਡਾ ਨਾਮ ਲੈ ਕੇ ਪਾ ਰਿਹਾ ਸਾਡਾ ਕੀ ਇਹਦੇ ਚ ਕਸੂਰ ਹੈ ਭਾਗਾ ਤੁਹਾਡਾ ਇੱਕ ਪ੍ਰਾਈਵੇਟ ਬੰਦਾ ਆ ਜਿਹੜਾ ਨਗਰ ਕੌਂਸਲ ਦਾ ਪ੍ਰਧਾਨ ਹੈ ਦਾ ਉਹ ਤੁਹਾਡਾ ਥਾਣੇ ਦੇ ਵਿੱਚ ਜਾ ਕੇ ਐਸ.ਟੀ.ਓ ਦੇ ਦਸਤਰ ਵੀਡੀਓ ਬਣਾਉਂਦਾ ਹੈ ਤੁਹਾਡਾ ਹੱਥ ਹੀ ਨਹੀਂ ਹੈਗਾ ਹੋਰ ਕੀ ਦਾ ਕਰੇ ਕੀ ਮਜਾ ਲਾ ਬੰਦਾ ਥਾਣੇ ਦੇ ਵਿੱਚ ਜਾ ਕੇ ਇਹ ਪਰੇ ਵਿਖਮ ਪੰਡਾ ਲਖੇ ਬਹੁਤ ਮੁੰਡੇ ਤਾਂ ਮੋਸਟਲੀ ਜਿਹੜੇ ਚੜ੍ਹਦੀ ਕਲਾ ਚ ਦਨੂ ਚੜ੍ਹਦੀ ਕਲਾ ਕਹਿ ਲੋ ਜਾਂ ਇਹ ਬਿਨਾ ਜਿਗਰਿਆਂ ਤੋਂ ਇਹ ਗੱਲਾਂ ਨਹੀਂ ਹੁੰਦੀਆਂ ਜਿਹੜੇ ਰਾਹ ਪੈ ਗਏ ਕਿਸੇ ਕਾਰਨ ਰਾਹ ਪੈ ਗਏ ਮੁੰਡੇ ਉਹ ਐਸ਼ੋ ਇਸ਼ਰਤ ਦੇ ਵਿੱਚ ਪੈ ਜਾਂਦੇ ਨੇ ਪੈਸਾ ਹੋ ਜਾਂਦਾ ਫੇਮ ਹੋ ਜਾਂਦੀ ਹੈ ਇਹ ਮੁੰਡਾ ਔਖਾ ਪਰ ਜਿਹੜਾ ਹੁਣ ਰਾਹ ਤੁਸੀਂ ਲੋਕ ਪੁਲਾਈ ਦਾ ਚੁਣਿਆ ਮੈਨੂੰ ਪਤਾ ਲੱਗਿਆ ਕਿ ਗਰੀਬ ਲੜਕੀਆਂ ਦੇ ਵਿਆਹ ਲੋਕਾਂ ਦਾ ਏਰੀਆ ਦੇ ਵਿੱਚ ਤੁਹਾਡਾ ਪਿਆਰ ਸਤਕਾਰ ਲੋਕ ਬਹੁਤ ਕਰਨ ਲੱਗੇ ਇਹ ਹੁਣ ਮੈਨੂੰ ਇਹ ਦੂਸਰੇ ਪਾਸਿਓਂ ਤੁਰ ਕੇ ਹੁਣ ਇਹ ਲੋਕ ਭਲਾਈ ਵੱਲ ਨੂੰ ਚੱਲੂ ਕੰਮ ਸਾਰਾ ਦੇਖੋ ਭਾਈ ਇਹ 2 ਮਿੰਟ ਸੁਣੋ ਗੱਲ ਸੁਣਾਣਾ ਸੋਣਾ ਧਿਆਨ ਨਾਲ ਮੈਂ ਜ਼ਿੰਦਗੀ ਦੀ ਕੀਮਤ ਉਹ ਜਾਣਦੇ ਨੇ ਜਿਹੜੇ ਜਾ ਚੁੱਕੇ ਮੌਤ ਦੀ ਬਹਿਲੀ ਤੱਕ ਮੈਂ ਦੋ ਹੀ ਮੌਤ ਨੂੰ ਮੈਨੂੰ ਕਿਸੇ ਬੰਦੇ ਨੇ ਗੱਲ ਸੁਣਾਈ ਸੀ ਉਹ ਕਹਿੰਦਾ ਤੂੰ ਦੂਰ ਦੂਰੇ ਦੇ ਬਾਬਾਂ ਤੋਂ ਪੜ੍ਹਦਾ ਲਿਟਰਚਰ ਪੜ੍ਹਦਾ ਵੀਰ ਦੁਨੀਆਂ ਦੇ ਸਾਇੰਟਿਸਟ ਨੇ ਜਿਹੜੇ ਕੋਈ ਫਿਲਾਸਫਰ ਨੇ ਉਹਨਾਂ ਦੀਆਂ ਉਹ ਸੈਮੀਨਾਰ ਅਟੈਂਡ ਕਰ ਲਾ ਉਹਨਾਂ ਨਾਲ ਮੀਤਰਾ ਕਰ ਲਾ ਉਸ ਤੋਂ ਬੋਰੀ ਕਣਕ ਦੀ ਕਰ ਲਾ ਉਹ ਕਣਕ ਦੀ ਬੋਰੀ ਦਾ ਹਿੱਸਾ ਕੱਢ ਕਰੀਦਾ ਕੱਢ ਕੇ ਦਿਖਾ ਨਹੀਂ ਨਾ ਮਾਤਰਾ ਤੈਨੂੰ ਕਹਿੰਦਾ ਅਰਥਮਾ ਹਿੱਸਾ ਵਿਗਿਆਨ ਨਹੀਂ ਹੋਣਾ ਇਹ ਸਭ ਕੁਝ ਕਰਮ ਦੇ ਦਾਅਵ ਤੇ ਗਿਆਨ ਹੁੰਦਾ ਹੈ ਬਈ ਇੱਕ ਅਨੁਭਵ ਮੈਂ ਕਹਿੰਦਾ ਮੈਨੂੰ ਤੈਨੂੰ ਭਾਵਾ ਉਹ ਕਹਿੰਦਾ ਹੁੰਦਾ ਕੁਦਰਤ ਨੇ ਜਿੰਨਾ ਬੰਦਾ ਤਾਂ ਕੋਈ ਖਾਸ ਕੰਮ ਲੈਣ ਹੁੰਦੇ ਆ ਨਾ ਉਹਨਾਂ ਨੇ ਬੁਸ਼ੇਜ ਗੁਣਾ ਨਾਲ ਨਵਾਜਦੀ ਹੈ ਤੇ ਆਪਣੇ ਦਵਾਈ ਕੁਦਰਤਾਂ ਨੇ ਹੀ ਪਰਿਆ ਆਖਾ ਦੋ ਦਾ ਫਲਸਫਾ ਹੈ ਨੇ ਇੱਧਰ ਬੈਠੇ ਨੇ ਥੋੜੇ ਬਾਹਲੇ ਮੁਲਕਾਂ ਦੇ ਮਾਰ ਦੂ ਬਸ ਯਾਰ ਦੇ ਲਈ ਇੱਧਰ ਵੀ ਆ ਗਿਆ ਮੈਂ 7 ਸਾਲ ਦਾ 80 ਸਾਲ ਦਾ ਇੱਧਰ ਹੋ ਕੇ ਮਰ ਗਿਆ ਫਿਰ ਮੈਂ ਕੀ ਬੈ ਜਿਹੜਾ ਹੋਣ ਲਈ ਰਜਾ ਸਕਦਾ ਜੇ ਤੁਸੀਂ ਬਾਈ ਜੀ ਮੇਰੀ ਗੱਲ ਸੁਣੋ ਤੇ ਇੰਨਾ ਹਾਲਾਤਾਂ ਦੇ ਅਸੀਂ ਪੰਜਾਬ ਨੂੰ ਛੱਡ ਕੇ ਭੈ ਦੇ ਆ ਨਾ ਸਾਡਾ ਸਾਰੇ ਏਸ਼ੀਆ ਵੀ ਜਿੰਮੇਵਰ ਤੋਂ ਪਾਸਾ ਵਕਤੀ ਜਾਂਦੇ ਆ ਆਪਣੀ ਜ਼ਿੰਦਗੀ ਬਾਈ ਜੀ ਇਸੇ ਲੈ ਕੇ ਆ ਕੋਈ ਪਰਵਾਹ ਨਹੀਂ ਮੈਂ ਕੱਲ ਮਰਦਾ ਨਾ ਪਰ ਸੋ ਚਾਹੇ ਮੈਂ ਜਦੋਂ ਮਰਦਾ ਗੱਲ ਦੀ ਪਰਵਾਹ ਨਹੀਂ ਇਹ ਕੌਣ ਦੇ ਖਿਲਾਫ ਫਟਾਟ ਕੇ ਖੜਾ ਵੀ ਅੱਲੇ ਸ਼ੇਰਾ ਰਾਜਨੀਤਿਕ ਬਦਲ ਦੇ ਵਿੱਚੋਂ ਕੁਝ ਪੰਜਾਬ ਦਾ ਪੜਾ ਹੁੰਦਾ ਹਲੇ ਉਹ ਤਾਂ 11 ਮਾਰਚ ਨੂੰ ਪਤਾ ਲੱਗਣਾ ਹੈ ਜੇ ਸਰਕਾਰ ਨਹੀਂ ਆਉਂਦੀ ਅਕਾਲੀ ਦਲ ਦੀ ਇਹਦੇ ਬਾਅਦ ਕਾਂਗਰਸੀ ਜਾਂ ਆਮ ਆਦਮੀ ਪਾਰਟੀ ਆਉਂਦੀ ਕੋਈ ਬਦਲ ਹੋਊਗਾ ਤੁਸੀਂ ਸੋਚਦੇ ਆ ਜਾਂ ਬਦਲ ਲੋਕਾਂ ਨੂੰ ਹੀ ਕਰਨਾ ਪੈਣਾ ਸਰਕਾਰਾਂ ਨੂੰ ਨਹੀਂ ਕਰਨਾ ਨਹੀਂ ਜੀ ਮੈਂ ਦੇਖੋ ਮੈਂ ਇਹ ਕਹਿਣਾ ਕਿ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤੇ ਤਾਂ ਹੌਸਲਾ ਹੈ ਇੱਕੀ ਦਾ ਫਰਕ ਪੈ ਜੇ ਹਰ ਜਿਸ ਪੋਏ ਚੰਦ ਕਰਦਾ ਹੈ ਕਿ ਰੈਗੂਲੇਸ਼ਨ ਆ ਜਾਣਗੀਆਂ ਇਥੇ ਇਨਕਲਾਬ ਕ੍ਰਾਂਤੀਆਂ ਆ ਜਾਣਗੀਆਂ ਸਿਸਟਮ ਬਿਲਕੁਲ ਹੀ ਬਦਲੇ ਜਾਣਾ ਤਾਂ ਇਸ ਲਈ ਅਸੀਂ ਗਲਤ ਫਹਿਮੀ ਚ ਹੂੰ ਦੇਖੋ ਕੱਲੀਆਂ ਸਰਕਾਰਾਂ ਨੇ ਕੁਝ ਨਹੀਂ ਕਰਨਾ ਜਿੰਨਾ ਚਿਰ ਲੋਕ ਨਹੀਂ ਜਾਗਦੇ ਲੋਕ ਨਾਲ ਕੋਆਪਰੇਟ ਨਹੀਂ ਕਰਨਗੇ ਸਾਡਾ ਸਹਿਯੋਗ ਨਹੀਂ ਹੋਊਗਾ ਉਨਾ ਚਿਰ ਪੰਜਾਬ ਨੇ ਇਹ ਨਹੀਂ ਬਚਣਾ ਪਈ ਜੀ ਜਦ ਲੋਕਾਂ ਨੂੰ ਜਾਗਣਾ ਪੈਣਾ ਹੈ ਸੋਚਣਾ ਪੈਣਾ ਵੀਰ ਆਹ ਦਾ ਮਸਲਾ ਇਹ ਸੀ ਕਿ ਹੋ ਜਾਪਸ ਅਸੀਂ ਕੀ ਕਰਨਾ ਹਰ ਬੰਦੇ ਦਾ ਫਰਜ ਬਣਦਾ ਅੱਲਾ ਬੰਦਾ ਮੰਨ ਲਵੇ ਇੱਕ ਮੁੱਖ ਮੰਤਰੀ ਹੈ ਇੱਕ ਮੰਤਰੀ ਹੈ ਕਾਨੂੰਨ ਬਣਾ ਦੇਣਗੇ ਲਾਗੂ ਤਾਂ ਕਿ ਲੋਕਾਂ ਤੇ ਹੋਣਾ ਨਾ ਲੋਕ ਉਹਨੂੰ ਕਿਸ ਤਰੀਕੇ ਨਾਲ ਲੈਂਦੇ ਆ ਇਹਦੇ ਗੱਲ ਤੇ ਕਰੀਏ ਗੱਲ ਧੰਨਵਾਦ ਰਾਤ ਦਾ 1 ਵਜਾ ਹੋਇਆ ਤੁਸੀਂ ਗੱਲ ਕਰ ਰਹੇ ਹੋ ਤੇ ਜਿਹੜਾ ਇਹ ਸੰਘਰਸ਼ ਵਿੱਢਿਆ ਇੱਕ ਗੁਰਸਿੱਖ ਬੰਦੇ ਨੂੰ ਨੰਗਾ ਕਰਕੇ ਫੋਟੋ ਉਹਦੀ ਵੀਡੀਓ ਪਾਈ ਹੈ ਤੇ ਇਸ ਬਾਰੇ ਤੁਸੀਂ ਪੈਰ ਗੱਡ ਕੇ ਖੜੇ ਹੋ ਲੋਕ ਤੁਹਾਡੇ ਨਾਲ ਨੇ ਤੇ ਇਹਦੇ ਬਾਰੇ ਬਾਹਰਲੇ ਵੀ ਲੋਕ ਤੁਹਾਨੂੰ ਹਰੇਕਿਓ ਆਉਣ ਵਾਲੇ 10 ਵੀ 20 ਮਿੰਟਾਂ ਚ ਜਾਂ ਆਉਣ ਵਾਲੇ 5-10 ਘੰਟਿਆਂ ਚ ਸ਼ਾਬਾਸ਼ ਦੇਖਿਓ ਪਹਿਲਾਂ ਵੀ ਤੁਹਾਨੂੰ ਲੋਕ ਪਿਆਰ ਕਰਦੇ ਆ ਗੱਲ ਇਹ ਹੈ ਕਿ ਜ਼ੁਲਮ ਦੇ ਖਿਲਾਫ ਖੜਨਾ ਇਹ ਸਾਨੂੰ ਸਾਡੇ ਖੂਨ ਚ ਹੈ ਸਾਨੂੰ ਸਾਡੇ ਗੁਰੂ ਰਹਿਬਰਾਂ ਨੇ ਦਿੱਤਾ 239 ਸਾਲ ਇਸ ਧਰਤੀ ਤੇ ਰਹੇ ਨੇ ਉਹ ਕਹਿੰਦੇ ਜਰਵਾਣੇ ਨੂੰ ਜਰਵਾਣਾ ਕਹਿਣਾ ਹੀ ਕਹਿਣਾ ਕੁਝ ਵੀ ਹੋ ਜਾਵੇ ਬਰਨਾਨਕ ਪਾਸ਼ਾ ਤੋਂ ਲੈ ਕੇ 10ਵੇਂ ਪਾਸ਼ਾ ਤੱਕ ਬਾਬਰ ਨੂੰ ਜਾਵਰ ਜਦ ਰਾਜੇ ਨੂੰ ਜਿਹੜਾ ਅਤੀ ਦੁਨੀਆ ਦਾ ਰਾਜਾ ਉਹਨੂੰ ਕਿਹੜਾ ਜਾਵਰ ਕਹਿੰਦਾ ਸੀ ਉਏ ਇਹ ਤੁਸੀਂ ਠੀਕ ਹੈ ਜ਼ਿੰਦਗੀ ਦੇ ਵਿੱਚ ਗਲਤੀਆਂ ਵੀ ਹੁੰਦੀਆਂ ਨੇ ਪਰ ਆਪਣੀਆਂ ਗਲਤੀਆਂ ਨੂੰ ਸੁਧਾਰ ਕੇ ਲੁਕਾਈ ਦੇ ਲਈ ਇੱਕ ਬਹੁਤ ਵੱਡੀ ਗੱਲ ਹੈ ਤੇ ਅਖੀਰ ਦੇ ਵਿੱਚ ਕੁਝ ਹੋਰ ਕਹਿਣਾ ਚਾਹੁੰਦਾ ਅੱਛਾ ਹਾਂ ਇਹ ਇਸ ਗੱਲ ਦੀ ਚਲੋ ਮੈਨੂੰ ਇਹ ਲੱਗਾ ਕਿ ਯਾਰ ਕਿਸ ਨਾ ਕੁਝ ਜਿਹੜੀ ਮਤਲਬ ਕਿ ਉਸ ਨਾ ਕੁਝ ਹਾਸਲ ਹੋਇਆ ਆਥ ਨੇ ਐਸਐਸਪੀ ਇਸ ਵੀਡੀਓ ਤੋਂ ਬਾਅਦ ਉਹ ਕੋਨੇ ਸਰ ਗਰਮੀ ਵੀ ਦਿਖਾਈ ਹੈ ਤੇ ਦੋ ਮੁਲਾਜ਼ਮਾਂ ਤੇ ਜਿਹੜਾ ਸਰਚਾ ਵੀ ਮੁਕੱਦਮਾ ਦਰਜ ਹੋ ਚੁੱਕਿਆ ਹੂੰ ਦੋ ਜਿਹੜੇ ਮੁਲਾਜ਼ਮ ਸੀ ਨਾ ਪੁਲਿਸ ਮੁਲਾਜ਼ਮ ਉਹਨਾਂ ਦਾ ਮੈਂ ਨਾਂਅ ਵੀ ਲੈਣਾ ਵੀਡੀਓ ਦੇ ਵਿਚਕਾਰ ਤੇ ਜਿਹੜਾ RAM Singh ਮੁਨਸੀ ਸੀ ਉਹਨਾਂ ਤੇ ਮੁਕੱਦਮਾ ਵੀ ਦਰਜ ਹੋਇਆ ਤਾਂ ਜਿਹੜਾ ਅਰਸੋਦਸ਼ੀ ਆ ਇਹਦਾ ਮਾਸਟਰ ਮਾਈਂਡ ਹੈ ਜਿਹੜਾ ਇਹਨਾਂ ਦਾ ਪ੍ਰਧਾਨ ਨਗਰ ਕੌਂਸਲ ਦਾ ਪੂਰੀ ਹਾਲੇ ਉੱਤੇ ਨਹੀਂ ਕੋਈ ਕਾਰਵਾਈ ਹੋਈ ਅਬਲੇ ਵਸਿੰਗਰ ਸਾਇ ਹੈ ਅਸੀਂ ਸਾਡੇ ਸੋਚ ਰਿਹਾ ਹਾਈਵੇ ਜਾਮ ਕਰਨ ਦਾ ਜਾਂ ਨਾ ਕੁਝ ਪ੍ਰੋਟੈਸਟ ਹੈ ਡੀਜੀ ਡਾਕਟਰ ਦੇ ਅੱਗੇ ਕੋਈ ਧਰਨਾ ਮਿਲਾਏ ਸੋਚ ਰਿਹਾ ਵੀ ਜੇ ਉਹ ਤੇ ਨਹੀਂ ਪਰਚਾ ਹੁੰਦਾ ਤਾਂ ਵੈਸੇ ਪੁਲਿਸ ਹਰਕਤ ਚਾਈ ਆ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਨਾ ਕੋਈ ਜਰਾ ਅੱਗੇ ਰਿਜ਼ਲਟ ਦੇਖਣ ਨੂੰ ਮਿਲੇਗਾ ਰੁਪਾਈ थैंक यू ਆਪਣਾ ਖਿਆਲ ਰੱਖਣਾ ਚਾਹਦੀ ਮੈਂ ਦਾ ਨੂੰ ਮੋਟੀ ਕਿਹਾ ਵੀ ਮੈਂ ਮੈਨੂੰ ਖੁਸ਼ੀ ਹੁੰਦੀ ਹੈ ਬਾਹਰ ਮੈਨੂੰ ਹਜ਼ਾਰਾਂ ਬੰਦੇ ਮੁੰਡੇ ਫੋਨ ਕਰਦੇ ਔਰ ਉਹਨਾਂ ਦੇ ਦਿਲਾਂ 'ਚ ਦਰਦ ਹੈ ਪੰਜਾਬ ਦੇ ਇਹੀ ਦਾ ਬੰਦੇ ਵਿਚਾਰੇ ਇੰਨੇ ਇਮੋਸ਼ਨਲ ਹੋ ਜਾਂਦੇ ਆ ਕਿ ਰੋਣ ਵੀ ਲੱਗ ਜਾਂਦੇ ਆ ਪੰਜਾਬ ਨੂੰ ਲੈ ਕੇ ਬਾਈ ਬਾਈ ਇਹ ਕਹਣਾ ਤੋਂ ਨਾ ਜੀ ਨਾਲ ਮਿਲ ਕੇ ਪੰਜਾਬ ਨੇ ਬਚਣਾ ਕੰਡਾ ਹੋਰ ਨਹੀਂ ਬਚਾ ਸਕਦਾ ਹਰ ਬੰਦੇ ਨੂੰ ਹੰਬੜਾ ਮਾਰਨਾ ਪੈਣਾ ਹਰ ਬੰਦੇ ਨੂੰ ਆਪਣਾ ਆਪਣਾ ਜੋਤਨ ਬੰਦਾ ਦੇਣਾ ਪੈਣਾ ਚਾਹੇ ਉਹ ਬਾਹਲੇ ਮੁਰਖਾਂ ਦੇ ਬੈਠੇ ਨੇ ਚਾਹੇ ਉਹ ਇਹ ਦਰਮੇਂ ਇਸ ਕੀ ਮੈਨੂੰ ਬਹੁਤ ਮੁੰਡੇ ਬਾਹਰੋਂ ਆਏ ਹੋਏ ਮਿਲੇ ਜਿਹੜੇ ਵਿਚਾਰੇ ਆਪਣੇ ਕੰਮਕਾਰ ਛੱਡ ਕੇ ਇਧਰੋਂ ਆਉਦਾ ਕੱਢ ਕੇ ਇਧਰ ਆਏ ਆ ਬਹੁਤ ਸਾਰੇ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ ਇਧਰ ਆ ਕੇ ਸਿਰਫ ਆ ਘਰ ਤਾਂ ਮੁੰਡਿਆਂ ਨੇ ਇੱਥੇ ਆ। ਮੈਂ ਇਕੱਲਾ ਯਾਰ ਬਾਹਰਲੇ ਸਾਰੇ ਜਿੰਨੇ ਮੇਰੇ ਭਰਾ ਨੇ ਬਾਹਰਲੇ ਮੁਲਕਾਂ ਇੱਥੇ ਆ ਕੇ ਮੈਨੂੰ ਸਪੋਰਟ ਕੀਤੀ ਤੇ ਬਾਹਰੋਂ ਰਹਿ ਕੇ ਵੀ ਸਪੋਰਟ ਕੀਤੀ। ਮੈਂ ਸਾਰੇ ਨੂੰ ਬੁਲਾਈ ਜਿਨਾ ਚਾਹੁੰਦਾ ਕਿ ਬਸ ਕੇ ਯਾਰ ਪੰਜਾਬ ਨੂੰ ਵੀ ਕੁਝ ਕਰਨਾ ਪਾਉਂਗੇ ਇਹ ਹੋਊਗਾ ਵੀ ਜਰੂਰ ਥੈਂਕ ਯੂ ਸ਼ੋਟੇ ਭਾਈ ਆਪਣਾ ਖਿਆਲ ਰੱਖਿਓ ਸਟੇ ਸੇਫ ਥੈਂਕ ਯੂ ਈਕਰੀ ਤੁਹਾਨੂੰ ਬਾਅਦ ਵਿੱਚ ਜਿਹੜੇ ਮੁੰਡੇ ਨੇ ਵੀਡੀਓ ਪਾਈ ਇੱਕ ਗੁਰਸਿੱਖਵੰਦੇ ਦੀ ਭਾਈ ਰੂਪੇ ਦੀ 100 ਕਿਲੇ ਜ਼ਮੀਨ ਦਾ ਰੌਲਾ ਹੈ ਉਹਦੀ ਨੰਗਿਆਂ ਕਰਕੇ ਉਹਦੀ ਵੀਡੀਓ ਬਣਾਈ ਗਈ ਤੇ ਉਸ ਵੀਡੀਓ ਨੂੰ ਲੱਖੇ ਸਧਾਣੇ ਨੇ ਪਾਇਆ ਤੇ ਲੱਖੇ ਸਧਾਣੇ ਨਾਲ ਕੁਦਰਤੀ ਰابطਾ ਹੋ ਗਿਆ ਮੇਰਾ ਤੁਹਾਡੇ ਸਨਮੁਖ ਕੀਤਾ ਨੌਜਵਾਨ ਮੁੰਡਾ ਜਿਹੜਾ ਡਟ ਕੇ ਜ਼ੁਲਮ ਦੇ ਖਿਲਾਫ ਬੋਲਦਾ ਤੇ ਬਾਕੀ ਆਉਣ ਵਾਲਾ ਸਮਾਂ ਦੱਸੂ ਕਿ ਇਹਦੇ ਵਿੱਚੋਂ ਕੀ ਰਿਜ਼ਲਟ ਨਿਕਲਦੇ ਆ ਵਪਾਰਕ ਸੰਦੇਸ਼ ਤੁਸੀਂ ਮੈਨੂੰ ਫੋਨ ਕਰ ਲਾਓ ਤੁਸੀਂ ਇੰਟਰਨੈਟ 'ਚ ਆਸਕ ਲਾਓ ਕੋਈ ਪ੍ਰੋਬਲਮ ਨਹੀਂ ਆਂਦੀ ਲੇਕਿਨ ਕਿਤੇ ਨਾ ਕਿਤੇ ਕੋਈ ਧਨ ਭਰਾਵਾਂ ਨੂੰ ਜਿਹੜੇ ਪਹਿਲੇ ਕੈਮੀਕਲ ਯੂਜ਼ ਕੀਤੇ ਉਹਦਿਆਂ ਕਰਕੇ ਥੋੜਾ ਜਿਹਾ ਹੋ ਜਾਂਦਾ ਹੈ ਪਰ ਇਸ ਪ੍ਰੋਡਕਟ ਅਮੋਨੀਆ ਨਹੀਂ ਹੈਗਾ ओके अमोनिया एलर्जी ਦਾ ਕਾਰਨ ਬਣਦਾ ਹੈ ਤੇ ਸੋ ਕਿਤੇ ਨਾ ਕਿਤੇ ਜੇ ਕਿਸੇ ਨੂੰ પ્રાਣੀ ਕੋਈ ਮੁਸ਼ਕਲ ਹੈ ਤਾਂ ਉਥੋਂ ਅੱਗੇ ਜਦ ਇਹਨੂੰ ਵਰਤਦੇ ਆ ਤਾਂ ਹੋ ਸਕਦੀ हां बिल्कुल ਤੁਸੀਂ ਜਦੋਂ ਇੱਕ ਪ੍ਰੋਡਕਟ ਲੈਣੀ ਹੈ ਤੁਸੀਂ ਦੱਸੋ ਕਿ ਤੁਹਾਨੂੰ ਪਹਿਲਾਂ ਇਹ ਪ੍ਰੋਬਲਮ ਹੋ ਚੁੱਕੀ ਹੈ ਉਹਦੇ ਨਾਲ ਕੀ ਹੈਗਾ ਜੇ ਤੁਹਾਨੂੰ ਪਹਿਲਾਂ ਪ੍ਰੋਬਲਮ ਹੋ ਚੁੱਕੀ ਹੈ ਬਿਲਕੁਲ ਉਹਦਾ ਸਿੰਪਲ ਵੇ ਹੈਗਾ ਤੁਸੀਂ 5 ਮਿੰਟ ਲਾ ਕੇ ਹੀ ਵਾਸ਼ ਕਰਦੇ ਹੋ ਔਰ ਉਸ ਤੋਂ ਬਾਅਦ ਅਗਰ ਹੋ ਸਕੇ ਤਾਂ ਤੁਸੀਂ ਆਪਣਾ ਸੌਫਟ ਸ਼ੈਂਪੂ ਵੀ ਯੂਜ਼ ਕਰ ਸਕਦੇ ਹੈਗੇ ਤਾਂ ਉਹਦਾ ਅਸਰ ਘੱਟ ਜਾਂਦਾ ਅਗਰ ਤੁਹਾਡੀ ਸਕਿਨ ਨੂੰ ਕੋਈ ਜ਼ਿਆਦਾ ਸੈਂਸਿਟਿਵ ਹੈਗੀ ਹੈ ਤਾਂ ਅੱਛਾ ਜੀ ਇਹ ਹੋਰ ਇਸ ਦੇ ਬਾਰੇ ਇਸ ਦੀ ਡਿਸਟ੍ਰੀਬਿਊਸ਼ਨ ਬਾਰੇ ਜਾਂ ਕੋਈ ਨਵੀਂ ਏਰੀਆ ਦੇ ਵਿੱਚ ਕਿਤੇ ਹੋਰ ਇਹ ਜਿਹੜੀ ਹਰਬਲ ਡਾਈ ਹੈ ਉਹ ਮਿਲਣ ਲੱਗੀ ਹੋਵੇ ਉਸ ਬਾਰੇ ਦੱਸੋ ਜੀ ਹਾਂਜੀ ਬਿਲਕੁਲ ਲਾਸਟ ਵੀਕ ਅਸੀਂ ਗੁਰਸਬ ਜਾਣਾ ਸੀਗਾ ਸਰੀ ਸੁਪਰਮਾਰਕਟ ਫਰਾਈਡੇ ਲੇਕਿਨ ਸਨੋ ਦੇ ਕਾਰਨ ਅਸੀਂ ਜਾ ਨਹੀਂ ਸਕੇ ਸੀਗੇ ਲੇਕਿਨ ਐਸ ਫਰਾਈਡੇ ਨੂੰ 3 ਤੋਂ 6 ਅਸੀਂ ਸਰੀ ਸੁਪਰਮਾਰਕਟ ਅਸੀਂ ਹੋਣਾ ਉੱਥੇ ਪਰਸਨਲੀ ਤੁਹਾਡਾ ਕੋਈ ਕੁਐਸਚਨ ਹੋਵੇ ਮਦਰ ਇੰਡੀਆ ਦੀ ਅਗਰਵਤੀ ਦਾ ਫ੍ਰੀ ਸਟੈਂਪਲ ਵੀ ਲੈਣਾ ਹੋਵੇ ਉਹ ਵੀ ਲੈ ਸਕਦੇ ਹੈਗੇ ਜਾਂ ਤੁਸੀਂ ਹੋਰ ਸਾਡੀ ਮਦਦ ਦੀ ਹੈ ਬਾਰੇ ਜਾਣਕਾਰੀ ਲੈ ਲੈਣੇ ਇਸੇ ਕਰਕੇ ਅਸੀਂ ਸਮਰ ਦੇ ਵਿੱਚ ਫਰਵੀ ਦੇ ਵਿੱਚ ਸ਼ੁਰੂ ਕਰਦੇ ਆ ਤਾਂ ਕਿ ਅਸੀਂ ਲੋਕਾਂ ਨੂੰ ਪਰਸਨਲੀ ਟੱਚ ਕਰੀਏ ਪਰਸਨਲ ਲੋਕਾਂ ਨੂੰ ਮਿਲੀਏ ਤੁਹਾਡੇ ਜੋ ਕੰਸਰਨ ਹੈ ਕੁਦੀਵਾਰੇ ਅਸੀਂ ਮਸ਼ਾਈ ਤੁਹਾਡੇ ਕੁਐਸਚਨ ਜਿਹੜੇ ਹੁੰਦੇ ਉਹਦਾ ਹੱਲ ਕਰਦੇ ਹੈਗੇ ਆ ਸੋ ਇਸ ਕਰਕੇ ਤੁਸੀਂ ਫ੍ਰਾਈਡੇ ਨੂੰ 3 ਤੋਂ 6 ਸਰੀ ਸੁਪਰਮਾਰਕਟ ਆ ਸਕਦੇ ਆ ਲੇਕਿਨ ਸੇਮ ਸੈਟਰਡੇ ਨੂੰ ਤੁਸੀਂ ਦਸ਼ਮੇਸ਼ ਫੂਡ 3 ਤੋਂ 6 ਉੱਥੇ ਜਿਹੜੇ ਭਨ ਭਰਾ ਐਬਸਪੋਡ ਵਾਲੇ ਹੈਗੇ ਆ ਉੱਥੇ ਆਓ ਲੇਕਿਨ ਸ਼ੈਂਪੂ ਦੀ ਜਾਣਕਾਰੀ ਤੋਂ ਪਹਿਲਾਂ ਮੈਂ ਇਹ ਜੁੱਝ ਦੱਸ ਕਿ ਸਾਡੇ ਕੋਲ ਮਦਰ ਇੰਡੀਆ ਦੇ ਹਰਬਲ ਹੈਡਾਈ ਪਾਊਡਰ ਵੀ ਹੈਗੇ ਆ ਉਹਨਾਂ ਵਿੱਚ ਵੀ ਕੋਈ ਅਮੋਨੀਆ ਜਾਂ ਕੈਮੀਕਲਸ ਨਹੀਂ ਹੈ ਉਹਨਾਂ ਵਿੱਚ ਤੁਹਾਨੂੰ ਕਾਫੀ ਚੁਆਇਸ ਮਿਲ ਜਾਂਦੀ ਆ ਜੀ ਤੁਹਾਨੂੰ ਪਤਾ ਕਹਿੰਦੇ ਆ ਕਿ ਅਸੀਂ ਮਹੌਗਨੀ 골ਡਨ ਬ੍ਰਾਊਨ ਜਾਂ ਲਾਈਟ ਬ੍ਰਾਊਨ ਜਾਂ ਚਰੂ ਬਲੈਕ ਪਰ ਗੰਢੀ ਉੱਚ 6 ਕਰਾ ਤਰ੍ਹਾਂ ਦੇ ਕਲਰ ਆਉਂਦੇ ਹੈਗੇ ਆ ਉਹਦੇ ਵਿੱਚ ਵੀ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਹੈਗੀ ਬਾਲਾਂ ਨੂੰ ਸਿਰਫ ਤੁਸੀਂ ਪਾਣੀ ਵਿੱਚ ਪੇਸ ਬਣਾ ਕੇ 20 ਮਿੰਟ ਲਾਓ ਔਰ 20 ਮਿੰਟ ਤੋਂ ਬਾਅਦ ਤੁਸੀਂ ਵਾਸ਼ ਕਰਦੇ ਹੋ ਉਹਦੇ ਬਜਾਏ ਤੁਸੀਂ ਕੀ ਕਰ ਸਕਦੇ ਹੈਗੇ ਨੇਚਰਲ ਬ੍ਰਾਊਨ ਦੇ ਨਾਲ ਤੁਸੀਂ ਜਾਂ ਜਾਂ 골ਡਨ ਬ੍ਰਾਊਨ ਤੁਸੀਂ ਮਿਕਸ ਕਰਕੇ ਵੀ ਲਾ ਸਕਦੇ ਹੈਗੇ ਆ ਅੱਛਾ ਇੱਕ ਦੱਸੋ ਜੀ ਇਹਦੇ ਵਿੱਚ ਜੇ ਕਿਸੇ ਨੂੰ ਪਹਿਲਾਂ ਅਲਰਜੀ ਹੋਈ ਹੋਵੇ ਕਿਸੇ हेयर डाई ਤੋਂ ਫਿਰ ਉਹ ਇਸ ਨੂੰ ਨਾ ਵਰਤਣ ਤੁਸੀਂ ਤੁਹਾਡਾ ਸੁਝਾਅ ਕੀ ਹੈ ਨਹੀਂ ਮੇਰਾ ਸੁਝਾਈ ਹੈਗਾ ਜੀ ਅਗਰ ਤੁਹਾਨੂੰ हेयर डाई ਤੇ ਪਹਿਲਾਂ ਤੁਹਾਨੂੰ ਕੋਈ ਅਲਰਜੀ ਆ ਜਾਂ ਤੁਹਾਡੀ ਤੁਹਾਡੀ ਸਕਿਨ ਕਾਫੀ ਸੈਂਸਿਟਿਵ ਆ ਤੁਹਾਡੀ ਉਹ ਸਕਿਨ ਟੋਲਰੇਟ ਨਹੀਂ ਕਰਦੀ ਆ ਉਹਦੇ ਵਾਸਤੇ ਤੁਸੀਂ ਮਦਰ ਇੰਡੀਆ ਦਾ ਆਕਸੀਨ 99 ਪੈਕਟ ਲਾਓ ਉਹ ਤੁਸੀਂ ਅੱਖਾਂ ਮੀਟ ਕੇ ਲਾ ਸਕਦੇ ਆ ਤੁਹਾਨੂੰ ਪ੍ਰੋਬਲਮ ਨਹੀਂ ਹੋਏਗੀ ਅੱਛਾ ਜੀ ਹੋਰ ਵੀ ਹੈ ਸਰ ਦਾ ਉਹਦੇ ਵਾਸਤੇ ਉਹ ਉਹਦੀ ਬਸ ਸਿਰਫ ਉਹਦੇ ਵਿੱਚ ਇਹ ਹੈ ਕਿ ਤੁਸੀਂ ਉਹ ਤੁਹਾਨੂੰ ਬਾਲਾਂ ਦੇ ਵਿੱਚ ਤੁਹਾਨੂੰ 30 ਤੋਂ 40 ਮਿੰਟ ਲਾਣਾ ਪੈਂਦਾ ਮਦਰ ਇੰਡੀਆ ਸਾਰੇ ਦੁਕਾਨਾਂ ਤੁਹਾਨੂੰ ਮਿਲ ਸਕਦਾ ਜਾਂ ਤੁਸੀਂ ਮਦਰ ਇੰਡੀਆ ਸ਼ਾਪ ਤੋਂ ਵੀ ਲੈ ਸਕਦੇ ਹੈਗੇ ਅੱਛਾ ਜੀ ਤੇ ਉਹ ਜਿਹੜਾ ਛੋਟੀ ਇੱਕ ਤੁਸੀਂ ਕਹਿੰਦੇ ਬੋਟਲ ਨੇ ਆਉਣਾ ਬੋਟਲ ਬਣ ਗਈ ਜੀ ਹਾਂਜੀ ਬਿਲਕੁਲ ਉਹ ਮੈਂ ਹਮੇਸ਼ਾ ਦੱਸਦਾ ਹਾਂ ਕਿ ਕੈਂਟ ਆਫ ਫਰਬੀ 28 ਨੂੰ ਉਹ ਆ ਜਾਣੀ ਹੈ ਜੀ ਆ ਤੁਸੀਂ ਜਦੋਂ ਇੱਕ ਮਹੀਨੇ ਚ ਇੱਕ ਪੈਕੇਜ ਯੂਜ਼ ਕਰ ਲੈਂਦੇ ਆ ਅਗਰ 10 12 ਦਿਨ ਨਗਰੋ ਜਾਂ 2 ਹਫ਼ਤੇ ਨਗਰੋ ਤੁਹਾਡੇ ਥੋੜਾ ਬਹੁਤਾ ਗ੍ਰੋਥ ਹੋ ਜਾਂਦੀ ਆ ਬਾ ਮੱਥੇ ਦੇ ਕੋਲ ਜਾਂ ਕੰਨਾਂ ਦੇ ਕੋਲ ਜਾਂ ਦਾੜ੍ਹੀ ਦੇ ਵਿੱਚ ਤਾਂ ਤੁਹਾਨੂੰ ਫੇਰ ਦੁਬਾਰਾ ਪੈਕੇਟ ਲਾਣ ਦੀ ਲੋੜ ਨਹੀਂ ਪੈਣੀ ਇੱਕ ਬੋਤਲ ਘਰ ਰੱਖ ਲਿਓ ਉਹਦੇ ਤੇ ਬਰਸ਼ ਵੀ ਲੱਗਾ ਆ ਬਟਨ ਵੀ ਲੱਗਾ ਹੈਗਾ ਤੁਸੀਂ ਬਟਨ ਦਬਾਉਗੇ ਜਿੰਨਾ ਕਿ ਉਹਨੂੰ ਚਾਹੀਦਾ ਹੈਗਾ ਬ੍ਰਸ਼ ਦੇ ਉੱਤੇ ਆਪਣੇ ਆਪੇ ਪੇਸਟ ਲੱਗ ਜਾਣਾ ਤੁਸੀਂ ਉਹਨੂੰ ਟੱਚ ਅਪ ਕਰ ਸਕਦੇ ਆ ਉਹ ਬੋਟਲ ਤੁਹਾਡੇ ਤਕਰੀਬਨ 6 ਮਹੀਨੇ ਵਾਸਤੇ ਕਾਫੀ ਹੋਏਗੀ ਉਹ ਆਏਗੀ ਐਂਡ ਆਫ ਫਰਵਰੀ ਅਗਰ ਪਹਿਲਾਂ ਆ ਗਈ 2-4 ਦਿਨ ਤਾਂ ਅਸੀਂ ਜਰੂਰ ਡੈਫੀਨਿਟਲੀ ਅਨਾਉਂਸ ਕਰਾਂਗੇ ਤੇ ਜਿਹੜਾ ਆਸਟ੍ਰੇਲੀਆ ਵਾਲਾ ਜੀ ਤੁਹਾਡੀ ਲੋਕੇਸ਼ਨ ਹੈ ਉਸ ਦੇ ਬਾਰੇ ਵੀ ਫੇਰ ਦੱਸਿਓ ਕਿ ਫੋਨ ਆਉਂਦੇ ਜੀ ਉਹਨਾਂ ਦਾ ਨੰਬਰ ਤੇ ਕਿੱਥੋਂ ਮਿਲਦਾ ਉਹ ਦੱਸ ਦਿਓ ਹਾਂਜੀ ਆਸਟ੍ਰੇਲੀਆ ਵਿੱਚ ਸਾਡਾ ਆਪਣਾ ਹੀ ਆਫਿਸ ਹੈਗਾ ਆਪਣਾ ਹੀ ਸਾਡਾ ਸ਼ੋਅਰੂਮ ਹੈਗਾ ਉਹ ਹੈਗਾ ਉਹਦਾ ਯੂਨਿਨ ਨੰਬਰ 18549 ਰੌਚਦੇਵ ਸ਼ੋਪਿੰਗ ਵਿਲੇਜ ਦੇ ਵਿੱਚ ਹੈਗਾ ਇਹਦਾ ਟੈਲੀਫੋਨ ਹੈਗਾ ਉੱਥੇ ਦਾ ਆਸਟ੍ਰੇਲੀਆ ਦਾ ਏਰੀਆ ਕੋਡ 7 33415336 ਇਹ ਸਾਡਾ ਉਸ ਦਾ ਟੈਲੀਫੋਨ ਹੈ ਏਰੀਆ ਕੋਡ 7 33415336 ਅਸੀਂ ਅਗੇ ਇਥੋਂ Fiji ਤੇ New Zealand ਨੂੰ Australia ਨੂੰ ਭੇਜਦੇ ਸੀਗੇ ਹੁਣ ਤੁਸੀਂ ਜਿੰਨੇ ਵੀ ਭਾਨਾ Australia Fiji New Zealand ਸੁਣਦੇ ਹੈਗੇ ਤੁਸੀਂ ਸਾਡੇ Dresden ਦੇ ਆਫਿਸ ਤੋਂ ਲੈ ਸਕਦੇ ਹੈਗੇ ਆ ਪ੍ਰੋਡਕਟ ਔਰ Canada ਦੇ ਵਿੱਚ ਸਾਡੇ ਦੇ तकरीबन 250 ਲੋਕੇਸ਼ਨ ਦੇ ਵਿੱਚ ਸਾਡਾ ਸਮਾਨ ਮਦਰ ਇੰਡੀਆ ਦਾ ਹਰ ਬਰਿੰਡਾ ਸ਼ੈਂਪੂ ਤੁਸੀਂ ਲੈ ਸਕਦੇ ਆ ਜਿੱਦਾਂ ਕਿ ਕੈਲਗਰੀ ਦੇ ਵਿੱਚ ਫੂਟੀ ਕੈਨਾ ਓਕੇ ਜਨਰਲ ਫੂਡਸ ਐਡਮਿੰਟਨ ਦੇ ਵਿੱਚ ਵੀ ਲੈ ਸਕਦੇ ਆ ਟੋਰਾਂਟੋ ਤੋਂ ਏਸ਼ੀਅਨ ਫੂਡਸ ਬੇਨੀਪੈਕ ਤੋਂ ਔਰ ਸਰੀ ਦੇ ਵਿੱਚ ਤੁਸੀਂ ਹੁਣ ਸਾਡਾ ਪ੍ਰੋਡਕਟ ਫੂਟੀ ਕੈਨਾ 173 ਤੇ 72 ਤੇ ਤੁਸੀਂ ਉਥੋਂ ਲੈ ਸਕਦੇ ਆ ਯੂ ਐਸ اے ਦੇ ਵਿੱਚ ਤੁਸੀਂ ਬੈਲਿੰਘੇਮ ਸਿਆਟਲ ਪੋਰਟਲੈਂਡ ਸੈਕਰਮੈਂਟੋ ਇਹ ਸਾਰੇ ਡਿਸਟ੍ਰਿਬਿਊਟ ਹੈਗੇ ਆ ਤੁਸੀਂ ਇੱਥੋਂ ਸਾਡਾ ਪ੍ਰੋਡਕਟ ਲੈ ਸਕਦੇ ਆ ਔਰ ਲੇਕਿਨ ਇਸ ਫਰਾਈਡੇ ਨੂੰ 10 ਤੋਂ 6 ਸਰੀ ਸੂਪਰਮਾਰਕਟ ਤੇ ਸੈਟਰਡੇ ਨੂੰ ਤੁਸੀਂ ਦਸ਼ਮੇਸ਼ ਫੂਡ ਤੇ ਆਓ ਔਰ ਇਸ ਦਿਨ ਨਾਲ ਜਿਹੜੇ ਸੈਟਰਡੇ ਨੂੰ ਗਿਵ ਸਾਹਿਬ ਆਣਗੇ ਪਹਿਲੇ 20 ਭੈਣ ਭਰਾ ਜਾਂ ਕਸਟਮਰ ਸਾਡੇ ਉਹਨਾਂ ਨੂੰ ਤੁਸੀਂ ਸਿਰਫ ਕੀ ਕਰਨਾ ਹੈਗਾ ਆਪਣਾ ਖਾਲੀ ਟਿਕਟ ਲੈ ਕੇ ਆਇਓ ਤੁਸੀਂ ਭਰਿਆ ਲੈ ਜਾਓ ਪਹਿਲੇ 20 ਜਿੰਨੇ ਵੀ ਭਰਾਂਗੇ ਤੁਸੀਂ ਖਾਲੀ ਟਿਕਟ ਲਿਆਓ ਸਾਨੂੰ ਦੇ ਦਿਓ ਭਰਿਆ ਟਿਕਟ ਲੈ ਜਾਓ ਹਾਂਜੀ ਹਾਂਜੀ ਹਾਂਜੀ ਹਾਂਜੀ ਇਸ ਤੋਂ ਇਲਾਵਾ ਸਾਡਾ ਜਿਹੜੇ ਹੈਗੇ ਆ ਬਾਕੀ ਮਦਰ ਇੰਡੀਆ ਦੇ ਖੁਰਬੇ ਪ੍ਰੋਡਕਟ ਜਿਨ੍ਹਾਂ ਵਿੱਚ ਪਾਊਡਰ ਹੈ ಕ್ಯಾਪਸੂਲ ਹੈਗੇ ਆ ਉਹ ਵੀ ਸਾਡੇ ਸਾਰੇ ਆਰਗੇਨਿਕ ਹੈਗੇ ਆ ਪ੍ਰੂਵਡ ਬਾਏ தி ਗਵਰਨਮੈਂਟ ਆਫ ਕੈਨੇਡਾ ਇਹ ਸਾਰੇ ਪ੍ਰੋਡਕਟਸ ਨੂੰ ਮਦਨਗੀਆਂ ਤੋਂ ਹੀ ਖਰੀਦ ਸਕਦੇ ਆ ਜਾਂ ਤੁਸੀਂ ਆਪਣੇ ਘਰ ਡਿਲੀਵਰ ਕਰਾਉਣਾ ਚਾਹੁੰਦੇ ਆ ਅਸੀਂ ਬਿਲਕੁਲ ਫ੍ਰੀ ਡਿਲੀਵਰੀ ਦਿੰਨੇ ਹੈਗੀਆਂ ਕੈਨੇਡਾ ਦੇ ਵਿੱਚ ਤੋਂ ਯੂਐਸ ਦੇ ਵਿੱਚ ਦੀ ਅਗਰਬਤੀ ਜਿਹਦੇ ਵਿੱਚ ਇੱਕੋ ਹੀ ਇੱਕ ਨਾਰਥ ਅਮਰੀਕਾ ਦੇ ਵਿੱਚ ਅਗਰਬਤੀਆਂ ਹੈਗੀਆਂ ਜਿਹਦੇ ਵਿੱਚ 60 ਡਿਫਰੈਂਟ ਫ੍ਰੈਗਰੈਂਸ ਹੈਗੀਆਂ ਤੁਸੀਂ ਆਪਣੀ ਮਰਜ਼ੀ ਦੀ ਫ੍ਰੈਗਰੈਂਸ ਯੂਜ਼ ਕਰ ਸਕਦੇ ਆ ਟਰਾਈ ਕਰ ਸਕਦੇ ਹੈਗੀਆਂ ਇਦੇ ਵਿੱਚ ਕੋਈ ਕਾਲਾ ਧੂਆ ਨਹੀਂ ਹੈ ਕੋਈ ਕੈਮੀਕਲ ਨਹੀਂ ਹੈ तकरीबन ਸਾਡੇ ਕੈਨੇਡਾ ਦੇ ਵਿੱਚ ਸਾਰੇ ਭਾਰਤੀ ਬਿਜ਼ਨਸ ਸਟੋਰ ਪਰ ਤੁਹਾਨੂੰ ਇਹ ਮਿਲ ਜਾਂਦਾ ਪ੍ਰੋਡਕਟ ਅਗਰ ਤੁਹਾਨੂੰ ਨਹੀਂ ਮਿਲਦਾ ਤੁਸੀਂ ਮਦਰ ਇੰਡੀਆ ਸਟੋਰ ਤੇ ਵੀ ਆ ਸਕਦੇ ਆ 6649 ਮੇਨ ਸਟਰੀਟ ਮੇਨ ਟੇਪਾਇਟੀ ਹੈਗਾ ਟੈਲੀਫੋਨ 6044306072 ਇਕੱਲਾ ਮੰਗਲਵਾਰ ਬੰਦ ਬਾਕੀ ਦਿਨ ਖੁੱਲੇ ਹਾਂਜੀ ਬਾਕੀ ਦਿਨ ਅਸੀਂ ਮੰਡੇ ਟੂ ਸੰਡੇ ਖੋਲਦੇ ਹਾਂ 10 ਤੋਂ 6 ਤੀਸ ਦਿਨ ਅਸੀਂ ਬੰਦ ਹੁੰਦੇ ਆਂ ਸਾਡਾ ਸਟੋਰ ਬਿਲਕੁਲ 10 ਵਜੇ ਤੋਂ ਛੇ ਵਜੇ ਤੱਕ ਖੁੱਲਦਾ ਹੈਗਾ ਮੈਂ ਕਹੀ ਤੁਹਾਨੂੰ ਭਰਾਵਾਂ ਨੂੰ ਇਡੈਂਟੀਫਾਈ ਕਰਤਾ ਜਾਂ ਤੁਸੀਂ ਮੈਸੇਜ ਕਰਦੇ ਹੋ ਪਲੀਜ਼ ਆਪਣਾ ਟੈਲੀਫੋਨ ਬਹੁਤ ਸਲੋਲੀ ਦੇਆ ਕਰੋ ਕਈ ਵਾਰ ਸਾਨੂੰ ਤਿੰਨ ਜਾਂ ਚਾਰ ਵਾਰੀ ਵੀ ਉਹ ਸੁਣਨਾ ਪੈਂਦਾ ਫਿਰ ਉਹ ਕਾਫੀ ਟਾਈਮ ਲੱਗ ਜਾਂਦਾ ਹੈਗਾ ਕਿ ਤੁਸੀਂ ਆਪਣਾ ਮੈਸੇਜ ਕਰਦੇ ਆ ਬਿਲਕੁਲ ਸਲੋਲੀ ਆਪਣਾ ਟੈਲੀਫੋਨ ਦਿਓ ਅਸੀਂ ਮੇਸ਼ਾ ਤੁਹਾਡੀ ਕਾਲ ਰਿਟਰਨ ਕਰਦੇ ਆ ਔਰ ਤੁਹਾਡਾ ਕੋਈ ਵੀ ਕੁਐਸਚਨ ਹੋਵੇ ਅਸੀਂ ਮੇਸ਼ਾ ਉਹਦਾ ਆਨਸਰ ਕਰਦੇ ਧੰਨਵਾਦ ਜੀ ਨਰੇਸ਼ ਸ਼ੁਕਲਾ ਜੀ ਤੇ ਮੈਂ ਬੇਨਤੀ ਕਰਦਾ ਸਾਰੇ ਜਿਹੜੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਜਿੱਥੇ ਨਰੇਸ਼ ਸ਼ੁਕਲਾ ਜੀ ਨੇ ਜਾਣਾ ਹੈ ਉੱਥੇ ਉਹਨਾਂ ਨੂੰ ਕੋਲ ਮਿਲ ਕੇ ਉਹਨਾਂ ਸਕਦੇ ਹੋ हेयर डाई ਵਾਲੇ ਜਿਨ੍ਹਾਂ ਨੂੰ ਪਹਿਲਾਂ ਅਲਰਜੀ ਹੋਈ ਹੈ ਉਹ ਖਿਆਲ ਨਾਲ ਲਾਓ ਤੇ ਛੋਟਾ ਪੈਕ ਵੀ ਛੇਤੀ ਬਣ ਕੇ ਜਿਹੜਾ ਆ ਰਿਹਾ ਇਹ ਨਰੇਸ਼ ਸ਼ੁਕਲਾ ਜੀ ਮਦਰ ਇੰਡੀਆ ਤੋਂ ਗੱਲ ਕਰ ਰਹੀ ਸੀ ਧੰਨਵਾਦ ਸ਼ੁਕਲਾ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਗੁਰਸਰ ਸਤਿਗੁਰ ਜੀ 11:56 ਮਿੰਟ ਹੋ ਚੁੱਕੇ ਆ ਜੀ ਲਖੇ ਸੁਧਾਨੇ ਦੀ ਤੁਸੀਂ ਗੱਲ ਸੁਣ ਕੇ ਹਟਿਓ ਤੁਹਾਡੇ ਵਿੱਚ ਮਨ ਦੇ ਵਿੱਚ ਕੋਈ ਗੱਲਬਾਤ ਹੋਵੇ ਇਸ ਦੀ ਉਸ ਦੇ ਬਾਰੇ ਗੱਲ ਕਰਨ ਨੂੰ ਜਿਹੜਾ ਮੁੰਡੇ ਨੇ ਹਾਲਾਤ ਉਸੇ ਏਰੀਆ ਦੇ ਦੱਸੇ ਹੈ ਤੇ ਜਿਸ ਤਰ੍ਹਾਂ ਹੁਣ ਇਹ ਵਿੱਚ ਸਿੱਧੇ ਜਾ ਸਿੱਧੇ ਤਰੀਕੇ ਦਾ ਕਿਉਂਕਿ ਕੋਈ ਹੱਥ ਤਾਂ ਹੈ ਨਹੀਂ ਲੱਗ ਮਤਲਬ ਜੇ ਆਪਾਂ ਕਹੀਏ ਮਲੂਕੇ ਉਹਨਾਂ ਦੇ ਇਹ ਕਹਿ ਕੇ ਕਰਾਇਆ ਪਰ ਜਿਹੜੇ ਬੰਦਿਆਂ ਦੇ ਬਾਰੇ ਉਹ ਦੱਸ ਰਿਹਾ ਉਹ ਬੰਦੇ ਜਿਹੜੇ ਨੇ ਜਿਹੜਾ ਹਿੰਦੇ ਦਾ ਮੁੰਡੇ ਦਾ ਨਾਂ ਦੱਸ ਰਿਹਾ ਫੁੱਲ ਵਾਲਾ ਜਿਹੜਾ ਨਗਰ ਕੌਂਸਲ ਦਾ ਪ੍ਰਧਾਨ ਜਿਹਦੀ ਆਵਾਜ਼ ਉਹਨੇ ਪਛਾਣੀ ਚਲੋ ਤੁਹਾਡੇ ਝਗੜੇ ਹੋਣਗੇ ਪਰ ਇੱਕ 50 ਸਾਲ ਤੋਂ ਉੱਪਰਲੇ ਬੰਦੇ ਨੂੰ ਨੰਗਿਆਂ ਕਰਕੇ ਤੁਸੀਂ ਉਸ ਵੀਡੀਓ ਵਾਇਰਲ ਕਰਦੇ ਹੋ ਤੇ ਜਿਹੜਾ ਹੁਣ ਘਰੇ ਹੈ ਹੀ ਨਹੀਂ ਉਸ ਦੋ ਜਵਾਨ ਧੀਆਂ ਨੇ ਜਿਸ ਤਰ੍ਹਾਂ ਉਹ ਦੱਸ ਰਿਹਾ ਕਿ ਸਾਨੂੰ ਡਰ ਹੈ ਇਹ ਉਹ ਬੰਦਾ ਲੱਭ ਨਹੀਂ ਰਿਹਾ ਪਤਾ ਨਹੀਂ ਕਿੱਥੇ ਆ ਇਹ ਜਿਹੜਾ ਵੀਡੀਓ ਵਾਲਾ ਜਿਹੜਾ ਇਹ ਬਲੈਕਮੇਲਿੰਗ ਦੀ ਬਹੁਤ ਜ਼ਿਆਦਾ ਗੱਲਬਾਤ ਚੱਲ ਰਹੀ ਹੈ ਇੱਕ ਪਾਰਟੀ ਦੀ ਜਿੱਥੇ ਵੀ ਤੁਸੀਂ ਬਹਿਨੇ ਹੋ ਉੱਠਦੇ ਹੋ ਕੋਈ ਜਿਹਾ ਜਿਹਾ ਹੀ ਆਪਣੀ ਚਿੰਨਣਾ ਛੱਡ ਕੇ ਜਾਓ ਜਿਹਦੇ ਲਈ ਕਦੇ ਤੁਸੀਂ ਤੰਗ ਹੋਵੋ ਪਿਛਲੇ ਦਿਨ ਹੀ ਦੀ ਵੀਡੀਓ ਕਬਾਇਆ ਦਾ ਜਿਹੜਾ ਮੁੰਡਾ ਕਾਂਗਰਸ ਚਲੇ ਗਿਆ ਵਾਏ ਦੀ ਵੀਡੀਓ ਜਦ ਹੀ ਪਤਾ ਨਹੀਂ ਕਿੱਥੇ ਸੀ ਉਹ ਕਿੱਥੋਂ ਨਿਕਲ ਕੇ ਪਾ ਲਈ ਚਲੋ ਜੇ ਕੋਈ ਗਲਤ ਕਰਦਾ ਤਾਂ ਉਹਦੀ ਵੀਡੀਓ ਪਹਿਣੀ ਵੀ ਚਾਹੀਦੀ ਹੈ ਜੇ ਕੋਈ ਕੰਬਲ ਦੇ ਥੱਲੇ ਲੁਕਿਆ ਹੋਇਆ ਸ਼ੈਤਾਨ ਬੰਦਾ ਹੈ ਪਰ ਜੇ ਕੋਈ ਹੁਣ 150 ਗਲਾ ਜ਼ਮੀਨ ਪਿੰਡ ਦੀ ਜ਼ਮੀਨ ਹੈ ਤੇ ਇਤਿਹਾਸਕ ਪਿੰਡ ਹੈ ਉਸ ਪਿੰਡ ਦੀ ਜ਼ਮੀਨ ਤੇ ਜਿਹੜੀ ਸੰਘਰਸ਼ ਕਮੇਟੀ ਬਣੀ ਹੈ ਉਹਦੇ ਵਿੱਚੋਂ ਕਿਸੇ ਬੰਦੇ ਨੂੰ ਚੁੱਕ ਕੇ ਤੁਸੀਂ ਲਿਜਾਣੇ ਹੋ ਇਹ 15 ਦੀ ਗੱਲ ਆ ਪਰ ਉਹ ਵਾਇਰਲ ਨਹੀਂ ਹੋਈ ਵਾਇਰਲ ਜਦ ਹੋਈ ਜਦ ਹੁਣ ਵਿਰੋਧਤਾ ਉਸ ਬੰਦੇ ਨੇ ਦੁਆਰਾ ਕੀਤੀ ਫਿਰ ਉਹਦੀ ਵੀਡੀਓ ਵਾਇਰਲ ਹੋਈ ਹੁਣ ਤੱਕ ਨਹੀਂ ਕੀਤੀ ਸਾਲ ਸਵਾ ਸਾਲ ਹੋ ਗਿਆ ਪਰ ਜੇ ਕੋਈ ੱੱਕਾ ਕਰ ਰਿਹਾ ਲੱਖੇ ਸਿਧਾਣੇ ਵਰਗੇ ਮੁੰਡਿਆਂ ਤੋਂ ਬਿਨਾ ਇੱਕ ਉੱਪਰ ਵਾਲੇ ਦੇ ਹੱਥ 'ਚ ਬਹੁਤ ਵੱਡੀ ਤੱਕੜੀ ਐ ਹੁਣ ਆਪਾਂ ਤੱਕੜੀ ਦੇ ਉਸ ਵਜ਼ਨ ਨੂੰ ਵੇਖੀਏ ਨਾ ਵੇਖੀਏ ਇਹ ਤਾਂ ਕਿਉਂਕਿ ਅੱਖਾਂ ਤੇ ਪੱਟੀਆਂ ਬੰਨ੍ਹੀਆਂ ਜਾਂਦੀਆਂ ਪਰ ਉਹਦਾ ਜਿਹੜਾ ਇਨਸਾਫ ਹੈ ਉਹ ਹੁਣ ਬੜਾ ਦੇਰ ਨਹੀਂ ਲਾਉਂਦਾ ਜਿਵੇਂ ਦੁਨੀਆ ਤੇਜ਼ ਹੋਈ ਹੈ ਉਸ ਤਰ੍ਹਾਂ ਉਹਦਾ ਇਨਸਾਫ ਵੀ ਹੁਣ ਤੇਜ਼ ਹੀ ਹੈ ਬੜਾ ਸਮਾਂ ਨਹੀਂ ਹੁਣ ਲੱਗਦਾ ਛੇਤੀ ਉਹ ਇਨਸਾਫ ਹੋ ਜਾਂਦਾ ਇਹ ਗੱਲ ਠੀਕ ਹੈ ਵਿਵਾਦ ਤੇ ਵਿਵਾਦ ਵਿਵਾਦ ਤੇ ਵਿਵਾਦ ਜਿਹੜੇ ਲੈ ਅਰਦਾਸ ਤੋਂ ਸ਼ੁਰੂ ਹੋਇਆ ਫਿਰ ਸੌਦੇ ਸਾਧ ਤੇ ਜਾ ਕੇ ਸਤਿਗੁਰ ਤੇਰਾ ਆਸਰਾ ਸਾਰੇ ਜਨਮੇਜੇ ਹੁਣ ਪੰਜੇ ਚਾਰੇ ਉੱਥੇ ਬੈਠੇ ਆ ਦੇਖ ਲਿਓ ਵੋਟਾਂ ਕਿੰਨੀਆਂ ਨਿਕਲਦੀਆਂ ਨੇ ਕਿੰਨੇ ਕਿ ਪ੍ਰੇਮੀ ਪਾਉਂਦੇ ਆ ਤੇ ਕੀ ਗੱਲ ਬਣਦੀ ਆ ਬਾਅਦ ਚ ਉਹ ਵੀ ਰੌਲਾ ਪੈ ਗਿਆ ਸੀ ਹੁਣ ਆ ਜਿਹੜਾ ਰੌਲਾ ਇਹ ਰੌਲੇ ਨੇ ਉਸ ਏਰੀਆ ਦੇ ਲੋਕ ਜੇ ਇਕੱਠੇ ਹੋ ਗਏ ਤੇ ਉਹਨਾਂ ਨੇ ਸੰਘਰਸ਼ ਕੋਈ ਵਿੱਡ ਦਿੱਤਾ ਤਾਂ ਇਹ ਬਹੁਤ ਵੱਡੀ ਗੱਲ ਹੋ ਸਕਦੀ ਰਾਜਵੀਰ ਸਿੰਘ ਜੀ ਤੁਸੀਂ ਏਅਰ ਤੇ ਆਨਲਾਈਨ ਨੰਬਰ 5 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਦੇ ਕੋਈ ਸ਼ੱਕ ਨਹੀਂ ਤੁਸੀਂ ਹਰ ਵਾਰ ਮਾੜੇ ਬੰਦੇ ਦੀ ਇੱਕ ਜਰੂਰ ਥਾਪੜ ਦੇ ਆ ਜਰੂਰ ਥਾਪੜਾ ਦਿੰਦੇ ਆ ਉਹਨੇ ਚੰਗਾ ਕੰਮ ਕੀਤਾ ਵਾਕਈ ਸੀਗਾ ਜੇ ਕੋਈ ਪਹਿਲਾਂ ਮਾੜਾ ਹੁੰਦਾ ਕਹਿੰਦੇ ਹੁੰਦੇ ਆ ਕੀ ਕਹਿੰਦੇ ਆ ਮੱਛੀ ਪੱਥਨ ਪੱਤਰ ਪੱਥਰ ਛੱਟ ਕੇ ਮੁੜਦੀ ਆ ਜਾਂ ਆਪਾਂ ਕਹਿ ਦਿੰਦੇ ਆ ਚਲੋ ਤਲ ਦਾ ਭੁੱਲਿਆ ਅੱਜ ਘਰੇ ਵਾਪਸ ਆ ਗਿਆ ਉਹਨੂੰ ਭੁੱਲਿਆ ਨਹੀਂ ਕਹਿੰਦੇ ਚਲੋ ਉਹਨੇ ਫੇਰ ਵੀ ਉਹਦੀ ਅਣਖ ਜਾਗੀ ਆ ਮਲੂਕੇ ਬਾਰੇ ਤਾਂ ਆਪਾਂ ਕਹਿ ਹੀ ਸਕਦੇ ਆਪਾਂ ਆਪ ਅੱਖੀਂ ਵੀਡੀਓ ਦੇਖੀਆ ਕਿਵੇਂ ਟੀਚਰਾਂ ਦੀਆਂ ਗੁੱੱਤਾਂ ਫੜ-ਫੜ ਕੁੱਟਦਾ ਉਹ ਬੰਦਾ ਫੇਰ ਉਹਨੂੰ ਦੇਖ ਲਓ ਪੁਲਿਸ ਵਾਲੇ ਆਪਾਂ ਵੀਡੀਓ ਵੇਖਿਆ ਸਿੱਧੀਆਂ ਫੇਰ ਗਾਲ੍ਹਾਂ ਕੱਢਦੇ ਉਹਨੂੰ ਉਹ ਬੰਦੇ ਦਾ ਕੈਰੇਕਟਰ ਹੀ ਐਸ ਤਰ੍ਹਾਂ ਦਾ ਹੁਣ ਇਹਨਾਂ ਨਾਲ ਹੋਈਆਂ ਇਹ ਬੰਦਾ ਠੀਕ ਆ 5% ਲੋਕ ਹੁੰਦੇ ਆ 5% ਲੋਕ ਜਿਹੜੇ ਕਹਿੰਦੇ ਆ ਮਾੜਾ ਕਹਿੰਦੇ ਵੀ ਜੇ ਕੁਛ ਚੰਗਾ ਹੁੰਦਾ ਉਹਨੂੰ ਕਹਿੰਦੇ ਆ ਹੁਣ ਇੱਥੇ ਵੀ ਕਾਲ ਕਰਨਗੇ ਏ ਜੀ ਬਦਮਾਸ਼ ਆ ਇਹਦੀਆਂ ਗੱਲਾਂ ਤੇ ਤਵਾਰ ਨਾ ਕਰੋ ਪਰ ਇਹ ਸੱਚ ਆ ਜਿਹੜੇ ਉਹਨੂੰ ਮਰਜ਼ੀ ਦਸੀ ਹੈਲਪ ਦੀ ਲੋੜ ਹੋਈ ਤੇ ਅਸੀਂ ਤੇਰੇ ਨਾਲ ਖੜੇ ਆ ਠੀਕ ਆ ਕਈ ਵਾਰੀ ਕੋਈ ਚੰਗਿਆੜੀ ਉੱਠਦੀ ਹਰੇਕ ਹਰ ਕੋਈ ਨਹੀਂ ਹੁੰਦਾ ਮੂਰਖ ਮਹਾਰਾਜ ਨੇ 20 ਕਿਲੋ ਦਾ ਉੱਤੇ ਦਿਮਾਗ ਦਿੱਤਾ ਹਰ ਕੋਈ ਵਸਤਵਾਵਾ ਤੇ ਥੋੜਾ ਵੀ ਧੰਨਵਾਦ ਤੁਸੀਂ ਉਹਨੂੰ ਲੈ ਕੇ ਆਏ ਆ ਤੇ ਚੰਗੀ ਗੱਲ ਕਹਿਣੀ ਬਣਦੀ ਆ ਥੈਂਕ ਯੂ ਗੱਲ ਸਾਹਿਬ ਲੋਕਲ ਚਾਹੇ ਜਿਹੜੇ ਵੀ ਰਾਹਾਂ ਤੋਂ ਤੁਰਿਆ ਪਰ ਅੱਜ ਆਪਣੇ ਆਪ ਨੂੰ ਉਹ ਮੰਨ ਰਿਹਾ ਕਿ ਮੇਤੋਂ ਗਲਤੀ ਹੋਈ ਪਰ ਜੇ ਨਹੀਂ ਇਹ ਜਿਹੜੇ ਬੰਦੇ ਆ ਉਹ ਰਾਹਾਂ ਤੇ ਤੁਰੇ ਹੋਏ ਉਹ ਕਿਸੇ ਨਾਲ ਨਹੀਂ ਵਿਗਾਰਦੇ ਉਹਨਾਂ ਤਾਂ ਆਪਣਾ ਸੌਦਾ ਵੇਚਣਾ ਫੇਮ ਲੈਣੀ ਬਦਮਾਸ਼ੀ ਕਰਨੀ ਤੇ ਜਾ ਕੇ ਕਬਜ਼ੇ ਕਰਨੇ ਲੋਕ ਨਾਲ ਰੱਖਣੇ ਇਹ ਕੰਮ ਸੀ ਜੇ ਕੋਈ ਵਿਧਾਇਕ ਦੇ ਲੋਕਲ ਦੇ ਖਿਲਾਫ ਬੋਲ ਰਿਹਾ ਉਹ ਉਹਦੇ ਵਿੱਚ ਕੋਈ ਨਾ ਕੋਈ ਸੰਤ ਹੈਗਾ वैसे आ ਇਹਨੂੰ ਵੇਖ ਕੇ ਲੱਗਦਾ ਹੈ ਹਰ ਇੱਕ ਦੇਖਣ ਵਾਲਾ ਹੀ ਕਹਿ ਸਕਦਾ ਕਿ ਇਹ ਇੰਤਿਹਾਰ ਨੰਬਰ ਪਾਲ ਜੀ ਹਾਂ ਉਹ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਭਾਜੀ ਇਹ ਪੋਲੀਟਿਕਲ ਹੈਗੇ ਲੋਕਾਂ ਦੇ ਜੇ ਇਹ ਕੋਈ ਕਾਲੀ ਦਲ ਦਾ ਕੋਈ ਚੰਗਾ ਕੰਮ ਗਨਵਾਏ ਇਹਨਾਂ ਨਾਲ ਚੰਗੇ ਕੀਤੇ ਫਿਰ ਤਾਂ ਮੰਨ ਲਈ ਹੁਣ ਜੇ ਇਹਨਾਂ ਲੋਕਾਂ ਨੇ ਜੋ ਕੋਈ ਬੜੂ ਕੋਈ ਅਟਰੀ ਉਹਦਾ ਕੁਛ ਨਾ ਕੁਛ ਬਣਾ ਕੇ ਪਾ ਜਿੰਦੇ ਜੀ ਬੀਬੀ ਜਗੀਰ ਕੌਰ ਉਹ ਉਹ ਵੀ ਇਹਨਾਂ ਨੂੰ ਜ਼ੀਰੋ ਲੱਗਦੀ ਹੈ ਜਿਹੜਾ ਜਿਹੜਾ ਕੁਝ ਠਹਿਰਾ ਕਰਦਾ ਉਹਨਾਂ ਨੂੰ ਲੱਗਦਾ ਵੀ ਜਿਹੜਾ ਜਿਹੜਾ ਕਮਲਜੀਤ ਦਾ ਉਹ ਬਹੁਤ ਉਹ ਜੀ ਜ਼ੀਰੋ ਦੀ ਫੈਮਲੀ ਵਾਸਤੇ ਕੀਤਾ ਲੋਕਾਂ ਦੀ ਰਾਈਟ ਜੇ ਇਹਨੂੰ ਨਾਂ ਆਪਣਾ ਆਪਦੇ ਨਾਲ ਲਾਉਂਦਾ ਮਲੂਕਾ ਇਹਨੇ ਨਕਸਲਵਾਰੀ ਬਣ ਕੇ ਇਹਨਾਂ ਦੇ ਇਹੋ ਕੁਛ ਇਹਨਾਂ ਨੇ ਕਰਨਾ ਸੀ ਹੁਣ ਉੱਥੇ ਪਤਾ ਨਹੀਂ ਜਿਹੜੀਆਂ ਅਕਾਲੀਆਂ ਦਾ ਵੀ ਹੁਣ ਤਾਂ ਉੱਥੇ ਸਾਰਾ ਨਹੀਂ ਹੁੰਦਾ ਇਹ ਕੁਛ ਜਿਹੜਾ ਜਿਹੜਾ ਕੁਝ ਸਰਾਂ ਨੂੰ ਡੀਲ ਕਰਨਾ ਪੈਂਦਾ ਥੋੜਾ ਜਿਹਾ ਲੋਕਾਂ ਨੂੰ ਟੈਕ ਲੈਂਨ ਤੇ ਉੱਚ ਮੜਾ ਮਟਾ ਵੀ ਉਹਨਾਂ ਨੂੰ ਸੋਚ ਸੋਚ ਕੇ ਲੈ ਬਦਲ ਬਦਲ ਫਿਰ ਬਦਲ ਕਿਹੜੇ ਹਿਸਾਬ ਨਾਲ ਨਕਸਲ ਚੰਗੇ ਨਾ ਖਾੜਕੂ ਚੰਗੇ ਤੇ ਫਿਰ ਬਦਲ ਕੀ ਆ ਖਾਫ ਵਾਲਿਆਂ ਨੂੰ ਲਈਏ ਹਰਿਆਣੇੋਂ ਹਾਂਜੀ ਹਾਂਜੀ ਵਧੀਆ ਹਾਂ ਬਸ ਚਲੋ ਆਪਾਂ ਚੱਲੀਏ ਜਹਾਜ਼ ਚੜ੍ਹਦੇ ਆ ਦੋਨੇ ਆਪਾਂ ਕਰਦੇ ਆ ਆਰਗੇਨਾਈਜ਼ ਹਰਜੀਤ ਸਿੰਘ ਜੀ ਲਖਤਰੀ ਹਾਲੋ ਸਤਿ ਸ਼੍ਰੀ ਅਕਾਲ ਹਰਜੀਤ ਸਿੰਘ ਸਤਿ ਸ਼੍ਰੀ ਅਕਾਲ ਜੀ ਹਰਜੀਤ ਸਿੰਘ ਜਿਆਦਾ ਹੱਦ ਹੀ ਹੋ ਗਈ ਆ ਤਾਂ ਯਾਰ ਜਿਹੜਾ ਆਪਣੇ ਅਲਾ ਮੋਗਲਾਂ ਨੇ ਕੀਤਾ ਜਾਂ ਹੋਰਾਂ ਨੇ ਕੀਤਾ ਉਹਨਾਂ ਕੋ ਵੀ ਆਰ ਹੋ ਗਿਆ ਕੰਮ ਦੇਖੋ ਕੱਲ ਪਰसों ਹੋਰ ਵੀ ਦੋ ਵੀਡੀਓ ਆਈਆਂ ਇੱਕ ਅਕਾਲੀ ਦਲ ਦਾ ਜਿਹੜਾ ਸੀਗਾ ਬਰਤੰਦੀ ਰੋਜੀ ਉਹ ਦੇਖ ਲੋਕ ਕਹ ਰਿਹਾ ਜੀ ਨੇ ਮੈਨੂੰ ਵੋਟਾਂ ਨਹੀਂ ਪਾਈਆਂ ਨਾ ਜੇ ਮੈਂ ਜੇ ਸਰਕਾਰ ਨਾ ਆਈ ਜਾਂ ਮੈਂ ਜਿੱਤ ਗਿਆ ਤਾਂ ਉਹਨਾਂ ਨੂੰ 9811 ਦੇ ਤੱਕ ਮੈਂ ਘੜੀਸੂਗਾ ਪਿੱਛੇ ਇੱਕ ਹੋਰ ਵੀਡੀਓ ਇਹ ਆ ਉਹ ਸ਼ਰੇਆਮ ਉਹ ਗੋਲੀਆਂ ਚੜਾ ਰਹੇ ਉਹਦੇ ਰਿਹਾ ਤੇ ਹੁਣ ਤਾਂ ਹੱਦ ਹੀ ਹੋ ਗਈ ਹੈ ਵੀ ਹੁਣ ਤਾਂ ਬਰਦਾਸ਼ਤ ਤੋਂ ਬਾਹਰ ਹੋ ਗਿਆ ਕੰਮ ਕੋਈ ਤਾਂ ਵੀ ਤੁਹਾਨੂੰ ਕਹਿਣਾ ਦਾ ਨਹੀਂ ਚਾਹੀਦਾ ਵੀ ਹੁਣ ਤਾਂ ਉਹ ਜਿਹੜਾ ਗਦਾਫੀ ਨਾਲ ਉਹ ਕੰਮ ਹੋ ਜੇ ਤਾਂ ਹੋ ਜੇ ਪਰਚੇ ਪਰਚੇ ਨਾਲ ਇਹਨਾਂ ਨੂੰ ਕੁਝ ਨਹੀਂ ਹੋਣਾ ਪਰਚੇ ਹੋ ਜਾਣਗੇ ਕੇ ਚੱਲੀ ਜਾਣਗੇ ਵੀ ਉਹ ਤਾਂ ਜਿਹੜਾ ਅੱਤ ਹੋ ਗਈ ਆ ਹੁਣ ਤਾਂ ਨਹੀਂ ਇਹਨਾਂ ਦਾ ਕੋਈ ਹੈਗਾ ਤੇ ਦੂਜਾ ਦੇਖੋ ਜਿਹੜਾ ਦੂਜਾ ਸਿਰਸੇ ਵਾਲੇ ਤੇ ਗਏ ਨੇ ਸਾਰਾ ਕੁਝ ਪਹਿਲਾਂ ਪਲਾਨਡ ਸੀ ਜੋ ਤਤ ਹੋ ਵੀਕ ਪਹਿਲਾਂ ਵੀ ਦੇ ਸਾਰੇ ਸੀ ਉਹਨਾਂ ਨੇ ਸਿਰਫ ਦੋ ਦਿਨ ਪਹਿਲਾਂ ਹਮੈਦ ਦਾ ਐਲਾਨ ਕੀਤਾ ਵੀ ਲੋਕ ਰੌਲਾ ਪਾਣਗੇ ਜਾਨੂੰ ਵੋਟਾਂ ਪੈ ਜਾਣਗੀਆਂ ਤੇ ਦੋ ਇਹ ਇੱਕ ਟਲ ਜਾਣਗੇ ਤੇ ਹੁਣ ਦੇਖੋ ਤੁਸੀਂ ਜਿਹੜੀ ਵੀਡੀਓ ਦੀ ਗੱਲ ਕੀਤੀ ਉਹ ਯਾਦਵਿੰਦਰ ਦੀ ਉਹ ਇਹ ਵੀ ਵੀ ਸਮਝਦੇ ਕਿੰਨਾ ਸਰੇਆ ਝੂਠ ਬੋਲੀ ਜਾਂਦਾ ਕੋਈ ਉਹਨੂੰ ਗੱਲ ਨਹੀਂ ਆ ਰਹੀ ਉਹਦੀ ਜबान ਕੰਬੀ ਜਾਂਦੀ ਆ ਕਿਸੇ ਵੀ ਗੱਲ ਦਾ ਜਵਾਬ ਨਹੀਂ ਦੇ ਰਿਹਾ ਵੀ ਹੁਣ ਤਾਂ ਆਪ ਹੀ ਹੋ ਗਿਆ ਹੁਣ ਤਾਂ ਸਮਝ ਨਹੀਂ ਆਉਂਦੀ ਇੱਥੇ ਲੋਕ ਬਾਵਜੂਦ ਵੀ ਅਕਾਲੀ ਦਲ ਦੀ ਸਪੋਰਟ ਕਰਦੇ ਪਤਾ ਕੀ ਕਹਿ ਸਕਦੇ ਉਹਨਾਂ ਪਾਰਟੀ ਨਾਲ ਹੈ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਬਰਕੰਦੀ ਇਹ ਕਹਿ ਰਿਹਾ ਵੀ ਜਿਹੜੇ ਮੈਂ ਪਾਈਪ ਕਰੋੜ ਦੇ ਪਾਏ ਨੇ ਜੇ ਮੈਨੂੰ ਵੋਟਾਂ ਨਾ ਪਈਆਂ ਪਾਈਪ ਖਿੱਚਣੇ ਦੇ ਮੈਂ ਟਰੱਕ ਦੇ ਆਪਣੇ 59 11 ਦੇ ਪਿੱਛੇ ਪਾ ਕੇ ਧੂਏ ਨੇ ਕਿਉਂਕਿ ਪਾਈਪ ਉਹਨੇ ਘਰੇ ਬਣਾ ਕੇ ਪੱਥ ਕੇ ਲਿਆ ਕੇ ਪਾਏ ਸੀ ਨਾ ਆ ਕਹਿੰਦਾ ਮੇਰਾ ਕਰੋੜ ਰੁਪਈਆ ਲੱਗਿਆ ਸੀ ਰਾਜਦੀਪ ਸਿੰਘ ਜੀ ਲਾਈਨ ਨੰਬਰ 4 ਹਲੋ ਜੀਦਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੇਕਰ ਜਿਹੜਾ ਸਿੱਖੀ ਦਾ ਬਾਣਾ ਨਾ ਇਹਨੂੰ ਇੱਕ ਤਰ੍ਹਾਂ ਦੀ ਪੋਲਿਟੀਕਲ ਮਾਰਕ ਕਰਕੇ ਇਹਦੇ ਤੇ ਕਿਸੇ ਨਾ ਕਿਸੇ ਤਰੀਕੇ ਦੀ ਸਿੱਖੀ ਬਾਣੇ ਦੇ ਉੱਤੇ ਸਿੱਖੀ ਦੇਖ ਦੇ ਉੱਤੇ ਮਾਰ ਕਰਕੇ ਇਹਦੇ ਤੇ ਪੋਲਿਟਿਕਸ ਸਿੱਧੀ ਜਾ ਰਹੀ ਹੈ ਇਮੋਸ਼ਨਸ ਨੂੰ ਐਕਸਪਲੋਇਟ ਕਰਨਾ ਪੋਲਿਟਿਕਸ ਦਾ ਸਭ ਤੋਂ ਪਹਿਲਾ ਏ ਐਜੰਡਾ ਹੁੰਦਾ ਇਹਨਾਂ ਦਾ ਓਕੇ ਹੁਣ ਸਿੱਖੀ ਦੇ ਪੰਥ ਦੇ ਨੌ ਦੇ ਉੱਤੇ ਸਿੱਖ ਇਹਨਾਂ ਨੇ ਅਕਾਲੀਆਂ ਨੇ ਵੋਟਾਂ ਵਟੀਆਂ ਠੀਕ ਹੈ ਜੀ ਓਕੇ ਹੁਣ ਕਾਂਗਰਸ ਦਰਦੀ ਸੀ ਸਿੱਖਾਂ ਦੇ ਵੋਟਾਂ ਤੇ ਉਹਨਾਂ ਲੈ ਜਵੇ ਉਹਨਾਂ ਲੈ ਜਵੇ ਸੋ ਕਿਤੇ ਨਾ ਕਿਤੇ ਮਾੜਾ ਮੋਟਾ ਵਾਇਲੈਂਸ ਘਟੀ ਹੋਈ ਸੀ ਸਿੱਖਾਂ ਦੇ ਉੱਤੇ ਜੋ ਹੋਈ ਆ ਪਹਿਲਾਂ ਹੁਣ ਅਕਾਲੀ ਵੀ ਸਿੱਖਾਂ ਦੇ ਖਿਲਾਫ ਚੱਲਣਗੇ ਹੁਣ ਸਾਡੇ ਈਮੋਸ਼ਨਸ ਨੂੰ ਐਕਸਪਲੋਇਟ ਕਰਕੇ ਅਸੀਂ ਲਿਆਂਦਾ ਵੀ ਕਿਹਨੂੰ ਬਾਹਰੋ ਕੇਜਰੀਵਾਲ ਨੂੰ ਜਿਹੜਾ ਆ ਫੜਿਆ ਨਹੀਂਦਾ ਬੋਰਨਾ ਠੀਕ ਹੈ ਜੀ ਮਾਦਾ ਟ੍ਰੇਸਾ ਦੇ ਨਾਲ ਉਹ ਫਿਰਦਾ ਰਿਹਾ ਉਹਦਾ ਲਿੰਕ ਹੈ ਉਹਨੂੰ ਜਿਹੜਾ ਮੈਗਾ ਸਿਸੀ ਮਿਲਿਆ ਉਹ ਰੌਕਫੈਲਰ ਫਾਊਂਡੇਸ਼ਨ ਆ ਅਮਰੀਕਾ ਨੇ ਸੋ ਕਹਿਣ ਦਾ ਮਤਲਬ ਇਹ ਆ ਵੀ ਅਸੀਂ ਸਾਡੇ ਇਮੋਸ਼ਨਸ ਨੂੰ ਐਕਸਪਲੋਇਟ ਕਰਕੇ ਅਸੀਂ ਲਿਆਂਗਾ ਕਿਨੂੰ ਬਾਹਰ ਹੁਣ ਗੱਲ ਇਹ ਆ ਕਿ ਵੀ ਅਸੀਂ ਹੋਰ ਕਿਨੂੰ ਲਿਆਉਂਦੇ ਹਮ ਕੱਲ ਜਿਹੜੀ ਆਪਾਂ ਗੱਲ ਕਰਦੇ ਆ ਜਿਵੇਂ ਤੁਸੀਂ ਜਿਹੜਾ ਮੁੰਡਾ ਉੱਥੋਂ ਉਹਦਾ ਨਾਮ ਸੀਗਾ ਜਿਹੜਾ ਲੱਖਾਂ ਲਿਆਂਦਾ ਤੁਸੀਂ ਇਹਦੀ ਪਿਛਲੀ ਇੰਟਰਵਿਊ ਜਦੋਂ ਕਹੀ ਆ ਮਤਲਬ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਬੰਦੇ ਦੇ ਵਿੱਚ ਮੇਰੇ ਤੋਂ ਬਾਅਦ ਕਈ ਵਾਰੀ ਚੰਗੇ ਚੇਂਜਸ ਵੀ ਹੁੰਦੇ ਆ ਇਹ ਜੀ ਗੱਲ ਹੈਗੀ ਵੀ ਉਹ ਆਪਾਂ ਜਿਹੜੇ ਬੰਦੇ ਨੂੰ ਮਾੜਾ ਕਹਿੰਦੇ ਆ ਇਹ ਗਲਤ ਆ ਹੁਣ ਗੱਲ ਸੋਚਣ ਵਾਲੀ ਇਹ ਆ ਵੀ ਉਹਨੇ ਪਿਛਲੀ ਵਾਰੀ ਜਦੋਂ ਇੰਟਰਵਿਊ ਸੀਗੀ ਰਮਾਣਾ ਸਾਹਿਬ ਨੇ ਕਰਵਾਈ ਉਹਦੇ ਇੱਕ ਘੰਟੇ ਦੀ ਇੰਟਰਵਿਊ ਜਿੱਕਰ ਤੋਂ ਘੱਟ ਉਹਦੇ ਵਿੱਚ ਇਹ ਨਹੀਂ ਕਿਹਾ ਸੀ ਅ ਮੈਨੂੰ ਕਹਿੰਦੇ ਆ ਵੀ ਤੂੰ ਪੋਲਿਟਿਕਸ ਦੇ ਵਿੱਚ ਜੇ ਨਾ ਵੜਿਆ ਤੈਨੂੰ ਮਾਰ ਦੇਣਾ ਇਹਨਾਂ ਨੇ ਤੈਨੂੰ ਛੱਡਣਾ ਨਹੀਂ ਹੈਗਾ ਜੇ ਤੂੰ ਪੋਲਿਟਿਕਸ ਦੇ ਵਿੱਚ ਨਾ ਐਂਟਰ ਕੀਤਾ ਠੀਕ ਹੈ ਓਕੇ ਹੁਣ ਜੋ ਆਪਾਂ ਕਹਿੰਦੇ ਆ ਵੀ ਦਾੜੀ ਵਾਲੇ ਬੰਦੇ ਨੂੰ ਕੀਤਾ ਨਾ ਪੋਲਿਟਿਕਸ ਸਾਰੀ ਉਹੀ ਜਿਹੜੇ ਕਿਸੇ ਨੇ ਪਿੰਡਾਂ ਦੇ ਵਿੱਚ ਵੱਟਾਂ ਵੱਢਣ ਪਿੱਛੇ ਜ਼ਮੀਨਾਂ ਪਿੱਛੇ ਇਹ ਆਮ ਹੀ ਹੁਣਤਾ ਹੁੰਦੇ ਰਹੇ ਆਪਾਂ ਨੂੰ ਪਤਾ ਹੀ ਉੱਥੋਂ ਆਇਆ ਵੀ ਕੀ ਕੁਝ ਹੁੰਦਾ ਰਿਹਾ ਜ਼ਮੀਨਾਂ ਪਿੱਛੇ ਹੁਣ ਗੱਲ ਇਹ ਆ ਵੀ ਉਹ ਕਹਿ ਰਿਹਾ ਵੀ ਫਲਾਣੇ ਨੇ ਕਰਾਤਾ ਆਪਾਂ ਨੂੰ ਪਤਾ ਵੀ ਮਲੂਕਾ ਕਰਪਟਾ ਕਾਲੀ ਸਾਰੇ ਪੈਸੇ ਦੇ ਪਰੇ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਪਰ ਹੁਣ ਰੌਲਾ ਇਹ ਆ ਵੀ ਜੋ ਉਹਨੇ ਆਪ ਸਟੇਟਮੈਂਟ ਦਿੱਤੀ ਆ ਵੀ ਤੈਨੂੰ ਮਾਰ ਦੇਣਾ ਇਹਨਾਂ ਨੇ ਨਹੀਂ ਜਿੱਕ ਪੋਲਿਟਿਕਸ ਨਾ ਬੜਿਆ ਬਈ ਓਕੇ ਸੀ ਵੀ ਸਾਡੇ ਮੁੰਡੇ ਤੋਂ ਇੱਕ ਮੁੰਡਾ ਮਰ ਗਿਆ ਉਹਦੇ ਦੋ ਛੋਟੀਆਂ ਛੋਟੀਆਂ ਕੁੜੀਆਂ ਨੇ ਹੁਣ ਇਹਨਾਂ ਨੇ ਇਹ ਕਹਿੰਦਾ ਵੀ ਕੁੜੀਆਂ ਦੇ ਵਿਆਹ ਕਰਾ ਰਿਆ ਠੀਕ ਆ ਜੀ ਓਕੇ ਚਲੋ ਬੰਦਾ ਸੁਧਰ ਜਾਂਦਾ ਪਰ ਹੁਣ ਗੱਲ ਤਾਂ ਇਹ ਆ ਵੀ ਇੱਕ ਸਿੱਖੀ ਬਾਣੇ ਵਾਲੇ ਬੰਦੇ ਤੇ ਧੱਕਾ ਹੋਇਆ ਉਹਨੂੰ ਮੁੱਦਾ ਲੈ ਕੇ ਦੂਸਰੇ ਇੱਕ ਪੋਲੀਟੀਸ਼ੀਅਨ ਨੇ ਜਿਹੜਾ ਉੱਥੇ ਦਾ ਮੇਨ ਪੋਲੀਟੀਸ਼ੀਅਨ ਆਮੋਲੂਕਾ ਉਹਦੇ ਖਿਲਾਫ ਬੋਲ ਕੇ ਇਹ ਵੀ ਤਾਂ ਇੱਕ ਤਰ੍ਹਾਂ ਦੀ ਪੋਲੀਟੀਕਲ ਸਟੇਟਮੈਂਟ ਹੀ ਹੋਈ ਵੀ ਉਹਨੇ ਕਰਾਇਆ ਹਾਲਾਂਕਿ ਜੇ ਕੱਲ ਉਹਦੇ ਤੇ ਕੋਈ ਕੋਰਟ ਕੇਸ ਹੁੰਦਾ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਵੀ ਉਹ ਤੋਂ ਲੀਗਲੀ ਇਹ ਸਾਬਤ ਨਹੀਂ ਕਰਾਉਣਾ ਵੀ ਉਹਨੇ ਕਰਾਇਆ ਹੂੰ ਉਹ ਗੱਲ ਇਹ ਆ ਜਾਂਦੀ ਹੈ ਵੀ ਜਿਹੜੇ ਬੰਦੇ ਕੈਮਰੇ ਦੇ ਵਿੱਚ ਆਏ ਨੇ ਜਿਨ੍ਹਾਂ ਦੀਆਂ ਸ਼ਕਲਾਂ ਉਹ ਬੰਦੇ ਨੇ ਆ ਕੀਤਾ ਉਹਨੂੰ ਫੜੋ ਉਹ ਬੰਦਿਆਂ ਤੇ ਡੰਡਾ ਚੜ੍ਹੇ ਉਹ ਨੌਨ ਲੈਣ ਵੀ ਮਨੂਕੇ ਦੇ ਸਾਨੂੰ ਭੇਜਿਆ ਫੇਰ ਗੱਲ ਬਣਦੀ ਪਰ ਹੁਣ ਆਦਰਵਾਇਸ ਅਸੀਂ ਧਰਨੇ ਦੇਵਾਂਗੇ ਹਾਈਵੇ ਰੋਕਾਂਗੇ ਇੱਥੋਂ ਤਾਂ ਇਹ ਪਤਾ ਲੱਗਦਾ ਵੀ ਇਹ ਸਿੱਖੀ ਬਾਣੀ ਨੂੰ ਫਿਰ ਫਿਰ ਫਾਰਮ ਰਾਜਦੀਪ ਰਿਫਾਰਮ ਕੀ ਹੈ ਕੌਣ ਕਰੂਗਾ ਕੰਕ੍ਰਿਸ਼ਨ ਨੇ ਸਾਨੂੰ ਕੁੱਟਤਾ ਅਕਾਲੀਆਂ ਤੋਂ ਤੁਸੀਂ ਕਹਿੰਦੇ ਹੋ ਕਰਪਟ ਨੇ ਬਾਹਰ ਲਾਸੀਂ ਆਉਣ ਨਹੀਂ ਦੇਣਾ ਲੋਕਾਂ ਨੂੰ ਤੁਸੀਂ ਕਹਿੰਦੇ ਹੋ ਜੇ ਉਹ ਬਾਹਰ ਆ ਕੇ ਬੋਲਦਿਆ ਤਾਂ ਪੋਲਿਟਿਕਲ ਸਟੇਟਮੈਂਟ ਹੈ ਪਹਿਲਾਂ ਭਾਈ ਸਾਹਿਬ ਨੰਗਿਆਂ ਕਰਕੇ ਕੋਈ ਨਹੀਂ ਸੀ ਵੀਡੀਓ ਬਣਾਉਂਦਾ ਆ ਜਿਹੜਾ ਨਵਾਂ ਕੰਮ ਸ਼ੁਰੂ ਹੋਇਆ ਪਾ ਚਲੋ ਛੱਡੋ ਸਾਰੀਆਂ ਚੀਜ਼ਾਂ ਮੈਂ ਤੁਹਾਡੀਆਂ ਮੰਨਤੀਆਂ ਸ਼ੁਰੂਆਤ ਕਿੱਥੋਂ ਹੋਊ ਰਿਫਾਰਮ ਕਿੱਥੋਂ ਹੋਊ ਦੇਖੋ ਰਿਫਾਰਮ ਹੁਣ ਇਹ ਆ ਵੀ ਆਪਾਂ ਨੂੰ ਇਹ ਚੰਗੀ ਤਰ੍ਹਾਂ ਪਤਾ ਵੀ ਸਿੱਖੀ ਨੂੰ ਹੁਣ ਕਈ ਕੀਤਾ ਗਿਆ ਮੈਂ ਛੱਡ ਤਾਂ ਗੱਲਾਂ ਮੁੱਕ ਜਿਹੜੀ ਸ਼ੁਰੂ ਕਰੋ ਐਕਸਪਲੋਇਟੇਸ਼ਨ ਤਾਂ ਛੱਡਦੇ ਹੋਰ ਪੋਲੀਟੀਕਲ ਬੰਦੇ ਕਰਨਗੇ ਤਿੰਨੇ ਪਾਰਟੀਆਂ ਕਰਨਗੇ ਪਰ ਆਮ ਜਨ ਸੁਧਾਰਨ ਕਿਵੇਂ ਹੋ ਸਕਦਾ ਦੇਖੋ ਇਹ ਪੋਲੀਟੀਕਲ ਪ੍ਰੋਬਲਮ ਨਹੀਂ ਰਹੇਗੀ ਜੋ ਪੰਜਾਬ ਦੀ ਪ੍ਰੋਬਲਮ ਸੋਲਵ ਹੋਣੀ ਵਾਲੀ ਹੈ ਨਾ ਇਹ ਪੋਲਿਟਿਕਲ ਪ੍ਰੋਬਲਮ ਨਹੀਂ ਰਹੇਗੀ ਹੁਣ ਜਿਵੇਂ ਆਪਾਂ ਢੰਡਰੀਆਂ ਦੀ ਗੱਲ ਕਰਦੇ ਆ ਇਹ ਜਿਹੜੇ ਬੰਦੇ ਪ੍ਰਚਾਰਕ ਨੇ ਸੱਚੇ-ਸੁੱਚੇ ਸਾਫ਼-ਸੁਥਰੇ ਬੰਦੇ ਆ ਜਿਹੜੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਜਾ ਕੇ ਮਾੜੀ-ਮੋਟੀ ਇਹਨਾਂ ਨੂੰ ਜਿਵੇਂ ਆਪਾਂ ਗੱਲ ਕਰਦੇ ਆ ਵੀ ਉੱਥੇ ਖੇਤੀ ਦੇ ਵਿੱਚ ਕੀ ਹੋ ਰਿਹਾ ਉਹਨਾਂ ਨੂੰ ਸਿੱਖੀ ਦੇ ਪ੍ਰਚਾਰ ਦੇ ਨਾਲ-ਨਾਲ ਲੋਕਾਂ ਦੇ ਵਿੱਚ ਅਵੇਅਰਨੈਸ ਲਿਆਉਣੀ ਬਹੁਤ ਜ਼ਰੂਰੀ ਆ ਆਪਾਂ ਨੂੰ ਜਿਹੜਾ ਅੱਤਵਾਦ ਹੋਸ਼ ਤੋਂ ਕੰਮ ਲੈਣਿਆ ਦਾ ਟਾਈਮ ਆ ਜੋਸ਼ ਨਾਲ ਹੀ ਕੰਮ ਲੈਨੇ ਆ ਔਰ ਜੋਸ਼ ਨੂੰ ਹੀ ਹੁਣ ਤੱਕ ਐਕਸਪਲੋਇਟ ਕੀਤਾ ਗਿਆ ਸਿੱਖਾ ਦੇ ਜਿਹੜੇ ਪ੍ਰਚਾਰਕ ਨੇ ਚੰਗੇ ਧਰਮ ਦੀ ਗੱਲ ਕਰਦੇ ਆ ਨਾਨਕ ਦੀ ਜਿਹੜੀ ਆਈਡੀਓਲੋਜੀ ਆ ਉਹਨੂੰ ਪ੍ਰੋਮੋਟ ਕਰਦੇ ਆ ਉਹਨਾਂ ਬੰਦਿਆਂ ਨੂੰ ਪੋਲੀਟੀਕਲੀ ਵੀ ਉਹ ਪੋਲੀਟੀਕਲ ਸਟੇਟਮੈਂਟ ਉਹਨਾਂ ਨੂੰ ਇਹ ਕਿਹਾ ਜਾਵੇ ਵੀ ਤੁਸੀਂ ਕੋਈ ਪੋਲੀਟੀਕਲ ਸਟੇਟਮੈਂਟ ਨਹੀਂ ਦੇਣੀ ਬਿਲਕੁਕੁਲ ਹੀ ਤੁਸੀਂ ਸਿਰਫ ਲੋਕਾਂ ਨੂੰ ਅਵੇਅਰ ਕਰਨਾ ਉਹਨਾਂ ਦੀ ਜਿਹੜੀ ਜੀਵਨ ਜਾਚ ਆ ਗੁਰਬਾਣੀ ਦੀ ਉਹ ਤੁਸੀਂ ਲੋਕਾਂ ਦੇ ਵਿੱਚ ਜੱਫੀ ਨਹੀਂ ਵਾੜਦੇ ਉਹਨਾਂ ਦੇ ਦਿਮਾਗ ਦੇ ਵਿੱਚ ਲੋਕਾਂ ਨੇ ਇੱਕ ਨਹੀਂ ਕੁੱਟ ਖਾਈ ਜਾਣੀ ਆ ਇੱਕ ਨਹੀਂ ਕੁੱਟੀ ਜਾਣਾ ਜਿਹੜੀ ਵੀਡੀਓ ਦੀ ਗੱਲ ਆ ਕੈਮਰੇ ਹੁਣ ਆਏ ਆ ਹੁੰਦਾ ਪਹਿਲਾਂ ਵੀ ਹੁਣ ਕੈਮਰੇ ਔਨ ਕਰਕੇ ਹਾਈਲਾਈਟ ਹੋਣ ਲੱਗੀਆਂ ਗੱਲਾਂ ਆ ਇਹ ਤੋ ਕਹਿਣਾ ਮਤਲਬ ਇਹ ਬਿਲਕੁਲ ਨਾਨਕ ਦੀ ਗੱਲ ਦੇ ਨਾਲ ਫਿਰ ਜਾਬਰ ਨੂੰ ਜਿਹੜਾ ਬਾਬਰ ਨੂੰ ਜਾਬਰ ਕਹਿੰਦਾ ਨਾਨਕੇ ਕਹਿ ਕੇ ਗਿਆ ਫਿਰ ਉਹ ਨਾਲ ਇਹ ਗੱਲ ਚੱਲਣੀ ਆ ਇਹ ਨਹੀਂ ਤੁਸੀਂ ਕਹਿ ਸਕਦੇ ਪਹਿਲਾਂ ਸਮਾਜ ਸੁਧਾਰਕ ਬਣ ਜਿਏ ਜ਼ੁਲਮ ਦੇ ਖਿਲਾਫ ਫਿਰ ਗੱਲ ਕਰਾਂਗੇ ਅਵੇਰਨੈਸ ਦੀ ਗੱਲ ਠੀਕ ਹੈ ਚੰਗਾ ਮਾੜਾ ਸਮਝਾਇਆ ਜਾਵੇ ਢੱਡਰੀਆਂ ਵਾਲਾ ਸਮਝਾਉਂਦਾ ਹੀ ਫਿਰਦਾ ਹੀ ਦੇਖ ਲਓ 3 ਕਿਲੋਮੀਟਰ ਗੱਡੀ ਭਜਾ ਕੇ ਗਿਆ ਪਿੱਛੇ ਸ਼ਰਿਆਂ ਮਹਮਲਾ ਹੋਇਆ ਇਹਦਾ ਮਤਲਬ ਫਿਰ ਜਦ ਉਹ ਹਮਲਾ ਕਰ ਗਏ ਫਿਰ ਢੱਡਰੀਆਂ ਵਾਲਾ ਬਹਿ ਜੇ ਵੀ ਚੰਗਾ ਗੁਰਨਾਨਕ ਦੀ ਗੱਲ ਕਰਦੇ ਆ ਤੁਸੀਂ ਹਮਲਾ ਕਰਤਾ ਤੁਸੀਂ ਠੀਕ ਹੋ ਜ਼ੁਲਮ ਦੇ ਖਿਲਾਫ ਤਾਂ ਬੋਲਣਾ ਹੀ ਪੈਣਾ ਰਾਜਦੀਪ ਸਿੰਘ ਜੀ ਉਹਦਾ ਠੀਕ ਹੈ ਸੱਚ ਉਹਦੇ ਸ਼ਬਦ ਵਧੀਆ ਹੋ ਸਕਦੇ ਆ ਉਹ ਜ਼ੋਰ ਤੋਂ ਪੜਾ ਹੋ ਕੇ ਹੋ ਸਕਦਾ ਇਹ ਤਾਂ ਸਾਡੇ ਖੂਨ ਦੇ ਵਿੱਚ ਹੈ ਸਾਡੇ ਖਿੱਤੇ ਦੇ ਵਿੱਚ ਹੈ ਰਹੀ ਗੱਲ ਲੱਖੇ ਦੀ ਪੋਲਿਟਿਕਲ ਵਾਲੇ ਪਾਸੇ ਉਹਨੂੰ ਠੀਕ ਆ ਕਿਸ ਨੇ ਕਹਿਤਾ ਉਹ ਤਾਂ ਰਾਸੀ ਜੀਵਨ ਚ ਵੱਡ ਜਾ ਪਰ ਜਿਹਨੇ ਗੋਲੀ ਮਾਰਨੀ ਆ ਜੀਵਨ ਦੇ ਵਿੱਚ ਵੀ ਮਾਰ ਦੇਣੀ ਆ ਕਿਹੜਾ ਮਰੇ ਨਹੀਂ ਤੁੰਬਾ ਤੁੰਬਾ ਕਰਕੇ ਉੜ ਗਿਆ ਰਾਸੀ ਬਥੇਰੇ ਇੱਥੇ ਆਇਆ ਤੇ ਤੁਰ ਗਿਆ ਉਹ ਗੱਲ ਇਹ ਹੈ ਜੇ ਇਹ ਗੱਲ ਕਹੀਏ ਵੀ ਰਾਜਨੀਤੀ ਤੋਂ ਪ੍ਰੇਰਿਤ ਹੈ ਉੱਥੇ ਬਹੁਤ ਪਿੰਡ ਨੇ 100 ਪਿੰਡ ਵਾਲਦਾਲੇ 50 70 ਪਿੰਡ ਹੋਣੇ ਨੇ ਉਹਦੇ ਇੱਕ ਚ ਹੋਰ ਨਹੀਂ ਕੋਈ ਬੋਲਦਾ ਲੱਖਾ ਵੀ ਚੁੱਪ ਕਰਕੇ ਬੈਠਦਾ ਹੈ ਲੱਖੇ ਨੇ ਵੀ ਕਿਹੜਾ ਕੋਈ ਲੈਣਾ ਜਿਹੜੀ ਫੇਮ ਦੀ ਗੱਲ ਹੈ ਫੇਮ ਉਹਦੀ ਉਈਓ ਬਹੁਤ ਹੈ ਜੇ ਤੁਸੀਂ ਕਹੋ ਵੀ ਉਹਨੂੰ ਜਾਣਦੇ ਨਹੀਂ ਲੋਕ ਉਹਨੂੰ ਮਿਲਦੇ ਨਹੀਂ ਲੋਕ ਤੇ ਉਹ ਕਿਉਂਕਿ ਕਿਸੇ ਸਮੇਂ ਉਹ ਨਾਲ ਹੀ ਰਹਿੰਦਾ ਰਿਹਾ ਇਸ ਵਿਧਾਇਕ ਦੇ ਤੇ ਉਹਦੇ ਕੋਲੋਜ਼ ਰਿਹਾ ਪਰ ਵਿਗੜੋ ਤਾਂ ਗੱਲ ਉੱਥੋਂ ਪਈ ਜਾ ਉਹਨੇ ਕਿਹਾ ਵੀ ਅਸੀਂ ਤਾਂ ਕਿਸੇ ਦਾ ਹੀ ਗੱਲ ਮੰਨ ਕੇ ਉਹਦੇ ਨਾਲ ਹੀ ਤੁਰਦੇ ਰਹੇ ਸਾਡੀ ਕੀ ਗੱਲ ਪਤਾ ਨਹੀਂ ਕਿੱਥੋਂ ਕਿਹੜੇ ਬੰਦੇ ਨੇ ਪੈਦਾ ਹੋ ਜਾਣਾ ਪਰ ਠੀਕ ਹੈ ਇਹ ਤੁਹਾਡੀ ਗੱਲ ਮੈਂ ਸਮਝ ਰਿਹਾ ਸ਼ਾਸਤਰ ਤੇ ਸ਼ਾਸਤਰ ਦੀ ਗੱਲ ਹੈ ਜਿਹੜੀ ਇਹ ਠੀਕ ਹੈ ਨਾਲ ਪੜ੍ਹਾਈ ਵੀ ਨਾਲ ਚਾਹੀਦੀ ਹੈ ਪਾਪੀ ਨੂੰ ਦੰਡ ਦੇਣ ਦੀ ਵੀ ਗੱਲ ਚਾਹੀਦੀ ਹੈ ਪਰ ਇਉਂ ਨਹੀਂ ਕਹਿ ਸਕਦੇ ਵੀ ਹੁਣ ਪੜ੍ਹਾਈ ਦੀ ਉਹ ਗੱਲ ਕਰੋ ਤੇ ਦੰਡ ਦੇਣ ਦੀ ਗੱਲ ਨਾ ਕਰੋ ਫੇਰ ਵੀ ਸਾਡੇ ਕੋਲ ਨਹੀਂ ਮੀਰੀ ਤੇ ਪੀੜੀ ਦਾ ਕਨਸੈਪਟ ਤੇ ਹੋਵਾ ਭਗਤੀ ਤੇ ਸ਼ਕਤੀ ਦਾ ਕਨਸੈਪਟ ਤੇ ਹੋਵਾ ਸਾਖਰਤਾ ਉਸ ਪੰਜਾਬ ਦੇ ਲੋਕਾਂ ਨੂੰ ਮੁਕਤ ਕਰੂ ਇਹ ਗੱਲ ਠੀਕ ਹੈ ਪਰ ਸਾਖਰਤਾ ਕਰਦੇ ਕਰਦੇ ਉਹੀ ਨਾ ਵੀ ਸਾਡੀ ਹੋਂਦ ਹੀ ਖਤਮ ਹੋ ਜਾਏ ਉਹ ਲਾਚਾ ਇਹ ਠੀਕ ਹੈ ਵੀ ਨੰਗੇ ਪਹਿਲਾਂ ਹੁੰਦੇ ਹੋਏ ਠੀਕ ਬਿਲਕੁਲ ਤੁਹਾਡੀ ਗੱਲ ਠੀਕ ਆ ਜਾਂ ਟਾਰਚਰ ਹੋਏ ਨੇ ਮੁੰਡੇ ਹੋਏ ਨੇ ਨਕਸਲ ਹੋਏ ਨੇ ਸਭ ਤੋਂ ਪਹਿਲਾਂ ਪੁਲਿਸ ਕੀ ਕਰਦੀ ਅੰਦਰ ਵੜਦੀ ਸਾਰ ਉਹਨੂੰ ਅਲਫ ਨੰਗਿਆਂ ਕਰਦੀ ਹੈ ਹੋਰ ਦੂਜਾ ਕੰਮ ਹੀ ਨਹੀਂ ਉਹ ਕਰਦੇ ਪਹਿਲਾ ਕੰਮ ਇਹ ਵੀ ਇਹਦੇ ਕੱਪੜੇ ਲਾਹੋ ਬਸ ਇਹ ਤਾਂ ਮਰਦਾਂ ਦੀ ਗੱਲ ਹੈ ਖੜਕੂ ਸੰਘਰਸ਼ ਦੇ ਸਮੇਂ ਇਸਤਰੀਆਂ ਨਹੀਂ ਲੰਗੀਆਂ ਕੀਤੀਆਂ ਭੈਣਾ ਭਾਈ ਭਾਈਆਂ ਦੇ ਸਾਹਮਣੇ ਭੈਣਾ ਉਹਨਾਂ ਦੀਆਂ ਮਾਵਾ ਕਿੰਨੇ ਕਿੰਨੇ ਉਹ ਕੇਸ ਨੇ ਤੇ ਕਿੱਥੇ ਕਿੱਥੇ ਲਿਖਿਆ ਇਹ ਤਾਂ ਗੱਲ ਠੀਕ ਹੈ ਟੌਰਚਰ ਦੀ ਇੱਕ ਸਭ ਤੋਂ ਵੱਡੀ ਵਿਧੀ ਹੈ ਕਿ ਇਸ ਨੂੰ ਨੰਗਾ ਕਰੋ ਪਰ ਉਹ ਪੁਲਿਸ ਕਰ ਸਕਦੀ ਹੈ ਕਿਸੇ ਨੂੰ ਟੌਰਚਰ ਜਦ ਕਰਦੀ ਹੈ ਕੁੰਡੇ ਬੰਦ ਕਰਕੇ ਪਰ ਬਾਹਰਲਾ ਜੋ ਆ ਕੇ ਥਾਣੇ ਦੇ ਵਿੱਚ ਕੋਈ ਮੂਵੀ ਬਣਾ ਕੇ ਲੈ ਉੱਪਰ ਦੀ ਜ਼ੁਲਮ ਵੀ ਕੁਝ ਨਹੀਂ ਹੈ ਜੇ ਇਹਦੇ ਬਾਰੇ ਕੋਈ ਲਖੇ ਨੇ ਬੋਲਤਾ ਫਿਰ ਉਹ ਠੀਕ ਸੀ ਉਹਦਾ ਪੈਂਤੜਾ ਹੋ ਉਹ ਕੋਈ ਕਿਸੇ ਪਾਸਿਓ ਤੁਸੀਂ ਕਹਿ ਲਓ ਉਹਨੂੰ ਫੇਮ ਲੈਣ ਲਈ ਜਾਂ ਰਾਜਸੀ ਜੀਵਨ ਲਈ ਜਾਂ ਕੁਝ ਲਈ ਤੇ ਫਿਰ ਰਿਫਾਰਮ ਕਿੱਥੋਂ ਸ਼ੁਰੂ ਹੋ ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਉਹ ਗਵਰਨੈਂਸ ਦੇ ਆਲੇ ਪਾਸੋਂ ਠੀਕ ਹੋ ਗਿਆ ਆ ਠੀਕ ਹੋ ਜੋ ਮੇਰੇ ਖਿਆਲ ਸ਼ੁਰੂਆਤ ਤੇ ਉੱਥੋਂ ਕਰਨੀ ਪੈਣੀ ਆ ਵੀ ਜੇ ਨਸ ਪਾਉ ਨਾ ਬੁਚੜਾਂ ਦੇ ਸਾਰੀਆਂ ਚੀਜ਼ਾਂ ਠੀਕ ਹੋਣਗੀ ਸਮਾਂ ਲੱਗੂ ਪਰ ਹੋਜੂ ਪਰਮਜੀਤ ਸਿੰਘ ਦੀ ਲਾਈਨ ਨੰਬਰ 5 ਸਤਸਿਗਗਵਾਲ ਜੀ ਸਾਹਿਬ ਸਸਿਕਾ ਭਾਈ ਜੀ ਭਾਜੀ ਲਖੇ ਬਾਈ ਦੀ ਜਿਹੜਾ ਦੀਦਾ ਜਲੇਰੀ ਨੂੰ ਸਲਾਮ ਕਰਦੇ ਵਧੀਆ ਕੰਮ ਕੀਤਾ ਉਹਨੇ ਬਾਕੀ ਦਾ ਨਾਮ ਐਵੇਂ ਆਏ ਆ ਬੰਦੇ ਨੇ ਕੰਮ ਕੀਤੇ ਆ ਬਾਕੀ ਉਹ ਆਪਣਾ ਕੈਲਗਰੀ ਵਾਲਾ ਪਾਉ ਹੈਗਾ ਨਾ ਪਾਉ ਆ ਪਰ ਉਹ ਪਾਉਾਂ ਵਾਲੇ ਦਾ ਗੱਲ ਉਹਦੀ ਬੜੀ ਗਰੀਜੀ ਹੁੰਦੀ ਆ ਸਤਿ ਸ੍ਰੀ ਅਕਾਲ ਜੀ ਇਸ ਸਿੰਘ ਜੀ ਲਾਈਨ ਨੰਬਰ 2 ਹਾਂ ਜੀ ਭਾਜੀ ਸਤਿਗੁਰ ਜੀ ਸਤਿ ਸ੍ਰੀ ਅਕਾਲ ਜੀ ਬਾਈ ਤੁਹਾਡੇ ਪ੍ਰੋਗਰਾਮ ਚ ਪਹਿਲੀ ਵਾਰੀ ਕਾਲ ਕਰ ਰਿਹਾ ਹਾਂ ਤੇ ਮੈਂ ਉਥੋਂ ਦਾ ਜੰਪਾ ਲੈਂ ਭਾਈ ਰੁਪਏ ਦਾ ਨਾ ਤਾਂ ਗੱਲ ਕਰ ਰਿਹਾ ਜੀ ਹਾਂਜੀ ਦੱਸੋ ਜੀ ਬਸ ਵੈਸੇ ਮੇਰਾ ਪਿੰਡ ਭਦੌੜਾ ਹੈ ਪਰ ਮੇਰੇ ਫਾਦਰ ਸਾਹਿਬ ਡੈਥ ਹੋ ਕਰਕੇ ਮੇਰੇ ਨਾਨਕੇ ਸਾਰੀ ਮੇਰੇ ਭਾਈ ਰੁਪਏ ਹੀ ਜਾ ਰਹੀ ਹੈ ਜਿਹੜੀ ਜਿਹੜੀ ਇਹ ਜ਼ਮੀਨ ਦੀ ਗੱਲ ਕਰਦਾ ਲੱਖਾ ਇਹ ਬਾਕੀ ਉਹ ਤੱਕਾ ਹੋਇਆ ਬਹੁਤ ਘਰ ਬੇਕਾਰ ਕਰਤੀ ਇਹਨਾਂ ਦੀ ਪਿੰਡ ਵੀ 220 ਕਿਲੇ ਦਾ 90 ਇਹਨਾਂ ਨੇ ਜਿਹੜੇ ਗੁਰਦਾਰੇ ਦੇ ਨਾਂ ਨਹੀਂ ਗਏ ਤੇ ਇੱਥੇ ਵੀ 160 ਕਿਲੇ ਲੱਪੇ ਆ ਜਿਹੜੇ ਉਹਦੀ ਲੱਖੇ ਦੀ ਗੱਲ ਕਰਦੇ ਆ ਲੱਖੇ ਨੂੰ ਮੈਂ ਨਿੱਜੀ ਤੌਰ ਤੇ ਇੱਕ ਵਾਰੀ ਕਿਸੇ ਫੈਸਲੇ 'ਚ ਮਿਲਿਆ ਸੀਗਾ ਮੈਂ ਕਿਸੇ ਹੋਰ ਪਾਰਟੀ ਕੋਲ ਗਿਆ ਸੀ ਉਹ ਹੋਰ ਪਾਰਟੀ ਕੋਲ ਗਿਆ ਸੀਗਾ ਵੀ ਕਿਸੇ ਰੌਲਾ ਸੀਗਾ ਮੱਛੀ ਕੱਢਣੀ ਸੀ ਤੇ ਜਾਨੀ ਕਿ ਤੋਬੇ ਚੋਂ ਕਿਸੇ ਰੌਲਾ ਪਿਆ ਸੀ ਆਸ ਤੇ ਉਹ ਲੱਖਾ ਦੂਜੇ ਬੰਦੇ ਪਾਸਿਓਂ ਸੀਗਾ ਮੈਂ ਦੂਸਰੇ ਪਾਸੇ ਲੱਖੇ ਨੇ ਮੈਂ ਲੱਖਾ ਮੈਨੂੰ ਕਹਿੰਦਾ ਕਹਿੰਦਾ ਬਾਈ ਜੀ ਮੱਛੀ ਮੈਂ ਕੱਢ ਕੇ ਜਾਨੇ ਮੈਂ ਬਾਈ ਜੀ ਤੁਸੀਂ ਕੱਢ ਕੇ ਲੈ ਜਾਓ ਸਾਨੂੰ ਕੋਈ ਤਰਾਇ ਨਹੀਂ ਇੱਕ ਪੈਸਾ ਦਾ ਤਰਾਇ ਨਹੀਂਗਾ ਤੁਸੀਂ ਲਿਜਾ ਸਕਦੇ ਹੋ ਮੱਛੀ ਪਰ ਸਾਡੀ ਫੈਸਲਾ ਕਰਾ ਦਿਓ ਜੇ ਮੱਛੀ 230 ਹੈ ਆਪਣੀ ਮੱਛੀ ਨਿਕਲੀ ਅੱਜ ਜੇ ਇਹ ਮਸਲੇ ਦੇ ਮੱਛੀ ਦਾ ਕਸੂਰ ਹੋਇਆ ਸਾਡੇ ਬੰਦੇ ਦਾ ਕਸੂਰ ਹੈ ਮਤੋਂ 4,60,000 ਰੁਪਏ ਦੇਉਂਗਾ ਨਹੀਂ 2,30,000 ਆਪਣੇ ਕੋਲ ਹੈਗਾ ਮੈਨੂੰ ਤਾਂ ਖਾਸ ਮਿੱਤਰ ਨੇ ਫੈਸਲਾ ਹੋਇਆ ਸਾਹਮਣੇ ਸਾਰੀ ਪੰਚਾਇਤ ਦੇ ਸਾਹਮਣੇ ਉਹ ਬੰਦੇ ਨੇ ਗੱਲਾਂ ਕੱਢੀਆਂ ਏ ਇੰਨੀ ਗੈਰਤ ਵਾਲਾ ਬੰਦਾ ਵੀ ਤੂੰ ਮੈਨੂੰ ਗਲਤ ਥਾਂ ਲੈ ਕੇ ਸੈਨ ਕਰਾਇਆ ਤੇ ਹੁਣ ਜਿਹੜਾ ਭਾਈ ਰੂਪਾ ਤੁਹਾਡਾ ਪਿੰਡ ਆ ਬਾਈ ਜੀ ਉਹ ਜ਼ਮੀਨ ਆ ਜਿਹੜੀ ਉਹ ਪਿੰਡ ਦੀ ਸ਼ਾਮਲਾਟ ਆ 160 ਕਿਲ ਨਹੀਂ ਭਾਈ ਜੋ ਪਿੰਡ ਦੀ ਜ਼ਾਂਵਲਾਟ ਨਹੀਂ ਉਹ ਮੇਰੇ ਨਾਨਕੇ ਬੇਸਿਕਲੀ ਮੈਂ ਜੰਮਿਆ ਬਲੇ ਉਹ ਪਿੰਡ ਦੇ ਲੋਕਾਂ ਨੇ ਦਾਨ ਦਿੱਤੀ ਰੂਪ ਲੰਗਰ ਦੇ ਨਾਲ ਦੀ ਜ਼ਮੀਨ ਹੈ ਜੀ ਅੱਛਾ ਜੀ ਤੇ ਉਹਨੂੰ ਹੁਣ ਐਸਜੀਪੀਸੀ ਦਾ ਕਬਜ਼ਾ ਐਸਜੀਪੀਸੀ ਨੇ ਕਿਵੇਂ ਕਰ ਲਿਆ ਪਿੰਡ ਦੀ ਜ਼ਮੀਨ ਤੇ ਪਿੰਡ ਦੀ ਜ਼ਮੀਨ ਦੇ ਪਿੰਡ ਵਾਲੇ ਦਾਨ ਕਰਤੀ ਲੰਗਰ ਦੇ ਨਾਲ ਜੀ ਭਾਈ ਰੂਪ ਚੰਦ ਪਿੰਡ ਹੈ ਜੀ ਲੰਗਰ ਦੇ ਨਾਲ ਜ਼ਮੀਨ ਨਾ ਕਿ ਉਹ ਗੁਰਦੁਆਰੇ ਦੇ ਨਾਮ ਦੇ ਗ੍ਰਾਂਟਾ ਦੇ ਲੰਗਰ ਦੇ ਨਾਲ ਦੀ ਬੋਲਦੀ ਹੁਣ ਵੀ ਸੋ ਉਹ ਇਤਿਹਾਸਿਕ ਗੁਰਦੁਆਰੇ ਕਰਕੇ ਐਸਜੀਪੀਸੀ ਨੇ ਉਹਦੇ ਤੇ ਕਬਜ਼ਾ ਕਰ ਲਿਆ ਉਹਦੇ ਕਬਜ਼ਾ ਕਰ ਲਿਆ ਮੈਂ ਤੁਹਾਨੂੰ ਗੱਲ ਇੱਕ ਪਹਿਲਾਂ ਗੱਲ ਦੱਸੀ ਆ ਭਦੌੜ ਮੇਰੇ ਭਦੌੜ ਛੇਵੇਂ ਪਾਸ਼ਾ ਆਏ ਹੀ ਨਹੀਂ ਇਹਨਾਂ ਨੇ ੱਟਕੇ ਨਾਲ ਨਿਸ਼ਾਨ ਸਾਹਿਬ ਖੜਾ ਕਰਕੇ 220 ਕਿੱਲੇ ਤੇ ਕਬਜ਼ਾ ਕਰ ਲਿਆ ਉਹ ਡੇਢੋ ਵੀ ਆ ਉਹ ਕਿਹਨੇ ਕੀਤਾ ਉਹ ਕਿਹਨੇ ਆ ਉਹ ਵੀ ਉਹ ਵੀ ਐ ਜੀ ਪੀ ਸੀ ਕਰਿਆ ਬਾਈ ਅੱਛਾ ਐਸ ਜੀ ਪੀ ਸੀ ਦੇ ਐਸ ਜੀ ਪੀ ਸੀ ਤੋਂ ਅੱਗੇ ਫਿਰ ਉਹ ਐਸ ਜੀ ਪੀ ਸੀ ਗਾਂ ਲੋਕਲ ਕਿਹੜੇ ਬੰਦੇ ਨੂੰ ਉਹਦਾ ਫਾਇਦਾ ਦੇ ਰਹੀ ਆ ਜ਼ਮੀਨ ਕੌਣ ਬੋਂਦਾ ਉਹਨੂੰ ਫਿਰ ਬਈ ਦੇਖੋ ਫੌਨ ਜਗ੍ਹਾ ਲਾਈ ਹੈ ਬਾਕੀ ਆਪਾਂ ਇਹ ਆਪਨ ਕੋਲ ਲੇਖਤੀ ਕੋਈ ਨਹੀਂ ਗੱਲ ਹੈ ਕਿ ਵੀ ਭਾਈ ਰੂਪੇ ਸਤਨਾਮ ਸਿੱਖ ਤੇ ਮਲੂਕੇ ਨੇ ਇਹ ਜ਼ਮੀਨ 90 ਸਾਲ ਦੀ ਲੀਜ਼ ਤੇ ਹੈ ਜੀ ਲੱਖ ਲੋਕਾਂ ਨੂੰ ਪਤਾ ਤਾਂ ਹੋਊ ਕੌਣ ਵੋਂਦਾ ਨਹੀਂ ਲੋ ਆਦੇ ਨਿੱਜੀ ਵਨੇੜਲੇ ਬੰਦਿਆਂ ਨੂੰ ਦਿੰਦੇ ਆ ਜੀ ਮੰਨ ਲਓ ਜਿਵੇਂ ਦੇਲੇ ਅੱਜ 50000 ਰੇਟ ਮੈਂ ਉਹ ਠੇਕੇ ਤੇ ਉਹ ਠੇਕੇ ਤੇ ਗਾਂ ਦੇ ਉਹਨਾਂ ਨੂੰ ਲੀਜ਼ ਦਿੰਦੇ ਆ ਜੀ ਆ ਦੀ ਸਾਲ ਵਾਲੀ ਪਧੌਰ ਬਾਈ ਜੀ 450 ਕਲਾ ਜ਼ਮੀਨ ਦਾ ਮੇਰਾ ਪਿੰਡ ਬੇਸਿਕਲੀ ਪਾਉੜਾ ਹੈ 220 ਕਿਲੋ ਡੇਰੇ ਦੇ ਨਾਲ ਸੀ ਨਾ ਧੱਕੇ ਨਾਲ ਕਬਜ਼ਾ ਕਰਿਆ 6ਵੇਂ ਪਾਸ਼ਾ ਤੇ ਆਏ ਨਹੀਂ ਮੇਰੇ ਪਿੰਡ 10ਵੇਂ ਪਾਸ਼ਾ ਆਇਆ ਕਿਲੇ 10ਵੇਂ ਪਾਸ਼ਾ ਕੁਟਰ ਦੇ ਲੱਗ ਜੀ ਨਹੀਂ ਹੈ ਨਾ ਹੂੰ ਲਗ ਭਾਗੇ 419 20 ਕਿਲੋ ਜ਼ਮੀਨ ਦਾ ਪਿੰਡ ਚ ਪਧੌਰ ਦੇ ਨਾਲ ਸਾਰੇ ਜੇ ਜਾ ਕੇ ਉੱਤੇ ਅੰਬਸਰ ਭੇਜੀਆਂ ਦੇ ਕੋਈ ਪ੍ਰਧੌਰਿਕ ਪੈਸਾ ਗਲੀ ਵਾਲਾ ਪੈਸਾ ਹੀ ਲਓ ਇੱਕ ਗਲੀ ਵਾਲਾ ਪੈਸਾ ਵੀ ਪਧੌਰ ਨੂੰ ਹਾਲ ਤੱਕ ਇੱਕ ਪੈਸੇ ਦੇਣ ਨਹੀਂ ਇੱਕ ਬਣਾਇਆ ਉਹ ਵੀ ਉੱਥੇ ਜ਼ਮੀਨ ਚ ਬਣਾਏਗਾ ਹੋਰ ਕੋਈ ਦੇਣ ਨਹੀਂ ਕਿਸੇ ਕਿਸਮ ਦੀ ਸਾਰਾ ਖਰਚਾ ਗੋਗਵਾ ਇਹਦਾ ਸਾਰਾ ਇਹਨਾਂ ਲੋਕਾਂ ਦੀ ਜਿਹੜੇ ਜ਼ਿਮੇਵਾਰੀ ਐ ਜੀ ਵਿਚਰੇ ਮੂਹਰੇ ਲਾਏ ਹੁੰਦੇ ਆ ਉਹਨੂੰ ਜਿਹੜੇ ਸੈਕਟਰੀ ਕਰਦਾ ਆ ਵੀ ਇਹਨਾਂ ਸਾਰੇ ਰਲੇ ਮਿਲੇ ਵੇ ਜਾਲੀ ਬਿੱਲ ਬਣਾ ਕੇ ਸਭ ਕੁਝ ਆ ਜਾ ਕੋਸ਼ ਕਰਦੇ ਆ ਇਹ ਕੋਈ ਦੋਰਾਣ ਵਾਲੀ ਗੱਲ ਨਹੀਂ ਧੰਨਵਾਦ ਬਾਈ ਜੀ ਧੰਨਵਾਦ ਅਮਨਦੀਪ ਸਿੰਘ ਜੀ ਲਾਈਨ ਨੰਬਰ 3 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਣ ਭਾਈ ਮੈਂ ਆਪਣੇ ਜਦ ਤੱਕ ਆਹ ਹਰਾ ਥੋੜੇ ਟਾਈਮ ਤੋਂ ਮੈਂ ਦੇਖਦਾ ਆ ਰਿਹਾ ਦੇਖਦਾ ਆ ਰਿਹਾ ਹੈਗਾ ਵੀ ਮੈਨੂੰ ਪਿਛਲੇ ਸਾਲ ਵੀ ਅਕਾਲੀ ਦੇ ਇਹਨਾਂ ਦੇ ਆਏ ਸੀਗੇ ਬੰਦੇ ਇੱਥੇ ਲੋਕਾਂ ਨੇ ਵਿਰੋਧ ਕੀਤਾ ਸੀਗਾ ਤੇ ਆਸੇ ਪਾਸੇ ਵੀ ਤੇ ਹੁਣ ਜਣੇ ਕਿ ਮੈਨੂੰ ਮੈਂ ਕੱਲ ਰਾਤ ਇੰਡੀਆ ਨਾਲ ਗੱਲ ਕਰਿਆ ਸੀਗਾ ਸਾਡੇ ਪਿੰਡ ਦੇ ਮੁੰਡਿਆਂ ਨਾਲ ਤੇ ਉਹ ਗੱਲ ਇੱਥੇ ਸੀਗੀ ਕਿ ਅਸੀਂ ਇਹ ਗੱਲ ਕਰ ਰਹੇ ਸੀਗੇ ਵੀ ਜਿਹੜੇ ਤਾਂ ਹੈਗੇ ਆ ਯੂਥ ਹੈਗੇ ਆ ਉਹ ਉਹ ਤਾਂ ਸਮਝਦੇ ਹੈਗੇ ਆ ਨੇ ਆਪਦਾ ਕੋਈ ਰੋਜ਼ੀ ਰੋਟੀ ਕਰਨੀ ਜਾਂ ਪੜ੍ਹੇ ਲਿਖੇ ਹੈਗੇ ਮੁੰਡੇ ਕੁੜੀਆਂ ਤੇ ਉਹਨਾਂ ਨੂੰ ਕੋਈ ਕੰਮਕਾਰ ਚੌਕੀ ਦੀ ਦਾ ਜੇ ਹੁਣ ਖੇਤੀ ਜਿਵੇਂ ਔਰ ਘਾਟਾ ਕਿਸੇ ਪਾਸੇ ਨਹੀਂ ਰਹੀ ਬਾਲ ਸਾਹਿਬ ਕਹਿੰਦਾ ਵੀ ਨਹੀਂ ਉਹ ਵੀ ਹੁਣ ਕਰਨਯੋਗੀ ਨਹੀਂ ਰਹੀ ਤੇ ਫਿਰ ਹੁਣ ਉਹ ਕਰੋਗੇ ਕੀ ਹੁਣ ਜੇ ਕਰੋਗੇ ਤਾਂ ਕੀ ਕਰੋਗੇ ਤੇ ਹੁਣ ਉਹ ਜੇ ਆਪਣੇ ਆ ਮੋਲੇ ਜਿਹੜੇ ਲੀਡਰ ਹੈਗੇ ਆ ਉਹਨਾਂ ਨੇ ਯੂਥ ਨੂੰ ਓਪਰਚੁਨਿਟੀ ਦੇਣੀ ਹੁੰਦੀ ਹੈਗੀ ਆ ਹੁਣ ਉਹ ਨਹੀਂ ਹੈਗੇ ਆ ਇਹਨਾਂ ਦੇ ਬੰਦੇ ਆਪਣੇ ਐਮਪੀ ਲੀਡਰ ਜੀ ਐਮਐਲ ਇਹ ਇਹ ਇਹ ਏਸੀ ਕੰਮ ਦੀ ਇਹ ਮਸ਼ਹੂਰੀ ਇਹਨਾਂ ਦੀ ਹੁੰਦੀ ਹੈਗੀ ਆ ਮੈਂ ਇਹ ਗੱਲ ਕਰਦੇ ਸੀਗੇ ਕਦੀ ਵੀ ਇਹਨਾਂ ਨੂੰ ਇਹਨਾਂ ਦੀ ਪਾਰਟੀ ਨੂੰ ਕਦੀ ਦੇਖਿਆ ਆ ਕਦੀ ਵੀ ਨਹੀਂ ਦੇਖਿਆ ਕਿ ਵੀ ਕੋਈ ਚੰਗਾ ਕੰਮ ਇਹਨਾਂ ਨੇ ਕੀਤਾ ਹੈਗਾ ਕੋਈ ਜੱਜ ਦਾ ਕੰਮ ਕੀਤਾ ਹੈਗਾ ਜਿਹੜਾ ਹਾਲ ਦੀ ਘੜੀ ਤਾਂ ਜੇ ਕੀਤਾ ਤਾਂ ਠੀਕ ਲੱਗਦਾ ਹੈਗਾ ਤੇ ਫਿਰ ਉਹ ਗਾਹ ਆ ਕੇ ਉਹਦਾ ਬੱਸ ਸੱਤਿਆਰਾਸ ਹੋ ਜਾਂਦਾ ਹੈਗਾ ਜਿਹੜਾ ਵੀ ਇਹਨੇ ਕੋਸ ਕਦਮ ਚੱਕਦੇ ਹੈਗੇ ਆ ਸੋ ਮੈਂ ਇਹ ਵੀ ਅਸੀਂ ਸੋਚੇ ਸੀ ਕਿ ਵੀ ਜਿਹੜੇ ਬੰਦੇ ਜਿਹੜੇ ਹੈਗੇ ਆ ਸਾਡੇ ਬਜ਼ੁਰਗ ਹੈਗੇ ਆ ਪੁਰਾਣੇ ਬੰਦੇ ਜਿਹੜੇ ਮੰਨ ਲਓ ਕਿ ਵੀ 60 ਸਾਲ ਤੇ ਉੱਪਰ ਵੱਧ 60 ਸਾਲ ਤੋਂ ਉੱਪਰ ਦੀ ਉਮਰ ਦੇ ਹੈਗੇ ਆ ਉਹਨਾਂ ਨੇ ਇਹਨਾਂ ਨੂੰ ਇਹਨਾਂ ਦੀ ਤਾਰੀਫ ਕਰਨੀ ਹੈਗੀ ਆ ਜੋ ਕੋਸੇ ਮਰਜ਼ੀ ਕਰੀ ਜਾਣ ਉਹ ਬੰਦੇ ਜਿਹੜੇ ਹੈਗੇ ਆ 60-65 ਸਾਲ ਦੇ ਉਹ ਪੈਂਚੀ ਬੈਠੇ ਰਹਿੰਦੇ ਹੈਗੇ ਆ ਉਹਨਾਂ ਨੇ ਨਾ ਸ਼ਹਿਰ ਦਾ ਰਾਹ ਨਾ ਪਤਾ ਹੋਊਗਾ ਨਾ ਕਦੀ ਗਏ ਹੋਣੇ ਆ ਉਹ ਸਵੇਰ ਨੂੰ ਉੱਠ ਕੇ ਪਹਿਲ ਗੁਰਦੁਆਰੇ ਫਿਰ ਹੋਰ ਚਾਹ ਪੀ ਲਈ ਤਾਸ਼ ਖੇਡ ਲਈ ਉਹ ਉਹਨਾਂ ਗੱਲਾਂ ਆ ਕੇ ਰਾਤ ਨੂੰ ਰੋਟੀ ਖਾ ਕੇ ਸੌ ਜਾਂਦੇ ਹੈਗੇ ਸੋ ਉਹਨਾਂ ਨੂੰ ਜਿੱਦਾਂ ਵੀ ਉਹਨਾਂ ਨੂੰ ਸੁਝਾਇਆ ਜਾਂਦਾ ਤੇ ਜੇ ਜੀ ਵੀ ਉਹਨਾਂ ਦੀ ਗੱਲ ਦਿਮਾਗ 'ਚ ਹੈਗੀ ਆ ਉਹਨਾਂ ਨੂੰ ਉਹ ਕੋਈ ਤੁਸੀਂ ਚੇਂਜ ਨਹੀਂ ਕਰ ਸਕਦੇ ਅੱਪਹਿਲਾ ਭਾਈ ਸਾਹਿਬ ਕਹਿ ਕੇ ਗਏ ਸੀਗੇ ਕਿ ਆਪਾਂ ਨੂੰ ਪ੍ਰਚਾਰ ਕਰਨਾ ਚਾਹੀਦਾ ਆ ਪ੍ਰਚਾਰ ਕਰਨਾ ਚਾਹੀਦਾ ਹੈਗਾ ਪਰ ਜ ਜਾਨੀ ਕਿ ਪ੍ਰਚਾਰ ਤੁਸੀਂ ਉਹਨਾਂ ਨੂੰ ਹੀ ਕਰ ਸਕਦੇ ਹੈਗੇ ਆ ਜਿਹੜਾ ਕੋ ਸੁਣਨਾ ਚਾਹੁੰਦੇ ਆ ਹੁਣ ਆਪਣੇ ਮੈਨੂੰ ਨਹੀਂ ਪਤਾ ਵੀ ਬੰਦੇ ਇੱਥੇ ਆਪਾਂ ਗੁਰਦੁਆਰੇ ਵੀ ਆਪਾਂ ਦੇ ਹੈਗੇ ਆ ਮੈਨੂੰ ਹੁਣ ਮੈਨੂੰ ਤਾਂ ਆਪ ਦੀ ਮੈਂ ਗੱਲ ਕਰਦਾ ਹੈਗਾ ਜੇ ਹੁਣ ਮੈਨੂੰ ਤਾਂ ਜੇ ਉੱਥੇ ਟਰਾਂਜ਼ੀਸ਼ਨ ਹੈਗੀ ਆ ਆਪਣੇ ਕੋਈ ਗਿਆਨੀ ਕਥਾ ਕਰਦਾ ਜਾਂ ਉਹ ਕੀਰਤਨ ਕਰੇ ਹੈਗੇ ਜੇ ਉਹਦੀ ਟਰਾਂਜ਼ੀਸ਼ਨ ਹੈਗੀ ਇੰਗਲਿਸ਼ ਚ ਤੇ ਮੈਂ ਉੱਥੇ ਧਿਆਨ ਕਰੂੰਗਾ ਤੇ ਜੇ ਨਹੀਂ ਤਾਂ ਆਪਾਂ ਉੱਥੇ ਬੈਠੇ ਹੈਗੇ ਆ ਤੇ ਇੱਕ ਕੰਨ ਚ ਗਿਆ ਦੂਸਰੇ ਕੰਨ ਤੋਂ ਬਾਹਰ ਤਾਂ ਆਉਣ ਦੀ ਉਹ ਗੱਲ ਨਹੀਂ ਬਣਦੀ ਕਿਉਂਕਿ ਉਹ ਪਹਿਲੇ ਕੰਨ ਚ ਖਾਨੇ ਪੈਂਦੀ ਨੀ ਗੱਲ ਜੋ ਵੀ ਉਹ ਕਰ ਰਹੇ ਹੈਗੇ ਆ ਸੋ ਇਹ ਜੇ ਆਪਾਂ ਗੱਲ ਕਰਦੇ ਹੈਗੇ ਲੋਕਾਂ ਨੂੰ ਆਪਾਂ ਸਮਝਾਉਣਾ ਕਰਨਾ ਹੈਗਾ ਜਿੰਨਾ ਮਰਜੀ ਇਹ ਮੇਰੇ ਹਿਸਾਬ ਨਾਲ ਤਾਂ ਗਲਤ ਹੋਈ ਆ ਲੋਕਾਂ ਨਾ ਲੋਕਾਂ ਨੇ ਫਿਰ ਵੀ ਆਪਣੇ ਨੇ ਪਤਾ ਨਹੀਂ ਕੀ ਚੱਕ ਰਿਹਾਗਾ ਵੀ ਉਹ ਨਹੀਂ ਨਹੀਂ ਨੂੰ ਵੀ ਮਾਰਾ ਧੰਨਵਾਦ ਧੰਨਵਾਦ ਧੰਨਵਾਦ ਜੀ ਕਾਲ ਨੂੰ ਨਵੇੜਿਆ ਕਰੋ ਛੇਤੀ ਦਰਚਨ ਕੁਲਾਰ ਜੀ ਲਾਈਨ ਨੰਬਰ 4 ਸਸਿਕਾ ਗਰਸਾ ਸਸਿਕਾ ਕਾਲ ਜੀ ਬਾਈ ਜੀ ਦੋ ਮਿਲਦੀ ਤੇ ਪਹਿਲਾਂ ਤਾਂ ਮੈਂ ਤਾਂ ਆਪਣੇ ਸਟਾਈਲ ਆ ਕਹਿਣਾ ਕਿ ਆ 1 ਨਫਰ داخل ਦੁਨੀਆ ਜਿਹੜੇ ਬੰਦੇ ਤੁਸੀਂ ਜਿਹੜੇ ਹੱਕ ਸੱਚ ਦੀ ਗੱਲ ਕਰਦੇ ਆ ਨਹੀਂ ਤਾਂ ਸਾਵੇਂ ਬੰਦੇ ਨਾ ਗੱਲ ਨੂੰ ਕਮਾ ਜਾਂਦੇ ਗੋਲ ਕਰਦੇ ਆ ਪਰ ਤੁਸੀਂ ਕੋਲਰਾਂ ਦੇ ਨਾਲ ਵੀ ਉਸੇ ਵੇਲੇ ਨਪਟਾਰਾ ਕਰਦੇ ਆ ਵੀ ਦੱਸੋ ਭਾਈ ਫੇ ਜਿਦਾਂ ਪਹਿਲੇ ਕਾਉਂਟਰ ਨੂੰ ਕਿਹਾ ਵੀ ਚਲੋ ਚੱਲਦੇ ਆ ਸਹੀ ਆ ਕਿ ਨਹੀਂ ਨਜ਼ਾਰਾ ਆਉਂਦਾ ਵੀਰ ਜੀ ਨਜ਼ਾਰਾ ਸਟੇਸ਼ਨ ਪਿਛਲੇ 10 ਸਾਲਾਂ ਤੋਂ ਸੁਣਦਾ ਪਰ ਤੁਹਾਡਾ ਸ਼ੋਅ ਕਦੇ ਮੈਸੇ ਨਹੀਂ ਕੀਤਾ ਕੁਝ ਮਿਲਦਾ ਤਾਂ ਸੁਣਦੇ ਆ ਸ਼ਾਬਾਸ਼ ਹੱਕਦਾਰ ਆ ਤੇ ਵੀਡੀਓ ਜਿਹੜੀ ਆ ਉਹ ਬਿਲਕੁਲ ਹੀ ਮਨੁੱਖੀ ਅਧਿਕਾਰਾਂ ਦਾ ਕਹਾਣੀ ਆ ਉਹ ਜਿਹੜਾ ਇਸ ਤਰ੍ਹਾਂ ਭਾਵੇਂ ਕਿਸੇ ਬੰਦੇ ਨੇ ਕਤਲ ਵੀ ਕੀਤਾ ਹੋਵੇ ਨਾ ਉਹਦੇ ਨਾਲ ਇਸ ਤਰ੍ਹਾਂ ਨਹੀਂ ਕਰ ਸਕਦੇ ਤੁਸੀਂ ਜਿਸ ਤਰ੍ਹਾਂ ਉਹਦੀ ਵੀਡੀਓ ਬਣਾ ਕੇ ਉਹ ਕੀਤੀ ਆ ਉਹ ਜਿਹੜਾ ਕੋਈ ਬੰਦਾ ਜੇ ਹਿੰਮਤ ਸੱਚ ਬੋਲ ਰਿਹਾ ਇਨਸਾਫ ਹੋਣਾ ਚਾਹੀਦਾ ਏਦੂ ਤਾਂ ਮੈਂ ਕਹਿੰਦਾ ਦੁਹਾਈ ਆ ਜੀ ਦੁਹਾਈ ਆ ਬੜਾ ਜਿਆਦਾ ਲੋੜਾ ਆ ਜਿਹੜਾ ਵੱਜ ਰਿਹਾ ਆ ਤੇ ਥੈਂਕ ਯੂ ਸਾਹਿਬ ਤੁਹਾਡੇ ਆ ਮੈਂ ਤਾਂ ਦਿੰਨਾ ਚਾਹਣਾ ਵੀ ਤੁਸੀਂ ਜਿਹੜਾ ਸਾਡੇ ਸਾਹਮਣੇ ਲਿਆ ਰਹੇ ਆ ਥੈਂਕ ਯੂ ਬੱਤ ਥੈਂਕ ਯੂ ਹਰਜੀਤ ਸਿੰਘ ਜੀ ਲਾਈਨ ਨੰਬਰ 5 ਹੈਲਾ ਭਾਈ ਸਤਿ ਸ਼ਕਾਲ ਜੀ ਦਾ ਕਸੂਰ ਨਹੀਂ ਹੈਗਾ ਲੋਕ ਵਿਚਾਰੇ ਭੋਲੇ ਆ ਹੁਣ ਤੁਹਾਨੂੰ ਜਦੋਂ ਕੋਈ ਦੂਜਾ ਪੱਖ ਹੀ ਨਹੀਂ ਦਿਸੂਗਾ ਤੇ ਪਰਲੇ ਪਾਸੇ ਤਾਂ ਦਾ ਹੀ ਨਹੀਂ ਤੇ ਤੁਸੀਂ ਕੀ ਕਰੋਗੇ ਹੁਣ ਉੱਥੇ ਕਾਂਗਰਸ ਨੇ ਵੀ ਆਪਣੀ ਸلطਨਤ ਪੈਦਾ ਕੀਤੀ ਹੋਈ ਆ ਬੀਜੇਪੀ ਨੇ ਵੀ ਕਾਲੀਆਂ ਨੇ ਵੀ ਆਪ ਦੇ ਟੀਵੀ ਚੈਨਲ ਖੋਲੇ ਉਹ ਦੂਜਾ ਕੋਈ ਸਾਹਮਣੇ ਆਉਣ ਦਿੰਦੇ ਜੇ ਕੁਝ ਬੋਲਣਾ ਚਾਹੁੰਦਾ ਉਹ ਟੀਵੀ ਚੈਨਲ ਬੰਦ ਕਰ ਦਿੰਦੇ ਆ ਤੁਸੀਂ ਦੱਸੋ ਦਾ ਕਸੂਰ ਨਹੀਂਗਾ ਹੈਗਾ ਕਸੂਰ ਹੈਗਾ ਆਪਣਾ ਜਿਹੜੇ ਆਪਾਂ ਲੋਕਾਂ ਨੂੰ ਲਾਉਣਾ ਚਾਹੀਦਾ ਨਵੀਂ ਜਨਰੇਸ਼ਨ ਨੂੰ ਅਵੇਅਰ ਕਰਨ ਵੀ ਚੇਂਜ ਆਵੇ ਜੀ ਓਕੇ ਜੀ ਧੰਨਵਾਦ ਜੀ ਬਲਜਿੰਦਰ ਸਿੰਘ ਜੀ ਲਾਈਨ ਨੰਬਰ 2 ਹਾਂਜੀ ਹਰੀਤ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਸ ਬੰਦੇ ਦੀ ਜ਼ਮੀਰ ਨੇ ਯਾਦ ਦਿੱਤੀ ਆ ਇਹ ਗੱਲ ਕਹਿਣ ਨੂੰ ਸੱਚ ਬੋਲਣ ਲਈ। ਜੇ ਉਹ ਇੱਕ ਦਿਨ ਮਾੜਾ ਵੀ ਸੀਗਾ ਅਧਿਚੰਗਾ ਬਣ ਕੇ ਵੀ ਮੋੜਿਆ ਆ ਉਹ। ਆਪਣੇ ਹਰਜਿੰਦਰ ਸਿੰਘ ਜਿੰਦੇ ਦੀ ਇਸੀ ਦਾ ਬਾਰੇ ਕਿਸੇ ਨੂੰ ਪਤਾ ਉਹ ਪਹਿਲਾਂ ਕੀ ਕੀ ਉਹ ਕਿੰਨਾ ਕੁਝ ਕਰ ਗਿਆ। ਹੈ ਉਹਦੀ ਮਿਸਾਲ ਦਿਓ। ਹਰਜਿੰਦਰ ਸਿੰਘ ਜਿੰਦਾ ਕੌਣ ਸੀ ਉਹਨੇ ਕਿਹੜਾ ਕੰਮ ਕੀਤਾ ਐਂਡ ਦੇ ਆ ਕੇ। ਕੌਮਲੀ ਸਤਿ ਸ਼੍ਰੀ ਅਕਾਲ ਜੀ ਇੰਦਰਪ੍ਰੀਤ ਟਵਾਣਾ ਜੀ ਲਾਈਨ ਨੰਬਰ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਗੱਲ ਇਦਾਂ ਨਾ ਜਿਵੇਂ ਆਪਾਂ ਕਹਿੰਦੇ ਆ ਕਿ ਪੋਲਿਟਿਕਸ ਜਾਂ ਕੁਝ ਵੀ ਆ ਪਰ ਜਿਹੜਾ ਲੋਕਾਂ ਨੂੰ ਨਾ ਕਹਿੰਦੇ ਵੀ ਲੋਕਾਂ ਦਾ ਹੋਰ ਤਰੀਕੇ ਨਾਲ ਵਿਕਾਸ ਕਰਨਾ ਚਾਹੀਦਾ ਉਹ ਪਰ ਇਹ ਚੀਜ਼ਾਂ ਉਹ ਦੇਖੋ ਪਹਿਲਾਂ ਲੋਕ ਆਪਣੇ ਪਹਿਲਾ ਸੰਘਰਸ਼ ਚੱਲਿਆ ਆਪਾਂ ਨੂੰ ਕਹਿੰਦੇ ਸੀਗੇ ਗੁਲਾਮੀ ਦਾ ਸਾਸ ਕਰਾਇਆ ਗਿਆ ਉਦੋਂ ਚਲੋ ਠੀਕ ਆ ਪਰ ਜਿਹੜੀ ਆ ਚੀਜ਼ ਹੈ ਹੁਣ ਤਾਂ ਆਪਣਾ ਜਿਹੜਾ ਸਵੈਮਾਨ ਆ ਉਹਨੂੰ ਵੀ 6 ਵਜੇ ਆ ਅਸੀਂ ਰੋਟੀ ਖਾਣੋਂ ਤਾਂ ਭੁੱਖੇ ਚਲੋਂ ਰਹਿ ਹੀ ਰਹੇ ਆ ਉੱਥੇ ਜਿਹੜੇ ਫਸਲਾਂ ਦੇ ਤਾੜ-ਤਾੜ ਕੀਤਾ ਜਾਵੇ ਫਿਰ ਲੋਕ ਸਾਹ ਕਿਵੇਂ ਲੈਣਗੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਹੋਰ ਵਿਕਾਸ ਤਾਂ ਆਪਾਂ ਬਾਅਦ ਚ ਪਹਿਲਾਂ ਉਹਨਾਂ ਦਾ ਸਵੈਮਾਨ ਤਾਂ ਇੱਕ ਤਰīb ਭਿਖਾਰੀ ਦਾ ਵੀ ਹੋ ਸਕਦਾ ਨਾ ਇਸ ਗੱਲ ਕਰਕੇ ਇਹ ਚੀਜ਼ਾਂ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਬੰਦੇ ਦੇ ਜਿਹੜੇ ਆ ਹੋਰ ਤਾਂ ਤੁਸੀਂ ਇਹ ਅਧਿਕਾਰ ਨਹੀਂ ਦੇਣੇ ਉਹਦੇ ਹੱਕ ਦਾ ਮੁੱਲ ਵੀ ਨਹੀਂ ਦੇਣਾ ਆਪਾਂ ਨੇ ਇੱਕ ਫਸਲવાડી ਦਾ ਮੁੱਲ ਨਹੀਂ ਦੇਣਾ ਬੰਦਾ ਫਿਰ ਵੀ ਗਰੀਬੀ ਚ ਕੱਟ ਰਿਹਾ ਉਹਦੀ ਮਾੜੀ ਕਿਸਮਤ ਹੈ ਪਰ ਜਿਹੜਾ ਕਿ ਨਾ ਕਾਬਿਲ ਲੀਡਰ ਆਪਾਂ ਨੇ ਇੰਨਾ ਸਿਰਾਂ ਤੇ ਚੜ੍ਹਾ ਲਏ ਉਸ ਕਰਕੇ ਇਹਨਾਂ ਨੂੰ ਆਪਾਂ ਰਾਹ ਨੀ ਦਿਖਾਇਆ ਹੁਣ ਜਿਹੜਾ ਰਹਿੰਦਾ ਖੁੰਦਾ ਇਹ ਐਸਜੀਪੀਸੀ ਤੋਂ ਵੀ ਜੇ ਨਾ ਨਿਕਲੇ ਤਾਂ ਇਹ ਹੋਰ ਬਰਾਨ ਕਰਨਗੇ ਕਿਉਂਕਿ ਜਦੋਂ ਬੰਦਾ ਕਹਿੰਦਾ ਕਿ ਵੀ ਮੈਂ ਮਰ ਰਿਹਾ ਹੁਣ ਉਹਨਾਂ ਨੇ ਹੋਰ ਲੁੱਟਖੋ ਕਰਨੀ ਐ ਵੀ ਅਸੀਂ ਤਾਂ ਹੁਣ ਪਾਵਰ 'ਚੋਂ ਜਾ ਰਹੇ ਹਾਂ ਜਿਹੜਾ ਖਾ ਹੁੰਦਾ ਖਾ ਗੱਲ ਸਾਬ ਹੋਰ ਬੜੀ ਚੀਜ਼ ਹੈ ਜਿਹੜੇ ਦੀ ਲੀਜ਼ ਹੈ ਇਹਦਾ ਕੋਈ ਕਾਨੂੰਨ ਜੇ ਤੁਹਾਨੂੰ ਹੋਵੇ ਕੋਈ ਨੌਲੇਜ ਜਰੂਰ ਦੱਸਿਓ ਕਿਉਂਕਿ ਇਹਨਾਂ ਨੇ ਹਰਿਆਣੇ 'ਚ ਵੀ ਕਈ 100 ਏਕੜ ਬਾਦਲ ਸਾਹਿਬ ਨੇ ਇਦਾਂ ਲੀਜ਼ ਤੇ ਲਈ ਹੋਈ ਹੈ ਖਾ ਕੇ ਫਿਰ ਜਿਹੜੀ ਨਵੀਂ ਕੋਈ ਪਾਰਟੀ ਆ ਉਹਦੇ ਵਾਸਤੇ ਕੀ ਬਚੂਗਾ ਜਿਹੜੀ ਐਸਜੀਪੀਸੀ ਆਪਣੀਆਂ ਪੰਥਕ ਤੇ ਆਉਣਗੀਆਂ ਇਹਦਾ ਕੋਈ ਹੀਲਾ ਹੋਣਾ ਚਾਹੀਦਾ ਕਿ ਲੀਜ਼ ਕੈਨਸਲ ਹੋਵੇ ਜਿਹੜੇ ਗਲਤ ਬੰਦਿਆਂ ਨਾਲ ਲਈ ਹੋਈ ਹੈ ਜਿਹੜੀ ਲੀਜ਼ ਆ ਨਾ ਜੀ 99 ਸਾਲੀ ਜਦੋਂ ਹੋ ਜਾਂਦੀ ਆ ਮੈਨੂੰ ਨਹੀਂ ਲੱਗਦਾ ਜੇ ਉਹਨੂੰ ਕਿਤੇ ਚੈਲੰਜ ਹੋ ਸਕਦਾ ਦੋਨੇ ਤਰ੍ਹਾਂ ਨੇ ਕੀਤੀ ਜਿਹੜੀ ਭਾਈ ਰੂਪੇ ਵਾਲੀ ਜ਼ਮੀਨ ਆ ਉਹਦੇ ਬਾਰੇ ਜਾਣਕਾਰੀ ਜਿਹੜੀ ਮਿਲ ਰਹੀ ਆ ਉਹ ਇਹ ਮਿਲ ਰਹੀ ਆ ਕਿ ਉਹ ਜ਼ਮੀਨ ਬਹੁਤ ਸਸਤੀ ਆ ਜਿਹੜੀ ਉਹ ਲਈ ਆ ਤੇ ਉਦੋਂ ਅੱਗੇ ਉਹ 5000 ਪਰ ਇਕੜ ਦੇ ਹਿਸਾਬ ਨਾਲ 90 ਸਾਲੀ ਲੀਜ਼ ਕਿਸੇ ਲਿਖਾਈਆ ਕੋਈ ਸਤਨਾਮ ਸਿੰਘ ਆ ਉਹਦਾ ਐਕਸੈਸ ਜੀਪੀਸੀ ਦਾ ਮੈਂਬਰ ਹੁਣ ਬਾਕੀ ਪੇਪਰ ਕੀ ਕਹਿੰਦੇ ਆ ਰੱਬ ਜਾਣਦਾ ਜਿਹੜੀ ਕੋਈ ਇਨਫੋਰਮੇਸ਼ਨ ਭੇਜੀ ਆ ਤੇ ਹੁਣ ਉਹ ਗਾ 40000 ਨੂੰ ਪਰ ਕਿਲੇ ਦੇ ਠੇਕੇ ਤੇ ਮਿਲਦੀ ਆ ਤੇ 50 60 ਲੱਖ ਉਸ ਜਿਹੜੀ ਆ ਆਮਦਨ ਆ ਉਹਦੇ ਚੋਂ 150 ਕਿਲੇ ਚੋਂ ਤੇ ਉਹਦੀ ਦੇਣੀ ਆ 4-5000 ਦੇ ਨਾਲ ਐਸਜੀਪੀਸੀ ਨੂੰ ਤੇ ਇਹ ਤਾਂ ਫਿਰ ਬਹੁਤ ਵੱਡੀ ਕਹਾਣੀ ਹੈ ਤੇ ਬਾਕੀ ਉਹਦਾ ਲੀਗਲਿਟੀ ਨਾਲ ਉਹ ਚੈਲੰਜ ਹੋ ਸਕਦਾ ਪਤਾ ਹਾਂਜੀ ਕਿਉਂਕਿ ਇੰਨਾ ਬਖਰੇਵਾ ਨਹੀਂ ਹੋਣਾ ਚਾਹੀਦਾ ਬਾਕੀ ਚਲੋ ਪੰਜਾਬ ਦੇ ਦਿਨ ਫਿਰਨਗੇ ਪਰ ਸਵੈਮਾਨ ਨੂੰ ਠੇਸ ਨਹੀਂ ਲੱਗਣੀ ਚਾਹੀਦੀ ਜੇ ਭੁੱਖੇ ਅਸੀਂ ਰਹਿ ਲਾਂਗੇ ਕੋਈ ਗੱਲ ਨਹੀਂ ਮੈਨੂੰ ਲੱਗਦਾ ਹੁਣ ਤਾਂ ਮਾਰ ਮਰਈਏ ਵਾਲਾ ਕੰਮ ਜੇ ਇੰਨਾ ਹੀ ਲੋਕਾਂ ਦੇ ਗਲਤ ਸੇ ਪਾਣੀ ਆ ਗਿਆ ਹੁਣ ਉਹ ਸ਼ੁਰੂਣਾ ਹੋ ਜੇ ਕਿਤੇ ਜਿਹੜਾ ਇਹ ਲੋਕ ਚਾਹੁੰਦੇ ਨੇ ਉਹ ਪਹਿਲਾਂ ਹੀ ਧੰਨਵਾਦ ਵੀਰ ਜੀ ਧੰਨਵਾਦ ਜੀ ਬੈਲ ਉਪਾਲ ਜੀ ਲਾਈਨ ਨੰਬਰ 5 ਉਹ ਤੋਂ ਬਾਅਦ ਸੁਖੀ ਨਾਲ ਗੱਲਬਾਤ ਕਰਾਂਗੇ ਦੋਹਾ ਕਤਰ ਤੋਂ ਉਹ ਵੀ ਕੁਝ ਕਹਿਣਾ ਚਾਹੁੰਦੇ ਅੱਜ ਬੈਲ ਉਪਾਲ ਜੀ ਲਾਈਨ ਨੰਬਰ 5 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਆਵਾਜ਼ੀ ਉਹ ਲੱਖੇ ਦੀ ਗੱਲਾਂ ਸੁਣ ਕੇ ਬੜਾ ਮੰਨੂ ਹੋਇਆ ਇਹ ਗੱਲ ਜਿਹੜੀ ਕਹਿਣੀ ਕਿ ਉਹ ਪਹਿਲਾ ਸਾਸ ਹੀ ਪਹਿਲਾਂ ਢਿੰਗ ਸੀਗਾ ਸਾਡੀ ਹਿਸਟਰੀ ਪੜ੍ਹ ਕੇ ਦੇਖ ਲਓ ਸੱਜਣ ਸਾਗ ਤੋਂ ਲੈ ਕੇ ਕੌਡੇ ਰਾਜ ਤੋਂ ਤੋਂ ਲੈ ਕੇ ਇਹ ਸਾਡੀ ਹਿਸਟਰੀ ਦੇ ਵਿੱਚ ਹੈ ਜ਼ਰੂਰੀ ਨਹੀਂ ਬੰਦਾ ਹਰੇਕ ਹਰ ਤਰ੍ਹਾਂ ਦਾ ساری ਉਮਰ ਚ ਰਹਿੰਦਾ ਹੁੰਦਾ ਇੱਕ ਹੋਰ ਕਿਸੇ ਤੇ ਲਾ ਦਣਾ ਦੋਸ਼ ਤੇ ਉਹ ਬੰਦਾ ਬਾਅਦ ਚ ਸੁਧਰ ਵੀ ਸਕਦਾ ਜਿਹੜੇ ਹੁਣ ਬੰਦੇ ਦੱਸਦੇ ਆ ਵੀ ਉਹ ਬੰਦਾ ਅੱਗੇ ਨਾਲੋਂ ਸੁਧਰ ਗਿਆ ਚਲੋ ਉਹਦੀ ਉਹ ਮੰਨ ਲਈਏ ਇਹ ਤਾਂ ਗੱਲ ਰਹਿ ਗਈ ਇੱਕ ਪਾਸੇ ਬਾਕੀ ਜਿਹੜਾ ਪੰਜਾਬ ਦੇ ਵਿੱਚ ਹੈ ਇਹ ਇੱਕ ਨੀ ਹਰਿਆਣੇ ਦੇ ਵਿੱਚ ਵੀ SGPFC ਨੇ ਕੰਟਰੋਲ ਕੀਤੇ ਆ ਤੇ ਉੱਥੋਂ ਬਾਦਲਾਂ ਨੇ 90 ਸਾਲ ਉਹਨਾਂ ਤੋਂ 99 ਸਾਲ ਦੀਆਂ ਲੀਜ਼ ਲੈ ਕੇ ਜ਼ਕੀਰ ਉਹਨੇ ਕੀਤੀ ਆ 27 ਕਿੱल्ल्या ਤੇ ਹਰ ਥਾਂ ਥਾਂ ਤੇ ਹੋਇਆ ਇਹ ਜਿੰਨੀ ਕੁ ਲੁੱਟ ਖੁੱਟ ਮੱਠੀ ਆ ਨਾ ਇਹਦੇ ਲਈ ਬਦਲਾ ਦੀ ਲੋੜ ਆ ਹੁਣ ਬਦਲਾ ਅਸੀਂ ਕਾਂਗਰਸ ਨੂੰ ਨਹੀਂ ਚੰਗੀ ਲੱਗਦੀ ਅਕਾਲੀਆਂ ਨੇ ਸਾਨੂੰ ਲੁੱਟ ਕੇ ਖਾ ਲਿਆ ਕਾਂਗਰਸ ਨੇ ਸਾਡਾ ਕਤਲੋਕਾਰਤ ਕਰਤੀ ਤੇ ਹੁਣ ਲਿਆਈਏ ਤੇ ਲਿਆਈਏ ਕੀ ਜੇ ਸਿੱਖ ਬੁੱਧੀਜੀਵੀ ਸੀਗੇ ਤੇ ਸਾਡੇ ਗਿਆਨੀ ਧਿਆਨੀ ਬੰਦੇ ਸੀਗੇ ਪਿਛਲੇ 70 ਸਾਲਾਂ ਦੇ ਉਹ ਕਿੱਥੇ ਗਏ ਸੀਗੇ ਉਦੋਂ ਨਾਲ ਉਹਨਾਂ ਨੇ ਕੋਈ ਪਾਰਟੀ ਬਣਾਈ ਉਦੋਂ ਨਾਲ ਕੋਈ ਚੜ ਕੇ ਬੋਲਿਆ ਜੇ ਹੁਣ ਸੜਕਾਂ ਤੇ ਨਹੀਂ ਆਉਂਦੇ ਕੁਝ ਨਹੀਂ ਬਣਦਾ ਉਹੀ ਤਾਂ ਗੱਲ ਮੈਂ ਕਰਨ ਲੱਗਾ ਜੀ ਮੇਰੀ ਗੱਲ ਇੱਕ ਮਿੰਟ ਜਿਹੜਾ ਇਹ ਸੁਣ ਰਿਹਾ ਜੀ ਸੁਣ ਰਿਹਾ ਹਾਂਜੀ ਹਾਂਜੀ ਜਦੋਂ ਇਹ ਵੈਕਿਊਮ ਕਿ ਹੋ ਗਿਆ ਨਾ ਪੰਜਾਬ ਦੇ ਵਿੱਚ ਤੇ ਜਿਹੜਾ ਇੰਟੈਲੀਜੈਂਟ ਇੰਟੈਲੈਕਚੁਅਲ ਬੰਦਾ ਸੀਗਾ ਉਹਨੇ ਦੇਖਿਆ ਵੀ ਇੱਥੇ ਦਿੱਲੀ ਉਹਦੀਆਂ ਗੱਲਾਂ ਬਾਤਾਂ ਸੁਣ ਕੇ ਲੋਕਾਂ ਨੂੰ ਲੱਗਿਆ ਵੀ ਉਹ ਗੱਲਾਂ ਠੀਕ ਕਰ ਰਿਹਾ ਤੇ ਉਹਨੇ ਦਿੱਲੀ ਦੇ ਵਿੱਚ ਕਰਕੇ ਵੀ ਦਿਖਾਈਆਂ ਇਹ ਅਸੀਂ ਕਹਿ ਦਿੱਤੀ ਉਹ ਪਹਿਲਾਂ ਮਦਰ ਟ੍ਰੀਸਾ ਨਹੀਂ ਸੀ ਤੇ ਮਦਰ ਟ੍ਰੀਸਾ ਕੋ ਚੰਬਲ ਦੀ ਢਾਕੂ ਸੀ ਜਿਹਦੇ ਨਾਲ ਨਹੀਂ ਸੀ ਉਹ ਤੇ ਫਿਰ ਕਹਿੰਦੇ ਅਸੀਂ ਨੇ ਇਹਨਾਂ ਨੂੰ ਫੰਡਿੰਗ ਕੀਤੀ ਹੈ ਰਾਕਰਫੈਲਰ ਮੀਰ ਇੱਕ ਰਿਚਸ ਬੰਦਾ ਜਿਵੇਂ ਬਿਲ ਗੇਟਸ ਆ ਹੋਰ ਬਹੁਤ ਬੰਦੇ ਆ ਉਹਨਾਂ ਨੇ ਬੰਦੇ ਤਾਂ ਨਹੀਂ ਨਾ ਮਾਰੇ ਚਲੋ ਉਹ ਲੁੱਟ-ਖੁੱਟ ਕਰਕੇ ਉਹਨਾਂ ਨੇ ਪੈਸੇ ਮਿਲੀਨੀਅਰ ਬਿਲੀਨੀਅਰ ਬਣ ਗਏ ਆ ਪਰ ਉਹ ਲਕਾਈ ਲਈ ਕੋਈ ਕੰਮ ਵੀ ਕਰਦੇ ਆ ਨਾ ਅਸੀਂ ਇੱਕ ਤੋਂ ਦੋ ਵਾਢਿਓ ਲੱਗ ਜਣੇ ਜੀ ਹਰਿਆਣੇ ਦਾ ਜਨਮਿਆ ਮਤਲਬ ਕਿੱਥੇ ਹਲੇ ਸਾਡੀ ਸੋਚ ਕੜੀ ਆ ਉੱਥੇ ਤਾਂ ਸਵੇਰ ਮਾਨ ਨੂੰ 6 ਵਜੇ ਦੀ ਜਿਵੇਂ ਟਵਾਣਾ ਸਾਹਿਬ ਕਹੇ ਲੋਕਾਂ ਦਾ ਜਿਉਣਾ ਮੁਸ਼ਕਲ ਹੋਇਆ ਤੇ ਅਸੀਂ ਕਹਿੰਦੇ ਆ ਕਿ ਇਹ ਹਰਿਆਣਵੀ ਆ ਤੇ ਇਹ ਫਲਾਣੇ ਥਾਂ ਤੋਂ ਆਇਆ ਤੇ ਫਲਾਣੇ ਦਾ ਇੱਕ ਗੱਲ ਹੋਰ ਬਾਈ ਜੀ ਮੈਂ ਜਿਹੜੀ ਕਹਿੰਨਾ ਜਿਹੜਾ ਕਹਿੰਦੇ ਆ ਨਾ ਰੱਬ ਦੇਖੂਗਾ ਇਹਨਾਂ ਨੂੰ ਫਲਾਣਾ ਦੇਊਗਾ ਇਹ ਬਿਲਕੁਲ ਗਲਤ ਗੱਲਾਂ ਬੰਦੇ ਨੂੰ ਇੱਕ ਦਿਮਾਗ ਦਿੱਤਾ ਹੋਇਆ ਪ੍ਰਮਾਤਮਾ ਨੇ ਉਹ ਦਿਮਾਗ ਨੂੰ ਵਰਤਣਾ ਜਿਹੋ ਜਿਹਾ ਬੀਜੋਗੇ ਸੋਜਾ ਵੱਢੋਗੇ ਮੈਂ ਤਾਂ ਅੱਜ ਤੱਕ 6 ਮਿਲੀਅਨ ਜਿਊ ਉਨੇ ਆਬਜ਼ਰੂਟੀ ਮਾਰ ਕੇ ਮਰ ਗਏ ਤੇ ਗੋਲੀ ਮਾਰ ਕੇ ਤਾਂ ਉੱਥੇ ਹਜ਼ਾਰਾਂ ਲੋਕ ਮਰ ਗਏ ਆ ਬਲੂਕੇ ਦਾ ਮੁੰਡਾ ਮਰ ਗਿਆ ਜੀ ਉਹਨੂੰ ਪਾਵ ਮਿਲ ਗਿਆ ਕਿੰਨੇ ਦੇ ਮੁੰਡੇ ਮਰਦੇ ਆ ਇਹ ਗੱਲਾਂ ਬਾਹਰ ਨਿਕਲੋ ਇਹ ਸਾਥ ਲੈਣੇ ਦੀਆਂ ਸਾਨੂੰ ਗੱਲਾਂ ਕੀਤੀਆਂ ਹੋਈਆਂ ਜੀ ਉਹ ਦੇਖੂਗਾ ਉਹ ਦੇਖੂਗਾ ਉਹ ਉਹ ਨਹੀਂ ਦੇਖਣਾਗਾ ਇਹ ਪੰਜਾਬ ਲੋਕਾਂ ਨੂੰ ਦਿਮਾਗ ਪਰਮਾਤਮਾ ਨੇ ਦਿੱਤਾ ਆਪਦਾ ਦਿਮਾਗ ਵਰਤਣਾ ਪੈਣਾ ਤੇ ਗੁਰੂ ਗੋਬਿੰਦ ਸਿੰਘ ਨੇ ਸਾਰਾ ਪਰਿਵਾਰ ਕਿਉਂ ਬਣਾਤਾ ਉਹ ਵੀ ਕਹਿੰਦੇ ਜੀ ਉੱਥੇ ਦੇਖੀ ਚੱਲੂਗੀ ਦੋ ਮੁਸਲਮਾਨ ਆ ਕੇ ਉਸ ਦੀ ਮਾਰ ਕੇ ਅਸੇ ਗੰਦਾ ਵਿਚਾਰ ਦੇ ਨਹੀਂ ਸਾਡੇ ਗੁਰੂ ਸਾਹਿਬ ਸਾਨੂੰ ਸਾਰੀਆਂ ਪ੍ਰੈਕਟੀਕਲ ਗੱਲਾਂ ਕਰਕੇ ਦੱਸ ਕੇ ਆਪਣਾ ਆਪੇ ਹੀ ਕਾਜ ਸਵਾਰ ਗਿਆ ਇਹ ਗੱਲ ਹੈ ਜੀ ਥੈਂਕ ਯੂ ਥੈਂਕ ਯੂ ਭਾਈ ਜੀ ਕੋਲੋਂ ਉਹਨੇ ਕੋਈ ਕਾਲਾ ਜਾਦੂ ਤਾਂ ਨਹੀਂ ਪੰਜਾਬ 'ਚ ਕੀਤਾ ਵੀ ਸਾਲਾਂ 'ਚ ਲੋਕ ਠਟੀਆਂ ਤੇ ਕੇਜਰੀਵਾਲ ਦੀ ਗੱਲ ਕਰਨ ਲੱਗੇ ਕੁਝ ਤਾਂ ਉਸਨੇ ਦਿੱਤਾ ਹੀ ਹੈ ਪਰ ਹੋਰ ਨਹੀਂ ਮੈਨੂੰ ਪਤਾ ਘਰਾਂ ਦੇ ਘਰ ਹਲੇ ਵੀ ਉਹ ਜਾਈਏ ਤੇ ਉਹ ਜਿਉਂ ਟੀ ਪਟੱਪਾ ਕੀਤਾ ਹੋਇਆ ਸਤਾਉਜ ਵਾਲੇ ਮਾਸਟਰ ਦੇ ਮੁੰਡੇ ਨੇ ਵਾਣੀ ਪਾਤੇ ਵੱਡੇ ਵੱਡੇ ਦੇਖ ਲੋ ਵੀ ਰੂੜੀਆਂ ਦੇ ਉੱਪਰ ਦੀ ਕੋਈ ਇੱਧਰ ਨੂੰ ਭੱਜਦਾ ਕੋਈ ਉੱਧਰ ਨੂੰ ਭੱਜਦਾ ਸੜਕਾਂ ਤੇ ਲੋਕ ਲੈ ਆਂਦੇ ਜਿਹੜੇ ਅੰਦਰੋਂ ਨਿਕਲਦੇ ਨਹੀਂ ਕੁਝ ਨਾ ਕੁਝ ਤਾਂ ਲੋਕਾਂ ਦੀ ਉਹ ਕਰਾਮਾਤ ਹੈ ਜੇ ਤੁਸੀਂ ਕਹੋ ਬਈ ਉਹ ਬੰਦਿਆਂ ਦੇ ਕੱਲਿਆਂ ਦੇ ਲੀਡਰਾਂ ਦੇ ਨਾ ਨਾ ਲੋਕ ਵੀ ਨਾਲ ਨੇ ਹਾਰ ਕੇ ਜੇਸ ਨਾਲ ਤਾਂ ਹੀ ਲੱਗਦੀ ਜੇ ਕੋਈ ਘਰ ਦਾ ਸਾਹਮ ਨਹੀਂ ਜੇ ਸਾਂਭਣ ਵਾਲੇ ਹੁੰਦੀ ਕਾਂਗਰਸ ਤੇ ਕਾਲੀ ਕੇਜਰੀਵਾਲ ਮੂਰਥਲ ਚੁੱਪ ਨਹੀਂ ਸੀ ਸਕਦਾ ਇੱਧਰ ਨੂੰ ਜੇ ਇੰਨੀ ਸਾਡੇ ਚ ਅਣਖੋਂ ਦੀ ਬਾਹਰ ਲਾ ਨਹੀਂ ਬਾਹਰ ਲਾ ਅੰਦਰਲਾ ਕੋਈ ਨਹੀਂ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਸ਼ਾ ਪਟਨੇਉਂ ਜੰਮ ਕੇ ਆ ਕੇ ਸਾਨੂੰ ਕੌਮ ਬਣਾ ਕੇ ਤੇ ਉਹ ਵੀ ਬਾਹਰ ਨੇ ਫਿਰ ਇਹ ਨਹੀਂ ਗੱਲ ਹੈ ਸਮਾਜ ਸੁਧਾਰਕ ਕਿਤੋਂ ਸਕਦਾ ਸੁਖੀ ਸਿੰਧੂ ਮਿਰਦਾਲ ਹੁਣ ਦੋਹਾ ਕਤਰ ਤੋਂ ਗੱਲਬਾਤ ਕਰਨਗੇ ਪ੍ਰੋਗਰਾਮ ਸੁਣਦੇ ਸੀ ਰਾਤ ਦਾ ਤੇ ਸਮਾਂ ਫੀਫਾ ਦੇ ਨਾਲ ਬਹੁਤ ਸੀਨੀਅਰ ਪੋਸਟ ਤੇ ਕੰਮ ਕਰਦੇ ਆ ਇੱਥੇ ਵੀ ਕਮਿਊਨਿਟੀ ਦੇ ਵਿੱਚ ਰਹਿ ਕੇ ਲੋਕਾਂ ਨਾਲ ਬਹੁਤ ਕੰਮ ਕੀਤਾ ਸੌਫਟ ਡੈਟ ਤੋਂ ਜ਼ਿੰਦਗੀ ਸ਼ੁਰੂ ਕੀਤੀ ਸੌਰੀ ਸੌਖਰ ਖੇਲ ਨਹੀਂ ਸ਼ੁਰੂ ਕੀਤੀ ਫਿਰ ਡੈਡ ਬਣੇ ਫਿਰ ਨਾਲ ਬਹੁਤ ਵਧੀਆ ਕੋਚ ਬਣੇ ਜਿਹੜੇ ਅੱਜ ਰਾਜਨੀਤਿਕ ਕੜਮ ਚੌਧਰੀ ਸਰੀ ਜੁਰੇ ਫਿਰਦੇ ਆ ਉਹਨਾਂ ਨੂੰ ਉਂਗਲ ਫੜਕੇ ਤੋਰਨਾ ਸਕਾਇਆ ਸੁਖੀ ਸੰਧੂ ਨੇ ਪਰ ਸੱਚੇ ਬੰਦੇ ਪਿੱਛੇ ਰਹਿ ਜਾਂਦੇ ਨੇ ਪਰ ਲੋਕਾਂ ਦਾ ਉਹਨਾਂ ਨੂੰ ਪਿਆਰ ਮਿਲ ਜਾਂਦਾ ਸੁਖੀ ਸੰਧੂ ਜੀ ਤੁਹਾਡਾ ਸਵਾਗਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਤੁਹਾਡੇ ਸਾਰੇ ਲਿਸਨਰਸ ਐਡ ਕਰਨਾ ਚਾਹੁੰਨੇ ਹੂੰ ਮੈਥਡ ਆਫ ਪ੍ਰੋਗਰਾਮ ਸੁਣਿਆ ਅਸੀਂ ਤੇ ਮੈਨੂੰ ਬਹੁਤ ਲੱਖੇ ਦੀਆਂ ਗੱਲਾਂ ਸੁਣ ਕੇ ਤੇ ਬਹੁਤ ਖੁਸ਼ੀ ਆਵੇ ਇਹ ਜਿਹੜਾ ਨੌਜਵਾਨ ਖੜ ਰਿਹਾ ਸੱਚ ਦੇ ਵਾਸਤੇ ਤੇ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਜਿਹੜੇ ਤੁਹਾਡੇ ਸਾਡੇ ਸਾਰੇ ਐਨਆਰਆਈ ਵੀਰਾਂ ਨੂੰ ਤੇ ਭੈਣਾਂ ਨੂੰ ਜਿਹੜੇ ਇਸ ਟਾਈਮ ਤੇ ਹੁਣ ਸਿਸ਼ਲ 1 ਸਾਲ ਤੋਂ ਮੈਂ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਹਾਂ ਤੇ ਇਹ ਜਿਹੜੀ ਲਹਿਰ ਆ ਜਿਹੜਾ ਆਜ਼ਾਦੀ ਮੂਵਮੈਂਟ ਕਹ ਲਓ ਇਹ ਐਨਆਰਆਈ ਨੇ ਬਹੁਤ ਇਹਦੇ ਚ ਕੰਟ੍ਰਿਬਿਊਟ ਕੀਤਾ ਤੇ ਬਹੁਤ ਇਹ ਚ ਹਿੱਸਾ ਪਾਇਆ ਪਰ ਜੇ ਅਸੀਂ ਸੋਚੀਏ ਇਹ ਜਿਹੜੇ ਇਸ ਟਾਈਮ ਤੇ ਹਾਲਾਤ ਸਿਚੁਏਸ਼ਨ ਹੈਗੀ ਆ ਪੰਜਾਬ ਦੀ ਬਹੁਤ ਦੁੱਖ ਦੁੱਖ ਦੁੱਖ ਦਾ ਪਿੰਡਾਂ 'ਚ ਜਾ ਕੇ ਜਦੋਂ ਸਾਡੇ ਬੱਚੇ ਉੱਥੇ ਡਰੱਗਜ਼ ਦੇ ਅੰਡਰ ਤੇ ਜਾਂ ਉੱਥੇ ਕ腐ਸ਼ਨ ਹੋ ਰਹੀ ਆ ਜਾਂ ਅੱਜ ਵੀ ਬੂਥ ਮਿਚਿ 'ਚ ਪੂਥ ੱਟਕਾ ਹੋ ਰਿਹਾ ਤੇ ਮੈਂ ਇੱਕੋ ਹੀ ਬੇਨਤੀ ਕਰਦਾ ਦੇ ਇਕੱਲੇ ਗਵਰਨਮੈਂਟ ਚੇਂਜ ਚ ਨਹੀਂ ਸਾਰਾ ਕੰਮ ਹੋਣਾ ਜਿਵੇਂ ਆਪਾਂ ਸਿਟੀ ਮਾਰ ਕੇ ਗੱਲ ਹੋ ਜਾਣੀ ਏ ਤਾਂ ਇਹ ਸਾਨੂੰ ਇਕੱਲੇ ਇਕੱਲੇ ਨੂੰ ਐਨਆਰਆਈ ਵੀਰਾਂ ਨੂੰ ਭੈਣਾਂ ਨੂੰ ਇੱਥੇ ਉੱਠਣਾ ਪੈਣਾ ਜਾਗਣਾ ਜਾਗਰਾ ਪੈਣਾ ਕਿ ਹੁਣ ਜੇ ਆਪਾਂ ਦੇਖੀਏ ਡਰੱਗ ਦੀ ਵੀ ਕਲਚਰ ਕਿੱਥੋਂ ਸ਼ੁਰੂ ਹੋਈ ਆ ਪਿੰਡਾਂ 'ਚ ਇਹ ਇਹ ਸਾਡੇ ਬਾਹਲੇ ਦੇਸ਼ਾਂ 'ਚੋਂ ਹੀ ਪੈਸਾ ਆਇਆ ਬਾਹਲੇ ਦੇਸ਼ਾਂ 'ਚੋਂ ਹੀ ਡਰੱਗ ਮੰਨੀ ਸ਼ੁਰੂ ਹੋਈ ਆ ਜਾਂ ਪਿੰਡਾਂ 'ਚ ਕਈਆ ਸੋ ਜੇ ਜੇ ਮੈਨੂੰ ਪਤਾ ਦੇ ਕਈ ਬੰਦੇ ਹੁਣ ਡਰਗ ਚ ਹੈਗੇ ਗੱਲ ਲੁੱਕ ਹੋ ਜਾਂਦੀ ਆ ਮੀਡੀਆ ਪੇ ਆਫ ਹੋ ਜਾਂਦੀ ਆ ਕੁਛ ਵੀ ਹੋ ਜਾਂਦਾ ਹੁਣ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹੁਣ ਟਾਈਮ ਹੈਗਾ ਉੱਠਣ ਦਾ ਹੁਣ ਮੈਨੂੰ ਪਤਾ ਦੇ ਕਈ ਜਿਹੜੇ ਅਕਾਲੀਆਂ ਦੇ ਨਾਲ ਐਨਆਰਆਈਸ ਹੈਗੇ ਆ ਅਕਾਲੀਆਂ ਦੇ ਨਾਲ ਜੁੜੇ ਸੀ ਜੋ ਮਲੂਕਾ ਸਰੀ ਵੀ ਆਇਆ ਐਵਰਸਪੋਰਟ ਆਇਆ ਉਹੀ ਬੰਦਿਆਂ ਨੇ ਇਹਨੂੰ ਹੋਸਟ ਕੀਤਾ ਉਹੀ ਬੰਦੇ ਹੁਣ ਸਾਨੂੰ ਪੁੱਛਦੇ ਮੀਟਿੰਗਾਂ ਵਾਸਤੇ ਸਾਦਾ ਫਰਜਪੰਦਰ ਉਹਨਾਂ ਨੂੰ ਕਹਣਾ ਨੋ ਸਾਨੂੰ ਤੁਹਾਡੀ ਡਿਊਟੀ ਮੰਨੀ ਦੀ ਕੋਈ ਲੋੜ ਨਹੀਂ ਆਦਰਵਾਇਸ ਇਹ ਸਿਸਟਮ ਕਦੇ ਨਹੀਂ ਚੇਂਜ ਹੋਣਾ ਜਦੋਂ ਤੱਕ ਅਸੀਂ ਆਪਣੀ ਉੱਠੇ ਤੇ ਅਸੀਂ ਆਪ ਕੇਜੀਵਾਲ ਵੰਗੋ ਬਣਦੇ ਨਹੀਂ ਤੱਲੀ ਇਹ ਅਸੀਂ ਆਪ ਸੋਚੀਏ ਕਿ ਆ ਜਿਹੜੇ ਲੋਕੀ ਗੰਦ ਖਿਲਾ ਰਹੇ ਆ ਜਾਂ ਜਿਹੜੇ ਹੁਣ ਕਾਫੀ ਅਸਾਲੀਆਂ ਦੇ ਲੈਂਡ ਮਾਫੀਆ ਵੀ ਹੈਗੇ ਆ ਪਾਰਟਨਰਸ ਦੇ ਅਮਰੀਕਾ ਜਾਂ ਕੈਨੇਡਾ ਹੈਗੇ ਆ ਉਹਨਾਂ ਨੂੰ ਨਹੀਂ ਪਤਾ ਕਿ ਇੱਥੇ ਗੁੰਡਾ ਰਾਜ ਚੱਲਦਾ ਉਹਨਾਂ ਨੂੰ ਨਹੀਂ ਪਤਾ ਸੀ ਕਿ ੱਤਕਾ ਹੋ ਰਿਹਾ ਬੱਚਿਆਂ ਦੇ ਨਾਲ ਜੰਟਰਾ ਕਲਚਰ ਜਾਂ ਟੀਚਰਾਂ ਦੇ ਨਾਲ ਜੰਤ ਆਪਣੀ ਸਾਡੇ ਫਾਰਮਰਸ ਦੇ ਨਾਲ ੱਤਕਾ ਨਹੀਂ ਹੋ ਰਿਹਾ ਇਹਨਾਂ ਨੂੰ ਸਭ ਪਤਾ ਸੋ ਮੈਂ ਕਹਿ ਰਿਹਾ ਇਹ ਜਿਹੜੀ ਬਿਜ਼ਨਸ ਆ ਇੱਕ ਕਿਸਮ ਦਾ ਗੁੰਡਾ ਰਾਜ ਇਕੱਲੇ ਪੰਜਾਬ 'ਚ ਨਹੀਂ ਹੈਗਾ ਇਹ ਬਾਹਲੇ ਦੇਸ਼ਾਂ 'ਚ ਵੀ ਬੰਦੇ ਬੈਠੇ ਆ ਇਹ ਬਿਜ਼ਨਸਮੈਨ ਹੈਗੇ ਆ ਇਹਨਾਂ ਨੇ ਹੁਣ ਟਰਾਈ ਕਰਨਾ ਉਹੀ ਲਿੰਕ ਇਹਨਾਂ ਨੇ ਆਮ ਆਦਮੀ ਪਾਰਟੀ 'ਚ ਟਰਾਈ ਕਰਦਾ ਤੇ ਮੈਂ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਹੈਗੇ ਬਾਹਲੇ ਦੇਸ਼ਾਂ 'ਚ ਗੇਂਟਿੰਗ ਕਰਨਾ ਇਹ ਲੋਕਾਂ ਨੂੰ ਸਾਨੂੰ ਸਾਡੀ ਪਾਰਟੀ ਦੇ ਨੇੜੇ ਨਾ ਆਉਣ ਦਿਓ ਭਾਵੇਂ ਜਿੰਨਾ ਮਰਜੀ ਇਹ ਆਦਾ ਪੈਸਾ ਸਾਨੂੰ ਪ੍ਰਪੋਸ ਕਰਨ ਇਹਨਾਂ ਦਾ ਡਰਟੀ ਦੀ ਕੋਈ ਲੋੜ ਨਹੀਂ ਸਾਡੀ ਪਾਰਟੀ 'ਚ ਅੱਛਾ ਤੁਸੀਂ ਮੇਰੇ ਨਾਲ ਹੁਣ ਮੈਨੂੰ ਐ ਦੱਸਿਓ ਵੀ FIFA ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ 271 ਦੇ ਜਿਹੜੇ ਸਟੇਡੀਅਮ ਬਣ ਰਹੇ ਨੇ ਉਹਦੇ ਬਾਰੇ ਆਪਣੀ ਪੋਜੀਸ਼ਨ ਦੱਸਿਓ FIFA ਦੇ ਵਿੱਚ ਤੇ ਉਹ ਕਿਹੜੇ ਕੰਮ ਤੇ ਹੁਣ ਤੁਸੀਂ ਲੱਗੇ ਹੋਏ ਹੋ ਅੱਜਕੱਲ੍ਹ ਮੈਂ ਹੁਣ ਹਿੱਟ ਦਾ ਵੈਂਟ ਹੈਗਾ ਇੱਥੇ ਐਸਪਾਇਰ ਜ਼ੋਨ ਇਹ 240 ਏਕੜ ਦਾ ਆ ਸਪੋਰਟਿੰਗ ਡੈਸਟੀਨੇਸ਼ਨ ਹੈ ਜਾਂ ਮੇਨ ਸਟੇਡੀਅਮ FIFA ਦਾ 2022 ਚ ਹੈਗਾ ਪਰ ਮੇਰੇ ਵਾਸਤੇ ਵੀ ਜਿਹੜੇ ਸੱਚਾਈ ਵਾਸਤੇ ਜਦੋਂ ਇੱਥੇ ਹਿਊਮਨ ਰਾਈਟਸ ਦੀ ਗੱਲ ਹੁੰਦੀ ਅਸੀਂ ਖੜੀ ਦਾ ਅਸੀਂ ਕੱਲੇ ਆ ਨਹੀਂ ਦੇਖੀ ਦਾ ਸਾਡਾ ਆਪ ਮੌਕਾ ਲਾਈਕ ਅਸੀਂ ਕਰ ਲਈਏ ਨਹੀਂ ਜਿੱਥੇ ਸਟੈਂਡ ਹੁੰਦਾ ਸਟੈਂਡ ਤੇ ਖੜੀ ਦਾ ਮੈਂ ਆਈ ਬੇਨਤੀ ਕਰਦਾ ਇਲੈਕਸ਼ਨ ਇਹ ਗਵਰਨਮੈਂਟ ਚੇਂਜ ਕਰਨੀ ਪੰਜਾਬ ਚ ਬਹੁਤ ਟਾਈਮ ਲੱਗਣਾ ਸਾਰਾ ਕਰਪਸ਼ਨ ਬੰਦ ਕਰਨਾ ਪਰ ਕਰਪਸ਼ਨ ਜਿਹੜੀ ਸਾਡੀ ਆਪ ਦੀ ਸੋਚ ਆ ਆਪ ਅੰਦਰੋਂ ਸੋਚ ਆ ਇਹ ਚੇਂਜ ਹੋਵੇ ਮੈਂ ਬਹੁਤ ਐਨਆਰਆਈਆਂ ਨੂੰ ਦੇਖਦਾ ਜਿਉਂ ਪੰਜਾਬ ਚ ਹੁੰਦੇ ਆਪ ਨੂੰ ਵੀਆਈਪੀ ਵਾਂਗੂ ਸਮਝਦੇ ਆ ਅਸੀਂ ਉਹੀ ਪਿੰਡਾਂ ਚੋਂ ਆਏ ਆ ਉਹੀ ਸਾਡੀ ਧਰਤੀ ਆ ਸਾਨੂੰ ਵੀ ਆਪ ਚੇਂਜ ਹੋਣਾ ਚਾਹੀਦਾ ਜਿਹੜੇ ਬੰਦੇ ਲੀਗਲ ਕੰਮ ਕਰ ਰਹੇ ਆ ਭਾਵੇਂ ਉਹ ਇਮੀਗ੍ਰੇਸ਼ਨ ਦਾ ਲੀਗਲ ਕੰਮ ਕਰ ਸਟੂਡੈਂਟਸ ਨਾਲ ੱਤਕਾ ਕਰਦੇ ਆ ਵੀਜ਼ਿਆਂ ਦਾ ਸਭ ਕੁਝ ਉਹਨਾਂ ਨੂੰ ਆਪਾਂ ਐਕਸਪੋਜ਼ ਕਰੀਏ। ਭਾਵੇਂ ਪੋਲਿਟਿਸ਼ੀਨ ਵੀ ਹੈਗੇ ਆ। ਉਹ ਕਹੀ ਪਰ ਇੱਕ ਪੋਲਿਟਿਸ਼ੀਨ ਇੱਥੇ ਇਲੈਕਸ਼ਨ ਆਇਆ ਤਾਂ ਮੈਂ ਕਦੇ ਨਹੀਂ ਸੁਣਿਆ। ਇਲੈਕਸ਼ਨ ਪੰਜਾਬ ਦੀ ਹੋ ਰਹੀ ਆ ਤੇ ਤੁਹਾਡਾ ਕੈਨੇਡਾ ਦਾ ਐਮਪੀ ਇੱਥੇ ਆ ਕੇ ਦਖਲ ਦੇਵੇ। ਗੱਲ ਤਾਂ ਬਟ ਇਹ ਗੱਲ ਅੱਜ ਤੱਕ ਹੱਲੇ ਤੱਕ ਪੰਜਾਬ ਦੀ ਸਾਡੀ ਪੰਜਾਬੀ ਮੀਡੀਆ 'ਚ ਇਹ ਗੱਲ ਆਈ ਨਹੀਂ। ਐਕਸਪੋਜ਼ ਨਹੀਂ ਹੋਈ। ਤੇ ਗੱਲ ਯਾ ਫਰ ਇਹ ਇਹ ਇਹ ਸੁਖੀ ਜੀ ਇਸ ਗੱਲ ਦਾ ਨਹੀਂ ਨਾ ਪਤਾ ਲੱਗਿਆ ਕਿ ਐਮਪੀ ਉੱਥੇ ਗਿਆ ਹੋਇਆ ਇੱਕ ਸਰੀ ਤੋਂ ਪਰ ਉਹ ਰਾਜਨੀਤੀ ਸਰਗਰਮੀਆਂ ਚ ਫਿਰ ਰਿਹਾ ਉਹਦਾ ਪਰਸਨਲ ਟੂਰ ਵੀ ਹੋ ਸਕਦਾ ਤੁਹਾਡੇ ਕੋਲ ਕੋਈ ਸਬੂਤ ਹੈ ਕਿ ਉਹਨੇ ਰਾਜਨੀਤੀ ਚ ਕੋਈ ਹਿੱਸਾ ਲਿਆ ਡੀ ਜੀ ਓਕੇ ਇੱਕ ਤਾਂ ਕੰਮ ਹੋਵੇ ਉਹ ਤਾਂ ਮੰਨ ਲਈਦਾ ਬਟ ਆਮਾ ਛੋਟੇ ਤੋਂ ਛੋਟੇ ਪੋਲਿਟਿਸ਼ੀਅਨ ਨੂੰ ਪਦਾਂ ਹੁੰਦਾ ਜੇ ਬਾਹਰਲੇ ਦੇਸ਼ ਚ ਇਲੈਕਸ਼ਨ ਦਾ ਟਾਈਮ ਹੁੰਦੇ ਕੋਈ ਨਾਲੇ ਇਹ ਜੇ ਇਲੈਕਸ਼ਨ ਜਿੱਤ ਪੰਜਾਬ ਚ ਇੰਨਾ ਸੈਂਸਿਟਿਵ ਟਾਈਮ ਆ ਕੋਈ ਬੰਦਾ ਉਹਨੂੰ ਆਪ ਹੀ ਅਕਲ ਹੋਣੀ ਚਾਹੀਦੀ ਵੀ ਮੈਂ ਇੱਧਰ ਇਸ ਦਿਖਾਣਾ ਦੇਵਾਂ ਪਰ ਕਈ ਬੰਦੇ ਹੁੰਦੇ ਆ ਉਹ ਆਪ ਨੂੰ ਕਲੇਵਰ ਸਮਝਦੇ ਆ ਹੇਕ ਤਾਂ ਝੂਠ ਬੋਲਣਾ ਰੇਕ ਤਾਂ ਲੱਤ ਲਾਉਣੀ ਇਹ ਚੰਗੀ ਗੱਲ ਨਹੀਂ ਹੈਗੀ ਇੱਥੇ ਕਦੇ ਨਹੀਂ ਮੰਨਣਾ ਮੇਰਾ ਮਤਲਬ ਕੱਲ ਮੈਂ ਗੱਲ ਕਰ ਰਿਹਾ ਸੀ ਸੁਖੀ ਮੈਂ ਕੱਲ ਗੱਲ ਕਰ ਰਿਹਾ ਸੀ ਤੁਸੀਂ ਸ਼ੁਰੂ ਰਾਤ ਦੇ ਸਮੇਂ ਜਿੱਥੇ ਰਾਜਨੀਤੀ ਚ ਰਹੇ ਹੋ ਪਰ ਤੁਸੀਂ ਦੇਖਿਆ ਜਿਆਦਾ ਇਹ ਗੰਦ ਪੈ ਗਿਆ ਤੁਸੀਂ ਇਹ ਤੋਂ ਪਰਾਂ ਹੋਏ ਕੱਲ ਮੈਂ ਗੱਲ ਕਰਦਾ ਵੀ ਪੰਜਾਬ ਦੀ ਤਾਂ ਅਸੀਂ ਗੱਲ ਕਰ ਰਿਹਾ ਪਰ ਇੱਥੋਂ ਕੂੜਾ ਹੁੰਜਣ ਦੀ ਜ਼ਰੂਰਤ ਹੈ ਸਾਡਾ ਵੀ ਅਸੀਂ ਗੰਦ ਪਾ ਰਹਿਆ ਆਉਣ ਵਾਲੀਆਂ ਪੀੜ੍ਹੀਆਂ ਅਸੀਂ ਪ੍ਰਦੇਸਾਂ ਦੇ ਵਿੱਚ ਸਾਡਾ ਭਵਿੱਖ ਸੁਰੱਖਿਅਤ ਨਹੀਂ ਜਿਹਹਜਾ ਕੰਮ ਅਸੀਂ ਕਰਨ ਲੱਗੇ ਹੋਇਆ ਹਾਂ ਹਾਂ ਜੇ ਜੇ ਅਪ ਦੇਖੀਏ ਹੁਣ ਜਦੋਂ ਪੋਲਿਟਿਕ ਸਾਡੇ ਜੋ ਨੇ ਸ਼ੁਰੂ ਕੀਤੀ ਆ ਜਾਂ ਆਪਾਂ ਦੇਖ ਲਈਏ ਮੌਸਮ ਹੌਤੇ ਵਰਗਿਆਂ ਨੇ ਜੇ ਆਪਾਂ ਹੁਣ ਹਾਲਾਤ ਦੇਖੀਏ ਕਈ ਬੰਦਿਆਂ ਦੇ ਲਾਈਕ ਦੇਖ ਲੋ ਨਬਦੀ ਨਬਦੀ ਕਿੰਨਾ ਅੱਛਾ ਕੰਮ ਕਰ ਰਿਹਾ ਸਾਨੂੰ ਮਾਣ ਆਪਣੇ ਨੈਸ਼ਨਲ ਡਿਫੈਂਸ ਡਿਫੈਂਸ ਕਿੰਨਾ ਅੱਛਾ ਕੰਮ ਕਰ ਰਿਹਾ ਹਮਮਮਮ ਬਰਨਦੀਪ ਕਿੰਨਾ ਅੱਛਾ ਕੰਮ ਕਰ ਰਿਹਾ ਹੁਣ ਕੌਕਸ ਦਾ ਚਿਹਰਾ ਬੀਸੀ ਦਾ ਪਰ ਜਿਹੜੇ ਬੰਦਿਆਂ ਨੇ ਹਰੇਕ ਸਾਲ ਸਿਟੀ ਵੀ ਇਲੈਕਸ਼ਨ ਹੋਵੇ ਫਰਮਾ ਐਮਐਲਏ ਦੇ ਇਲੈਕਸ਼ਨ ਹੋਵੇ ਫ੍ਰੇਕ ਫਸੇ ਉਹ ਹੀ ਪੰਜਾਬੀ ਦੇਸੀ ਪੋਲਿਟਿਕਸ ਖੇਲੀ ਜਾਣੀ ਹੈ ਉਹ ਗਲਤ। ਪਰ ਮੈਂ ਤੁਹਾਨੂੰ ਘਰਦਿਆਂ ਨੂੰ ਵੀਜ਼ਾ ਵੱਲ ਜਾ ਤੁਹਾਡੇ ਆਦੇ ਕੰਮ ਹੋ ਜਾ ਜੀ ਸੱਚ ਸੱਚ ਤੇ ਖੜੋ। ਜੇ ਇਹ ਸੋਚ ਇਹ ਸਾਡਾ ਰੈਪਿਟੇਸ਼ਨ ਆ ਖਰਾਬ ਹੋ ਰਿਹਾ। ਅਸੀਂ ਆ ਥੈਂਕ ਗੁੱਸਾ ਨਾ ਮੰਨਿਓ ਅੱਤ ਜਿਹੜੀ ਸਚਾਈ ਹੈ ਸਚਾਈ ਹੈ ਤੇ 나 ਹੀ ਬੇਨਤੀ ਕਰਦਾ ਜੇ ਤੁਹਾਡੇ ਲਿਸਨਰਸ ਨੂੰ ਕੋਈ ਲੀਗਲ ਕੰਮ ਬੰਦੇ ਕਰ ਰਹੇ ਆ ਪੰਜਾਬ ਚ ਸਹੀ ਉਹ ਕੱਲੇ ਕੇਜਰੀ ਵਾਲਤੇ ਨਾ ਗੱਲ ਛੱਡੋ ਜਾਂ ਆਮ ਆਦਮੀ ਪਾਰਟੀ ਤੇ ਤੁਹਾਡਾ ਆਪ ਵੀ ਫਰਜ ਬੰਦਾ ਇਹ ਬੰਦਿਆਂ ਨੂੰ ਐਕਸਪੋਜ਼ ਕਰਨਾ ਥੈਂਕ ਯੂ ਸਤਿ ਸ੍ਰੀ ਅਕਾਲ ਸੁਖੀ ਸਰ ਦੋਹਾ ਕੱਦਰ ਤੋਂ ਗੱਲਬਾਤ ਕਰ ਰਹੇ ਸੀ ਉਹਨਾਂ ਨੇ ਪਿਛਲਾ 1 ਸਾਲ ਆਮ ਆਦਮੀ ਪਾਰਟੀ ਦੇ ਕੋਆਰਡੀਨੇਟਰ ਬਣ ਕੇ ਰਹੇ ਹੋ ਐਨਆਰਆਈ ਦੇ ਤੌਰ ਤੇ ਤੇ ਨਾਲ ਉਹਨਾਂ ਨੇ ਇਲੈਕਸ਼ਨ ਡੇ ਤੇ ਮੇਨ ਜਿਹੜਾ ਉਸ ਦਿਨ ਦੇ ਆਪਰੇਸ਼ਨ ਸੀ ਉਹਨਾਂ ਨੂੰ ਆ ਆਪਣੇ ਥੱਲੇ ਰੱਖਿਆ ਵੀ ਕਿਵੇਂ ਆਪਰੇਟ ਕਰਨਾ ਹੈ ਬਹੁਤ ਸੀਨੀਅਰ ਲੈਵਲ ਤੇ ਉਹ ਦੇ ਵਿੱਚ ਹੈਡ ਆਫ ਆਪਰੇਸ਼ਨਸ ਦਾ ਕੰਮ ਕਰ ਰਹੇ ਨੇ 2022 ਦੇ ਵਿੱਚ ਬਹੁਤ ਵੱਡਾ ਇੱਕ ਜਿਹੜਾ ਵਰਲਡ ਕੱਪ ਹੋ ਰਿਹਾ ਦੋਹਾ ਕਤਰ ਚ ਉਹਦੇ ਲਈ ਉਹ ਉੱਥੇ ਕੰਮ ਕਰਦੇ ਨੇ ਇੱਥੇ ਵੀ ਸਦਾਈ ਚਾਹੇ ਉਹ ਲੋਕਲ ਸੌਕਰ ਦੀ ਰਾਜਨੀਤੀ ਹੋਵੇ ਜਾਂ ਫਿਰ ਉਂ ਰਾਜਨੀਤੀ ਹੋਵੇ ਜਿੱਥੇ ਸੱਚ ਦੀ ਗੱਲ ਉੱਥੇ ਸੁਖੀ ਸਿੰਧੂ ਨੇ ਬਹੁਤ ਤਕੜਾ ਸਟੈਂਡ ਲਿਆ ਔਰ ਹੁਣ ਵੀ ਇੱਕ ਗੱਲ ਉਹਨਾਂ ਨੂੰ ਬੜੀ ਰੜਕਦੀ ਆ ਕਹਿੰਦਾ ਵੀ ਪੈਸੇ ਵਾਲੇ ਤੁਹਾਡੇ ਬੰਦੇ ਇੱਥੇ ਸਰੀ ਦੇ ਹੁਣ ਜਿਨ੍ਹਾਂ ਦੇ ਦੂਜੀਆਂ ਪਾਰਟੀਆਂ 'ਚ ਜਿਗਾੜ ਸੀ ਹੁਣ ਉਹ ਆਮ ਆਦਮੀ ਪਾਰਟੀ ਦੇ ਵਿੱਚ ਬੰਦਿਆਂ ਨੂੰ ਲੱਭਦੇ ਫਿਰਦੇ ਆ ਹੁਣੇ ਸੈੱਟ ਕਰਨਾ ਸ਼ੁਰੂ ਹੋ ਗਿਆ ਹਲੇ ਤੱਕ ਕੱਲ ਦੀਆਂ ਗੱਲਾਂ ਇੱਥੇ ਰਾਤਰੀ ਭੋਜਨ ਦੇ ਜੱਫੀਆਂ ਤੇ ਫੋਟੋਆਂ ਇੱਥੇ ਛਪੀਆਂ ਸੀ ਤੇ ਹੁਣ ਉਹ ਪੰਜਾਬ ਦੇ ਵਿੱਚ ਜਿਗਾੜ ਪੂਰਾ ਫਿੱਟ ਹੋ ਰਿਹਾ ਤੇ ਇਹੀ ਕਹਾਣੀ ਆ ਓਏ ਜਿਹੜਾ ਆਪਣਾ ਦੂਰਾ ਕਰਦਾਰ ਹੈ ਇਹ ਸਾਨੂੰ ਬਹੁਤ ਔਖਾ ਕਰੂਗਾ ਤੇ ਸਾਨੂੰ ਇਹਦੇ ਚ ਕੁਝ ਨਹੀਂ ਆਮ ਲੋਕ ਜਿਨ੍ਹਾਂ ਦੀ ਆਰਮੀ ਪਾਰਟੀ ਤੇ ਅਕਾਲੀ ਜਾਂ ਕਾਂਗਰਸ ਨਾਲ ਨਹੀਂ ਆਮ ਲੋਕ ਵੀ ਜਿਉਂਦੇ ਆ ਉੱਥੇ ਹਾ ਇਹਨਾਂ ਨਾਲ ਜੱਫੀਆਂ ਪਾ ਕੇ ਕੁਝ ਖਾਸ ਨਹੀਂ ਮਿਲਣਾ ਆਮ ਲੁਕਾਈਓ ਸੌਖੀ ਹੋ ਜਵੇ ਅਸੀਂ ਲੋਕਾਂ ਚ ਹੀ ਆਉਨੇ ਆ ਬਸ ਪਰ ਪਤਾ ਲੱਗ ਜਾਂਦਾ ਲੋਕਾਂ ਨੂੰ ਲੁਕਦੀ ਨਹੀਂ ਹੈ ਗੱਲ 12:57 ਮਿੰਟ ਹੋਏ ਨੇ ਗੱਲਾਂ ਬਾਤਾਂ ਜਿਉਂ ਤੁਰੀਆਂ ਖਬਰਾਂ ਵਿੱਚੇ ਰਹਿ ਗਈਆਂ ਗੱਲ ਠੀਕ ਹੋ ਗਈ ਜਿਹੜੀ ਕੱਲ ਇੱਕ ਬਹੁਤ ਵਧੀਆ ਪ੍ਰੈਸ ਕਾਨਫਰੰਸ ਹੋਈ ਯੂਟਾ ਦੀ ਉਹ ਇਕੱਠੇ ਹੋਣ ਦਾ ਪਲੀਜ਼ ਇਕੱਠੇ ਹੋ ਜਾਓ ਇਹ ਇੱਕ ਇੰਡਸਟਰੀ ਨਹੀਂ ਇੰਡਸਟਰੀ ਚ ਮਾਰਾ ਪੈਂਦੀਆਂ ਨੇ ਕਿਉਂ ਨਹੀਂ ਇਕੱਠੇ ਹੁੰਦੇ ਇੱਕ ਜਗ੍ਹਾ ਤੇ ਨਾ ਹੋ ਜੇ ਇੱਕ ਭਾਈਚਾਰਾ ਇੱਕ ਮੇਰਾ ਭਾਈ ਭੁੱਖਾ ਥਿਆਇਆ ਤੇ ਮੇਰੇ ਘਰ ਦੇ ਵਿੱਚ ਅੰਬਾਰ ਰੋਟੀ ਪਾਣੀ ਦੇ ਲੱਗਣ ਹੈ ਤੇ ਇਹ ਜਿਹੇ ਪੈਸੇ ਜਿਹੜੇ ਵੱਧ ਪੈਸੇ ਕਮਾਉਣ ਵਾਲੇ ਉਹ ਕਹਿੰਦੇ ਸਾਨੂੰ ਲੋੜ ਹੀ ਨਹੀਂ ਸਟ੍ਰਾਈਕ ਦਾ ਹਿੱਸਾ ਨਹੀਂ ਮਿਲਣਾ ਇਹ ਨਹੀਂ ਵਾ ਅਖੀਰ ਭਾਈਚਾਰਾ ਦਾ ਭਾਈਚਾਰਾ ਹੀ ਆ ਬਿਨਾ ਭਾਈਚਾਰੇ ਤੋਂ ਕੀ ਕਰੋਗੇ ਜਦੋਂ ਇੱਥੇ ਪਹਿਲਾਂ ਮੁਕਾਏ ਸੀ ਦਸਤਾਰ ਦੀ ਸੀ ਦਿਖਦੀ ਕਿਸੇ ਦੇ ਸਿਰ ਤੇ ਮਸਾਂ ਦਸਤਾਰ ਵਾਲਾ ਕੋਈ ਲੱਭਦਾ ਦੀ ਲੋਕ ਭੱਜ ਕੇ ਇੱਕ ਦੂਜੇ ਨੂੰ ਮਿਲਦੇ ਸੀ ਵੀ ਮਸਾਂ ਪਿੰਡ ਦਾ ਬੰਦਾ ਮਿਲਿਆ ਏਰੀਆ ਦਾ ਬੰਦਾ ਪੰਜਾਬ ਦਾ ਮਿਲਿਆ ਹੁਣ ਜਿਉਂ-ਜਿਉ ਬਹੁਤਾਤ ਹੋ ਗਈ ਸਾਡੇ ਸਿਰ ਤੇ ਕੁਰਸੀਆਂ ਤਾਂ ਢਾਹ ਲੀਆਂ ਕੋਈ ਵਿਕਟੋਰੀਆ ਜਾਵੜਿਆ ਕੋਈ ਆਠਵਾ ਜਾਵੜਿਆ ਥੋਡੀਆਂ ਬਾਹਾਨੀ ਲੋਕ ਫੜਦੇ ਇਹਨਾਂ ਨੂੰ ਨੰਗਾ ਕਰੋ ਫਿਰ ਹੋਰ ਨਾ ਤੋ ਕਰਾਉਣਾ ਤੁਸੀਂ ਕੀ ਹੈ ਇਹ ਨਾ ਲੁਕਮੀਆਂ ਯਾਰੀਆਂ ਪਾਲੋ ਨਾ ਲੁਕਮੇ ਗੁੜ ਭੰਨੋ ਦੱਸੋ ਇਹਨਾਂ ਦੇ ਬਾਰੇ ਇਹਨਾਂ ਨੇ ਕਰਤੂਤਾਂ ਵੀ ਇਹਨਾਂ ਨੇ ਆ ਵਾਦਾ ਕੀਤਾ ਸਾਡੇ ਨਾਲ ਆ ਨਹੀਂ ਕੀਤਾ ਜਦ ਮੁੰਡੇ ਸੰਘਰਸ਼ ਦੀ ਗੱਲ ਕਰਦੇ ਨੇ ਉਸ ਸਮੇਂ ਦਫ਼ਤਰਾਂ ਚੋਂ ਕਿਵੇਂ ਸੈਕਟਰੀ ਤੁਹਾਡੇ ਫੋਨ ਕਰਨ ਲੱਗ ਜਾਂਦੇ ਨੇ ਉਹ ਇਹਨਾਂ ਦੀ ਤੁਸੀਂ ਬਾਤ ਕਿਉਂ ਨਹੀਂ ਪੁੱਛਦੇ ਜੁਨਾਈਟ ਹੋਵੋ ਇਕੱਠੇ ਹੋਵੋ ਔਰ ਉਸ ਸੁਣਿਓ ਫੇਸਬੁੱਕ ਤੇ ਲਾਈਵ ਕੱਲ ਕੀਤਾ ਸੀ ਸਾਰਾ মিডিਆ ਉੱਥੇ ਇਕੱਠੇ ਹੋਏ ਸੀ ਉਸ ਸੁਣਿਓ ਉਹਦੇ ਚ ਗਗਨ ਸਿੰਘ ਤੇ ਉਹਦੇ ਨਾਲ ਦੇ ਸਾਥੀ ਕੀ ਕਹਿ ਰਹੇ ਨੇ ਵੀ ਸਾਡੇ ਨਾਲ ਕੀ ਕੀਤਾ 45 ਮਿੰਟ ਦੀ ਆ ਵੀਡੀਓ ਦੇਖਣ ਵਾਲੀ ਹੈ ਔਰ ਸੱਚ ਦੀ ਬਿਨਾ ਤੇ ਖੜੋ ਤੇ ਸਾਰਿਆਂ ਦੇ ਜੀਚ ਫਲਾ ਜੇ ਕੱਲਾ ਅਮੀਰ ਬੰਦਾ ਕੀ ਕਰੂ ਜੇ ਇੱਕ ਪਿੰਡ ਦੇ ਵਿੱਚ ਇੱਕ ਸ਼ਾਹੂਕਾਰ ਹੈ ਤੇ 2000 ਪਰਿਵਾਰ ਭੁੱਖਾ ਮਰਦਾ ਉਹ ਕੱਲੇ ਦਾ ਘਰ ਟੱਪ ਲੈਣਾ ਲੋਕਾਂ ਨੇ ਜਿੱਦਾਂ ਰੋਟੀ ਨਾ ਮਿਲੀ ਉਹਦੀਆਂ ਕੰਧਾਂ ਟੱਪ ਲੈਣੀਆਂ ਲੋਕਾਂ ਨੇ ਜਿੱਦਾਂ ਮਰਜੀ ਉਹ ਰੱਖ ਲਵੇ ਆਲੇ ਵਾਲੇ ਬੰਦੇ ਕਿਸੇ ਨੇ ਨਹੀਂ ਚੜਨਾ ਲੋਕ ਰੋ ਸਾਹਮਣੇ ਕੁਛ ਨਹੀਂ ਰੁਕਦਾ ਹੁਣ ਤੁਹਾਨੂੰ ਬਹੁਤ ਚੀਜ਼ਾਂ ਮਿਲਣੀਆਂ 3 ਮਹੀਨੇ ਰਹਿੰਦੇ ਬੜੇ ਗੇੜੇ ਕੱਢਣੇ ਨੇ ਤੁਹਾਨੂੰ ਦਫ਼ਤਰਾਂ 'ਚੋਂ ਬੜੀਆਂ ਆਫਰਾਂ ਆਉਣੀਆਂ ਨੇ ਪਹਿਲਾਂ ਦੇਖ ਲਿਆ ਉੱਥੇ ਜਾ ਕੇ ਹੱਥ ਮਲਾ ਕੇ ਦਿਲ ਤੇ ਲਾ ਕੇ ਵੀ ਦਿਲ ਠੰਡਾ ਹੋ ਗਿਆ ਉਹ ਚੱਕ ਨਹੀਂ ਮਿੱਟੀ ਦਾ ਜਾਂਦਿਆਂ ਨੂੰ ਵੀ ਵਰਜਿਆ ਸੀ ਉਹ ਨਾ ਜਾਓ ਨਾ ਜਾਓ ਕਾਲੀ ਨਾ ਕਰੋ ਇੱਕ ਦੂਜੇ ਤੋਂ ਉੱਪਰ ਦੀ ਇਹ ਮੁੱਖ ਮੰਤਰੀ ਮਾਰੀ ਮੋਟੀ ਗੱਲ ਲੈ ਲੋ ਚਿੱਕੂ ਇੱਕ ਗੀਤ ਸੁਣਦੇ ਆ ਤੇ ਦੋ ਚਾਰ ਸੁਣਾਦੇ ਆ ਵਰਲਡ ਦੀਆਂ ਖਬਰਾਂ ਆਪਾਂ ਇਹ ਚ ਸਾਂਝੀਆਂ ਕਰਦੇ ਹੁੰਨੇ ਆ ਅੱਗੇ ਤਾਂ ਇੱਕ ਲੋਕਲ ਤੁਹਾਨੂੰ ਖਬਰ ਸੁਣਾਵਾਂ ਲਿਬਰਲ ਪਾਰਟੀ ਨੇ ਆਇਲੈਂਡ ਤੇ ਲੋਕਾਂ ਨੂੰ ਸੁਨੇਹੇ ਭੇਜੇ ਕਿ ਆਹਾ ਸਰਵੇ ਵਿੱਚ ਹਿੱਸਾ ਬਣਾਓ ਬਣੋ ਤੇ ਸਾਨੂੰ ਦੱਸੋ ਕਿ ਤੁਸੀਂ ਕੀ ਭਾਲਦੇ ਹੋ ਮੂਰਲੀਆ ਇਲੈਕਸ਼ਨਾਂ ਚ ਜਿਹੜੇ ਲੋਕਾਂ ਨੇ ਜਾਣਕਾਰੀ ਦਿੱਤੀ ਉਹਨਾਂ ਨੂੰ ਉਹਨਾਂ ਦੀ ਈਮੇਲ ਤੇ ਉਹਨਾਂ ਦੇ ਕੰਟੈਕਟ ਸਪਰੈਡਸ਼ੀਟ ਤੇ ਕਿਤੇ ਪੈ ਗਏ ਤੇ ਉੱਥੇ ਉਹ ਕਿਸੇ ਮਾਈਕ ਸਮਿਥ ਜਿਹੜਾ ਪ੍ਰੋਵਿੰਸ ਵਿੱਚ ਲਿਖਦੇ ਆ ਉਹਨਾਂ ਦੇ ਹੱਥ ਚੜ ਗਈ ਗੱਲ ਉਹ ਲਿੰਕ ਗਾਂ ਫਿਰ ਚਲੇ ਗਿਆ ਵੈਬਸਾਈਟ ਤੇ ਵੈਬਸਾਈਟ ਤੋਂ ਉਹ ਲੋਕਾਂ ਲਈ ਜਨਤਕ ਸੀ ਲੋਕਾਂ ਦੀ ਬਹੁਤ ਜਾਣਕਾਰੀ ਜਿਹੜੀ ਉਹਨਾਂ ਦਾ ਪਰਸਨਲ ਨਾਂ ਤੇ ਈਮੇਲਾਂ ਜਨਤਕ ਹੋ ਗਈਆਂ ਜਦ ਹੀ ਪਤਾ ਲੱਗਿਆ ਇਹਨਾਂ ਨੂੰ ਇਹ ਕਹਿੰਦੇ ਸਾਡੀ ਵੈਬਸਾਈਟ ਹੈਕ ਹੋ ਗਈ ਮੈਂ ਸੁਮਿਤ ਕਹਿੰਦਾ ਹੈਕ ਨਹੀਂ ਹੋਈ ਤਾਂ ਜਨਤਕ ਪਈ ਸੀ ਤੁਹਾਡੀ ਹੈਕ ਵਾਲੀ ਹੈਕ ਵਾਲੀ ਕੋਈ ਕਹਾਣੀ ਉਹ ਹੈ ਨਹੀਂ ਬਹੁਤ ਵਾਰ ਇਹ ਗੱਲਾਂ ਹੋਈਆਂ ਪਰ ਕਹਿੰਦੇ ਵਧੀਆ ਫੰਡਰੇਜ਼ਿੰਗ ਵਾਲੇ ਬਚ ਗਏ ਜਿਹੜੇ 5-5000 ਪਿਛਲੇ ਦਿਨੀ ਕਲੋਨਾਂ ਦੇ ਵਿੱਚ ਪਰ ਪਲੇਟ ਤੇ ਜਿਨ੍ਹਾਂ ਨੂੰ ਕਾਲੇ ਸ਼ੀਸ਼ਿਆਂ ਵਾਲੀ ਵੈਨ ਦੇ ਵਿੱਚ ਅੰਦਰ ਬਾੜ ਕੇ ਲੈ ਕੇ ਗਏ ਵੈਨਿਊ ਦੇ ਵਿੱਚ ਵੀ ਬੰਦਿਆਂ ਦਾ ਚਿਹਰਾ ਨਾ ਦਿਖ ਜਾਣ ਸਾਡੇ ਵੀ ਹੋਣਗੇ 5-7 ਤਾਂ ਐਮਐਲਏ ਦੇ ਚਾਹਵਾਨ ਨੇ ਜਿਹੜੇ ਕਹਿੰਦੇ 5000 ਖਰਚ ਕੇ ਐਮਐਲਏ ਮਿਲ ਜੇ ਇਹ ਜਿਹੜੇ ਸਾਡੇ ਲੱਭਦੇ ਫਿਰਦੇ ਨੇ ਇਹਨਾਂ ਨੂੰ ਪੰਜਾਬ ਦਾ ਐਮਐਲਏ ਦਿਖਦਾ ਕੂਕਰਾਂ ਪੈਂਦੀਆਂ ਉੱਥੇ ਵੀ ਬਹਿ ਜਾਂਦੇ ਜਿੱਥੇ ਜੁੱਸੀਆਂ 'ਚ ਇਹਨਾਂ ਦੇ ਮਨ ਦੇ ਵਿੱਚ ਪੰਜਾਬ ਦਿਖਦਾ ਵੀ ਉਹੀ ਐਮਐਲਏ ਇੱਥੇ ਹੈ ਇੱਥੇ ਕੱਖ ਨਹੀਂ ਕੋਈ ਸੁਣਦਾ ਐਮਐਲਏ ਦੀ ਮੰਨ ਲਓ ਭਲੇਖੇ 'ਚ ਰਹੋਗੇ ਜਿਹੜਾ ਬਾਹਰ ਬਤੁਰਦੇ ਫਿਰਦੇ ਖਾਂਦੇ ਪੀਂਦੇ ਕੁਝ ਐਸ਼ਾ ਕਰਦੇ ਹੋ ਉਹਦੇ ਤੋਂ ਵੀ ਜਾਓਗੇ ਵੀਡੀਓ ਖਿੱਚ-ਖਿੱਚ ਕੇ ਲੋਕਾਂ ਨੇ ਪਾ ਦੇਣੀ ਜਿਹੜੇ ਬਣੇ ਹੋਣ ਉਹਨਾਂ ਨੂੰ ਪੁੱਛ ਲੋ ਵੀ ਚਾਹ ਵੀ ਅਲਦ ਵਾਲੇ ਵੇਖ ਕੇ ਪੀਂਦੇ ਆ ਇਹਨੂੰ ਰਹਿਣ ਦੋ ਹਰ ਇੱਕ ਦੇ ਵਸ ਦੀ ਗੱਲ ਨਹੀਂ ਤੇ ਜਾਂ ਫਿਰ ਸਾਰੇ ਪਾਸੇ ਫਿਰ ਕੰਮ ਕਰਨਾ ਪੈਂਦਾ ਕੱਲੀ ਇੱਕੋ ਇਲੈਕਸ਼ਨ ਨਹੀਂ ਜਿਹਦੇ 'ਚ ਖੜੇ ਹੋ ਸ਼ਹਿਰ ਨੂੰ ਵੀ ਵੇਖਣਾ ਪੈਣਾ ਐਮਐਲਏ ਵੀ ਵੇਖਣੇ ਪੈਣੇ ਆ ਐਮਪੀ ਵੀ ਵੇਖਣੇ ਪੈਣੇ ਆ ਕਿੱਥੋਂ ਤੋੜ ਕੇ ਬੰਦਾ ਕਿੱਥੇ ਲਾਉਣਾ ਦਿਨ ਰਾਤ ਫੁੱਲ ਟਾਈਮ ਜੌਬ ਹੈ ਹਰ ਇੱਕ ਦੇ ਵਸ ਗੱਲ ਨਹੀਂ ਬਹੁਤ ਘੱਟ ਬੰਦੇ ਆ ਜਿਹੜੇ ਜਨਕੈਯਨ ਨੂੰ ਜਾਣ ਕੇ ਇਹਨੂੰ ਪੜ੍ਹ ਕੇ ਰਿਸ਼ੀ ਨੂੰ ਫੇਰ ਉਹ ਗੱਲਾਂ ਕਰਦੇ ਆ ਜਾਣ ਕੇ ਪ੍ਰਵਚਨ ਵੀ ਸੁਣਾਏ ਜਾਂਦੇ ਆ ਇੱਥੇ ਸੋ ਇਹ ਜਿਹੜੀ ਉਹ ਜਦ ਲੋਕਾਂ ਲਈ ਹੋ ਗਈ ਜਨਤਕ ਹੋ ਗਈ ਤੇ ਫੇਰ ਉਹ ਉਹਨਾਂ ਨੂੰ ਅਸਲ ਤਾਂ ਗੱਲ ਇਹ ਸੀ ਕਿ ਪੋਟੈਂਸ਼ੀਅਲ ਵੋਟਰ ਲੱਭ ਰਹੇ ਸੀ ਉਹਦੇ ਵਿੱਚੋਂ ਕਿ ਲਿਬਰਲ ਨੂੰ ਤੇ ਕਿਹੜਾ ਕਰਦਾ 15-16 ਸਾਲ ਹੋ ਗਏ ਸਰਕਾਰਾਂ ਚੱਲਦੀਆਂ ਨੂੰ ਲੋਕ ਮੈਨੂੰ ਲੱਗਦਾ ਬਦਲ ਵਾਲੇ ਪਾਸੇ ਨੂੰ ਇਸ ਵਾਰ ਝਾਕਦੇ ਪਰ ਬਦਲ ਤਾਂ ਹੋਊ ਜੇ ਐਨਡੀਪੀ ਸਿੱਧੇ ਆਰਾਹਾਂ ਤੇ ਹੋ ਜੇ ਐਨਡੀਪੀ ਨੇ ਵੀ ਧੱਕਾ ਕਰਨਾ ਪਾਰਦਰਸ਼ੀ ਨਾ ਆਪਣੇ ਬੰਦਿਆਂ ਨੂੰ ਧੱਕਿਆਂ ਨਾਲ ਖੜਾਉਣਾ ਤੇ ਦੱਸਣਾ ਨਹੀਂ ਜਨਤਕ ਨਹੀਂ ਕਰਨੀ ਤੇ ਆਪ ਹੀ ਬੈ ਕੇ ਨਾਮਿਨੇਸ਼ਨਾਂ ਫਿੱਟ ਕਰ ਦੇਣੀਆਂ ਨੇ ਉੱਤਰ ਕਾਟੋ ਮੈਂ ਚੜਾ ਉਹਦੇ ਵਿੱਚ ਅਕਸ ਮਾੜਾ ਹੋਊ ਦੂਜੀਆਂ ਸੀਟਾਂ ਵੀ ਹਾਰੋਗੇ ਹਲੇ ਵੀ ਹਾਰ ਜੇ ਤੇ ਲੀਡਰ ਵਧੀਆ ਹੋਵੇ ਪਿਛਲੇ ਵਾਂਗੂ ਤਾੜੀਆਂ ਮਾਰਨ ਵਾਲਾ ਨਾ ਹੋਵੇ ਕਹਿੰਦਾ ਮੈਂ ਕੁਝ ਕਹਿਣਾ ਹੀ ਨਹੀਂ ਜਿਹੜਾ ਮਰਜ਼ੀ ਮੈਨੂੰ ਕਰਸਤੀ ਗਈ ਚੱਲੇ ਖੱਟ ਲੈ ਕੁਝ ਜਿੱਤ ਦੀ ਜਿੱਤ ਦੀ ਸਰਕਾਰ ਹਾਰ ਗਈ ਓਏ ਰਾਜਨੀਤੀ ਦੇ ਪਿੜ ਦੇ ਵਿੱਚ ਠਾ ਠਾ ਠਾ ਵਾਲਾ ਕੰਮ ਵੀ ਚੱਲਦਾ ਅਕਲ ਵਾਲਾ ਵੀ ਕੰਮ ਚੱਲਦਾ ਪਰ ਇੱਕੋ ਹੀ ਗੱਲ ਜੇ ਸੱਚ ਦਾ ਪੱਲਾ ਤੁਸੀਂ ਫੜਿਆ ਤੁਹਾਨੂੰ ਕੁਝ ਡਰ ਨਹੀਂ ਇੱਕ ਝੂਠ ਬੋਲਣ ਲਈ 100 ਝੂਠ ਬੋਲਣਾ ਪੈਂਦਾ ਤੇ ਉਹ 100 ਦੇ ਵਿੱਚੋਂ ਕੋਈ ਨਾ ਕੋਈ ਫੜਿਆ ਜਾਂਦਾ ਇੱਕ ਆਪਣਾ ਪੋਰਟਫੋਲੀਓ ਜਿਹੜਾ ਹੋਵੇ ਉਹਦੇ 'ਚ ਰਹਿਣਾ ਚਾਹੀਦਾ ਜਦੋਂ ਸਾਰੇ ਪਾਸੇ ਅਸੀਂ ਤੁਰੇ ਫਿਰਦੇ ਆ ਲੋਕ ਥੂ ਥੂ ਕਰਨ ਲੱਗ ਜਾਂਦੇ ਨੇ ਤੇ ਫੜ ਕੇ ਲਾ ਲੈਂਦੇ ਨੇ ਲੋਕ ਆ ਤੁਹਾਡੇ ਸਾਹਮਣੇ ਵੇਖ ਲਿਓ ਕੀ ਹੋਣਾ ਪੰਜਾਂ ਚਾਰ ਸਾਲਾਂ ਚੋਂ ਤੇ ਇਹ ਉਸ ਤੋਂ ਬਾਅਦ ਦੂਜੀਆਂ ਜਿਹੜੀਆਂ ਖਬਰਾਂ ਵਰਲਡ ਦੀਆਂ ਇੱਕ ਦੋ ਉਹ ਸੁਣਾਉਣੀਆਂ ਚਾਹੁੰਦਾ ਤੁਹਾਨੂੰ ਮੈਂ ਇੱਕ ਰੈਬਲ ਜਿਹੜਾ ਲੀਡਰ ਹੈ ਬਗਦਰੋਹੀ ਜਿਹੜੇ ਨੇ ਯੂਕਰੇਨ ਦੇ ਵਿੱਚ ਜਿਹੜੇ ਰਸ਼ੀਆ ਜਿਨ੍ਹਾਂ ਨੂੰ ਮਦਦ ਦੇ ਰਿਆ ਸੀ ਦਨੈਸਕ ਦੇ ਵਿੱਚ 35 ਸਾਲਾਂ ਦਾ ਇਹ ਇੱਕ ਬਹੁਤ ਵੱਡਾ ਜਿਹੜਾ ਕਮਾਂਡਰ ਸੀ ਇਹਨਾਂ ਦਾ ਯੂਕਰੇਨ ਦੇ ਈਸਟਰਨ ਵਾਲੇ ਪਾਸੇ ਦੇ ਵਿੱਚ ਮੇਖਲ ਉਸ ਦਾ ਨਾਂ ਸੀ ਤੇ ਉਸ ਤੇ ਉਸ ਦੇ ਵਿੱਚ ਹਮਲਾ ਹੋਇਆ 35 ਸਾਲਾਂ ਦਾ ਬਹੁਤ ਤੇਜ਼ ਸਰਾਰ ਇਹ ਕਮਾਂਡਰ ਸੀ ਡੋਨੇਸਕ এয়ারਪੋਰਟ ਦੀ ਇਹ ਲੜਾਈ ਇਸ ਜਿੱਤੀ ਸੀ ਰਸ਼ੀਆ ਦਾ ਇਹਨਾਂ ਨੂੰ ਥਾਪੜ ਆਇਆ ਉਹ ਬਦਰੋਹੀ ਨੇ ਜਿਹੜੇ ਯੂਕਰੇਨ ਦੇ ਵਿੱਚ ਯੂਕਰੇਨ ਦੀ ਸਰਕਾਰ ਦੇ ਵਿੱਚ ਹੁਣ ਗੱਲਾਂਬਾਤਾਂ ਕਰ ਰਹੇ ਨੇ ਉਸਦੇ ਦੇ ਖਿਲਾਫ ਨੇ ਤੇ ਇਹ ਨਾ ਬਜ਼ੋਈਆਂ ਦੇ ਵਿੱਚ ਮਲੇਸ਼ੀਆ ਨੇਅਰ ਦਾ ਜਹਾਜ਼ ਵੀ ਜਿਹੜਾ 에ਅਰਲਾਈਨ ਦਾ ਡਿੱਗਿਆ ਸੀ ਤੇ ਡੱਚ ਜਿਹੜੀ ਇਨਵੈਸਟੀਗੇਸ਼ਨ ਹੋਇਆ ਉਹਦੇ ਵਿੱਚ ਇਹਨਾਂ ਦੇ ਨਾਮ ਲੱਗੀ ਆ ਪਰ ਰਹੇ ਹਲੇ ਤੱਕ ਤੇ ਹੋਰ ਖਬਰਾਂ ਜਿਹੜੀਆਂ ਰਸ਼ੀਆ ਦੇ ਵਿੱਚ ਹੀ ਜਿਹੜੀ ਇੱਕ ਬਰਾਦਮਿਰ ਪੁਤਿਨ ਦਾ ਸਭ ਤੋਂ ਵੱਡਾ ਵਿਰੋਧੀ ਹੈ 40 ਸਾਲ ਦਾ ਅਲੈਕਸੇ ਉਸ ਦਾ ਨਾਮ ਹੈ ਅਲੈਕਸਾਈ ਅਸਲ ਜਿਹੜੇ ਰਸ਼ੀਅਨ ਸ਼ਬਦ ਹੈ ਉਹਦੇ ਤੇ ਸਜਾ ਬੋਰਡ ਕੀ ਨੇ ਫੰਡਾਂ ਦੀ ਦਰਵਾਰਤੋਂ ਕੀਤੀ ਹੈ ਜਿਹੜੇ ਇੰਟਰਸਟ ਦੇ ਵਿੱਚ ਪੈਸੇ ਨੇ ਜਾਂ ਐਮਪਲੋਇਰ ਪੈਸੇ ਨੇ ਪੈਟੀ ਕੈਸ਼ ਲਾ ਲੋ ਉਹਦੇ ਚ ਦਰਵਾਰਤੋਂ 2012 ਦਾ ਉਹਨੂੰ ਗਿਲਟੀ ਕਰਾਰ ਦਿੱਤਾ 2018 ਦੀਆਂ ਜਿਹੜੀਆਂ ਪੁਤਨ ਵਾਲੀਆਂ ਇਲੈਕਸ਼ਨਾਂ ਨੇ ਜਾਂ ਲੜਨੀਆਂ ਜਾਂ ਨਹੀਂ ਉਹਨੇ ਪਤਾ ਲੱਗੂ ਅਗਲੇ ਸਾਲ ਉਹਦੇ ਵਿੱਚ ਇਹ ਬੰਦਾ ਭਾਗ ਨਹੀਂ ਲੈ ਸਕਦਾ ਬਹੁਤ ਕੱਟੜ ਵਿਰੋਧੀ ਆ ਬਰਾਦ ਮਿਰ ਪੁੱਤਨ ਦਾ ਹੈ ਤੇ ਉਸ ਨੂੰ ਹੁਣ ਇਸ ਵਿੱਚ ਗਿਲਤੀ ਕਰਾਰ ਦਿੱਤਾ ਪਰ ਉਸਨੇ ਅਪੀਲ ਕਰਨੀ ਹੈ ਅਪੀਲ ਤੋਂ ਅੱਗੇ ਕੀ ਹੋਏਗਾ ਪਤਾ ਨਹੀਂ ਗਵਾਨਡ ਦੇ ਵਿੱਚ ਡੋਨਲਡ ਟਰੰਪ ਵੱਲੋਂ ਬੈਨ ਤੋਂ ਬਾਅਦ ਬੈਨ ਖੋਲਣ ਦੀਆਂ ਜਿਹੜੀਆਂ ਗੱਲਾਂ ਚੱਲ ਰਹੀਆਂ ਉਸ ਨੂੰ ਉੱਤੇ ਪਾਬੰਦੀ ਲਾਈਆ ਤੇ ਲੋਕ ਧੜਾ ਧੜ ਜਿਹਨਾਂ ਕੋਲ ਵੀਜ਼ੇ ਸੀ ਉਹ ਉਤਰ ਰਹੇ ਨੇ ਅਮਰੀਕਾ 'ਚ ਕੋਈ ਰੋਕ ਨਹੀਂ ਰਿਹਾ ਸੱਤਾ ਦੇਸ਼ਾਂ ਦੇ ਵਿੱਚ ਬੈਨ ਜਿਹੜਾ ਹੈ ਉਹ ਹੁਣ ਸਾਡਾ ਟਾਈਮ ਬਿੰਗ ਬੰਦ ਆ ਤੇ ਇਹ ਸਮਾਂ ਮਿਲ ਗਿਆ ਮੈਨੂੰ ਲੱਗਦਾ ਇਹਦੇ ਵਿੱਚ ਆ ਬੜਨਾ ਲੋਕਾਂ ਨੇ ਜਿੰਨੇ ਇੱਕ ਲਾਈਨ 'ਚ ਲੱਗੇ ਆ ਹਲੇ ਤੱਕ ਉਹਦੇ ਤੇ ਦਲੀਲਾਂ ਚੱਲ ਰਹੀਆਂ ਨੇ ਹਲੇ ਕੁਝ ਨਹੀਂ ਹੋਇਆ ਬੈਨ ਤੇ ਹਲੇ ਤੱਕ ਪਵੰਦੀ ਹੈ ਇਹਦਾ ਮੀਨ ਟਾਈਮ ਬੰਦਿਆਂ ਨੇ ਜਿਨ੍ਹਾਂ ਕੋਲ ਵੀਜ਼ੇ ਨੇ ਜਾਂ ਇਮੀਗ੍ਰੇਸ਼ਨ ਆ ਜਾਂ ਰਿਫਿਊਜੀ ਆ ਉਹਨਾਂ ਨੇ ਆ ਜਾਣਾ 120 ਦਿਨਾਂ ਦਾ ਰਿਫਿਊਜੀਆਂ ਦਾ ਬੈਨ ਸੀ 90 ਦਿਨਾਂ ਦਾ ਵਿਜ਼ਿਟ ਵੀਜ਼ੇ ਦਾ ਵੈਨਸੀ ਇਹ ਸੱਤੇ ਦੇਸ਼ਾਂ ਤੇ ਵਪਾਰਕ ਸੰਦੇਸ਼ਾਂ ਤੋਂ ਬਾਅਦ ਵਾਪਸ ਆ ਕੇ ਕਹਾਣੀ ਸੁਣਾਉਣਾ ਇੱਕ ਕੋਲਰ ਨੇ ਲਿਖ ਕੇ ਭੇਜਿਆ ਕਿ ਜਿੰਨੇ ਵੀ ਬ੍ਰਾਊਨ ਰਾਜਨੀਤਿਕ ਬੰਦੇ ਨੇ ਜਦ ਇਲੈਕਟ ਹੋ ਗਏ ਇਹ ਭਾਰਤ ਚ ਜਾ ਕੇ ਖਾਸ ਤੌਰ ਤੇ ਪੰਜਾਬ ਚ ਆਪਣੀ ਰਾਜਨੀਤਿਕ ਸਰਗਰਮੀਆਂ ਕਰਦੇ ਆ ਤੇ ਉੱਥੇ ਦੇ ਸਿਸਟਮ ਨੂੰ ਆਪਣੇ ਹਿਸਾਬ ਨਾਲ ਵਰਤਦੇ ਇਹ ਗੱਲ ਠੀਕ ਹੈ ਉਟਰ ਵੀ ਬਹੁਤ ਵਜਾਉਂਦੇ ਆ ਕਈ ਜਾ ਕੇ। ਬਾਈ ਜੱਗੀ ਕੁੱਸੇ ਦੀ ਕਹਾਣੀ ਚਿੱਲੇ ਵਾਲਾ ਸਾਧ। ਲਾਲ ਸਿੰਘ ਨੂੰ ਕੰਮ ਤੋਂ ਆਉਂਦਿਆਂ ਨੂੰ ਨਸਲਵਾਦੀ ਸ਼ੋਕਰਿਆਂ ਨੇ ਬਲਾਇਟ ਦੇ ਵਿੱਚ ਕੁੱਟਿਆ। ਹਸਪਤਾਲ ਦੇ ਵਿੱਚੋਂ ਛੁੱਟੀ ਮਿਲ ਗਈ। ਮਾਮਾ ਭਾਣ ਸਿਓ ਲਾਲ ਸਿੰਘ ਦਾ ਪਤਾ ਲੈਣ ਗਿਆ। ਜਦ ਮਾਮਾ ਭਾਣ ਕੋਲ ਗਿਆ ਤਾਂ ਲਾਲ ਸਿੰਘ ਦਾ ਲਾਲ ਸਿੰਘ ਦੇ ਹੰਝੂ ਵਹ ਰੋਟੇ। ਨਾਸੂ ਦਿਲੋਂ ਡੋਲਿਆ ਦੇਖ ਕੇ 500 ਨੇ ਡੱਬ ਚੋਂ ਬੋਤਲ ਝੁਰਲੂ ਵਾਂਗੂ ਕੱਢ ਲਈ ਬਾਹਰ ਜ਼ਿੰਦਗੀ ਚ 100 ਤਰਾ ਚੜਾਉਂਦੇ ਆ ਭਾਂਜੇ ਐ ਬਈ ਦੋਸਤ ਮਾਨ ਸੁਣ ਗੱਲ ਬਹੁਤੀ ਦਿਲ ਤੇ ਨਹੀਂ ਲਾਈਦੀ ਹੁੰਦੀ ਇਹ ਕੰਜਰਖਾਨਾ ਸਾਰਿਆਂ ਨਾਲੇ ਹੋਇਆ ਹੋਇਆ ਉਹ ਕਲਾਸ ਚ ਕਿਸੇ ਨੂੰ ਚੱਕਣ ਚ ਲੱਗਿਆ ਤੇ ਚਿਹਰੇ ਤੋਂ ਲੱਗਦਾ ਸੀ ਅੰਦਰੋਂ ਬੜਾ ਦੁਖੀ ਐ ਕਾਮਰੇਲ ਕਿਤੇ ਖਰੀਦੋ ਫਰੋਕਤ ਕਰਨ ਗਿਆ ਹੋਇਆ ਸੀ 500 ਨੇ ਇੱਕ ਲੰਡਾ ਪੈਗ ਪਾ ਲਿਆ ਇੰਦੋਂ ਮੈਨੂੰ ਗਿੱਲਾ ਜਾ ਹੋ ਲੈਣ ਦੇ ਭਾਂਜੇ ਤੇਰੀ ਵਾਰੀ ਆਉਂਦੀ ਆ ਫੇਰ ਉਹਨੇ ਪੈਗ ਲੱਸੀ ਵਾਂਗੂ ਸੁੱਟ ਲਿਆ ਲਾਲ ਸਿੰਘ ਨਾਂ ਬੋਲਿਆ ਭਾਂਜੇ ਸੋ ਜੀੜੇ ਕਰਦਾ ਫਿਰਦਾ ਸੀ ਅਲਦਾਲੇ ਵੀ ਲਾਲ ਸਿੰਘ ਨੇ ਪਾ ਕੇ ਦਿੱਤਾ ਲੈ ਬੋਲ ਵਾਹਿਗੁਰੂ ਸਿੱਟ ਅੰਦਰ ਦੁੱਖ ਨਿਵਰਤ ਦਵਾਈ ਐ ਲੈ ਬਣ ਮਲ ਕੇ ਰਾਂ ਨਾਲੇ ਉਹਨੂੰ ਲੱਗੇ ਕਿ ਰੱਬ ਦਾ ਨੋਂ ਤੇ ਨਾਲ ਸ਼ਰਾਬ ਪਰ ਫੇਰ ਵੀ ਉਹਨੇ ਲਾਲ ਸਿੰਘ ਦਾ ਕੜ ਤੋੜਨਾ ਸੀ ਖਾਲੀ ਪੇਟ ਪੀਣ ਨਾਲ ਇਕ ਕੋਈ ਪੈਗਨ ਸਰੂਰ ਆ ਕੇ ਲਾਲ ਸਿਉ ਮੰਜੇ ਤੋਂ ਉੱਠ ਕੇ ਬਹਿ ਗਿਆ। ਬਾਵਾ ਜੀ ਉਹਦੀ ਸਦੀਬੀ ਉਹਨੇ ਚੁੱਪ ਤੋੜੀ। ਬੋਲ ਸੋਹਣਿਆ ਕਹਾ ਗੱਲ ਇੱਕ ਗੁੱਸਾ ਤਾਂ ਨਹੀਂ ਕਰਦੇ। ਇੱਕ ਮਾਰ ਸੀ ਨਹੀਂ ਕਰਦਾ ਤੂੰ ਖੁੱਲ ਤਾਂ ਕਰ ਬੜਾ ਸਾਰਾ ਹੱਥੋਂ ਨੇ ਧੱਪ ਧੱਪ ਮਾਰਿਆ। ਛਾਤੀ ਸਾਜੰਗੂ ਖੜਕੀ। ਮੈਂ ਨਹੀਂ ਜੀ ਇੱਥੇ ਰਹਿਣਾ ਬਸ ਮੇਰਾ ਦਿਲ ਅੱਕ ਵੀ ਅਕਿਆ ਕੰਟਰੀ ਤੋਂ ਅਦਾਸੀ ਦੀ ਪਲਤਰੋਂ ਦੇ ਚ ਫੇਰ ਕੀ ਹੋ ਗਿਆ? ਘੀਰ ਮੁੱਕ ਗਈ ਜਾਂ ਸੰੰਗੀ ਟੁੱਟ ਗਈ ਇਹੋ ਜਿਹਾਂ ਬਾਤ ਦਿੱਤਾ ਇੰਡੀਆ ਚ ਨਹੀਂ ਹੁੰਦੀਆਂ ਉੱਥੇ ਦੁਨੀਆ ਧੋਤੀ ਐ ਉੱਥੇ ਵੀ ਆਹੀ ਕੁਛ ਐ ਪੰਸੂ ਨੇ ਜੇ ਪਾਣ ਜੇ ਗੱਲ ਸੁਣੀ ਦਿੰਦੇ ਆ ਮੱਲਾ ਸਿੱਧਾ ਹੋ ਕੇ ਗੱਲ ਸੁਣ ਜਥੇ ਮਰਜੀ ਚੱਲਿਆ ਜਾਈ ਇਹਦਾ ਬਾਬੇ ਫਰੀਦ ਦੇ ਕਹਿਣ ਵਾਂਗੂ ਕੋਠੇ ਚੜ ਕੇ ਵੇਖਿਆ ਤੇ ਘਰ ਤੇ ਇੱਕੋ ਅੱਗ ਐ ਸਿੰਗਾਪੁਰ ਤੋਂ ਇੱਥੇ ਆਏ ਆ ਦੱਸ ਉੱਥੇ ਫੀਨੇ ਨਹੀਂ ਲੋਕਾਂ ਨੂੰ ਕੁੱਟਦੇ ਇੱਥੇ ਘਸਨ ਮੁਕੀਆ ਉੱਥੇ ਤਾਂ ਕੰਜਰ ਦੇ ਵੱਡੇ ਸਿਰ ਵਾਲੇ ਖੰਜਰੀ ਮਾਰਨ ਲੱਗੇ ਵਿੰਦ ਲਾਉਂਦੇ ਐ ਐ ਕਿ ਨਹੀਂ ਜੇ ਮੈਂ ਝੂਠ ਬਤਾਉਣਾ ਤਾਂ ਨੀਵੇਂ ਥਾਂ ਬਿਠਾ ਲਾ ਉਹਨੇ ਇੱਕ ਹੋਰ ਪੈਗ ਪਾ ਲਿਆ ਆਪ ਵੀ ਭਾਨ ਸੇ ਹਿੰਦੀ ਬੋਲ ਰਿਹਾ ਸੀ ਕੋਈ ਝੂਠ ਨਹੀਂ ਮਾਮਾ ਜੀ ਲਾਸ਼ ਵੀ ਦਲੇਰੀ ਫੜ ਗਿਆ ਨਾਲੇ ਮੈਨੂੰ ਹੋਰ ਦੱਸ ਭਾਨ ਜੇ ਉਹਨੇ ਅਗਲਾ ਗਲਾਸ ਖਾਲੀ ਕਰਨ ਤੋਂ ਪਹਿਲਾਂ ਧੁੱਟ ਜੀ ਆਈ ਚਿਪਸ ਨੂੰ ਉਹਨੇ ਬੁਰਕ ਮਾਰੇ ਚਲ ਮੰਨ ਲਿਆ ਇੰਡੀਆ ਜਾਵੜਿਆ ਤੂੰ ਉੱਥੇ ਜਾ ਕੇ ਕੀ ਕਰੇਂਗਾ ਭਰਾਵਾਂ ਵਾਲਾ ਮੇਲਾ ਤੂੰ ਪਹਿਲਾਂ ਵੇਖਿਆ ਆਂ ਕੂਟ ਸਾਰੇ ਵੱਡਣ ਨੂੰ ਫਿਰਦੇ ਆ ਜਦ ਮੈਂ ਇੱਥੇ ਆਇਆ ਸੀ ਪਾਣ ਜੇ ਬਸ ਇੱਕ ਹੀ ਹੱਥ ਧਰਿਆ ਹੋਇਆ ਸੀ ਵੀ ਮੁੜ ਕੇ ਮੇਰੀ ਲਾਸ਼ ਜਾਊ ਅੱਜ ਕੱਲ ਕਰਦੇ ਆ ਦੇਖ ਲੈ ਰੰਗ ਭਾਗ ਲੱਗੇ ਚਾਹੇ ਮੈਂ ਸੜਕ ਤੋਂ ਕੂੜਾ ਹੀ ਹੂੰਝਦਾ ਪਰ ਜਦ ਹਫ਼ਤੇ ਦੇ ਵਿੱਚ ਪੈਸੇ ਆ ਕੇ ਦੇਖਦਾ ਦੁੱਖ ਭੁੱਲ ਜਾਂਦੇ ਆ ਮਾਮੀ ਤੇਰੀ ਕੌੜ ਐ ਪਰ ਬੈਠਾ ਤਾਂ ਆਪਣੇ ਟੱਬਰ 'ਚ ਐ ਇੱਕ ਅੱਧਾ ਸਾਲ ਹੋਰ ਐ ਪਰਿਵਾਰ ਬੁਲਾ ਲੈਣਾ ਬਾਕੀ ਤੇਰਾ ਵੀ ਇੱਥੇ ਆਪਾਂ ਤਾਂ ਜਿਹੜੇ ਠੂਠੇ ਖਾਣੇ ਆ ਉਹ ਖਾਣੇ ਜਿਉਂ ਅਸ ਜੱਲਿਆਂ ਦੀ ਜ਼ਿੰਦਗੀ ਬਣੂ ਉਹੀ ਆਬ ਦੁੱਖ ਤਬ ਸੁਖ ਵਾਲੀ ਗੱਲ ਐ ਦਿਲ ਛੋਟਾ ਨਾ ਕਰ ਹਿੰਮਤੇ ਮਰਦਾ ਮਦਦੇ ਖਿਲਾਫ ਆਣ ਜੇ ਕਹਿਣਾ ਹੋ ਰਾਜ ਸਿੰਘ ਤਰੋ ਮਨੋਸਰ ਖੂ ਹੋ ਗਿਆ ਉਹਨੇ ਇੱਕ ਹੋਰ ਸਿੱਟ ਲਿਆ ਉਹ ਤਾਂ ਯਾਰ ਪੈਗ ਪਾ ਕੇ ਦੀ ਪੂਜਾ ਜੀ ਕਰਨ ਲੱਗ ਬਸ ਪਾਈ ਤੇ ਗਰਮ ਦੇ ਕੇ ਅੰਦਰ ਮਾਰੀਏ ਪਈ ਦੀ ਭਰ ਜਾਂਦੀ ਐ ਨਾਲੇ ਦਿੰਦੀ ਐ ਸਰਾਫ ਮਮ ਪਤਾ ਹੀ ਨਹੀਂ ਕਿਤੋਂ ਨੁਕਤੇ ਲਿਆ ਰਿਆ ਸੀ ਲਾਸਿਕ ਹੋਈ ਹੋਈ ਹੱਸਦਾ ਸੀ ਉਹਨੇ ਪੈਗ ਨਵੇੜਤਾ ਅਲਾਦ ਆਸਤੇ ਬੰਦਾ 100 ਪਾਪੜ ਵੇਲਦਾ ਛੋਟਿਆ ਮਰਦ ਬੱਚੇ ਕਦੇ ਦੁੱਖ ਤੀ ਬੜੇ ਮੱਥਾ ਨਹੀਂ ਮੱਥਾ ਮੱਥੇ ਵੱਟ ਨਹੀਂ ਪਾਉਂਦੇ ਦੇਖ ਗੁਰੂਆਂ ਨੂੰ ਗਦਰੀ ਬਾਬਿਆਂ ਨੂੰ ਇਹਨੇ ਨਹੀਂ ਦੁੱਖੜੇ ਸਹੇ ਆਪਾਂ ਤੋਂ ਕਿਤੇ ਵੱਧ ਕੇ ਆ ਆਪਾਂ ਉਹਨਾਂ ਦੀ ਅੰਸ਼ ਵੰਸ਼ਾਂ ਮਾੜੀ ਮਾੜੀ ਗਲਤੋਂ ਚੰਘਾੜਾ ਮਾਰਾਂਗੇ ਆਪਾਂ ਨੂੰ ਕਿਸੇ ਨੇ ਨਹੀਂ ਸਿੱਖ ਕਹਿਣਾ ਅੰਡਰਪੋਕ ਕਹਿਣਗੇ ਗੱਲਾਂ ਮਾਮੇ ਦੀਆਂ ਲਾਲ ਹੋ ਗਈਆਂ ਅਸੀਂ ਚੜੰਗ ਹੋਣ ਮੁਰਮੁਰ ਕੇ ਉਹ ਮੁੱਛਾਂ ਤੇ ਹੱਥ ਫੇਰਦਾ ਮੜ ਮੜ ਕੇ ਦਾੜੀ ਤੇ ਹੱਥ ਫੇੜਦਾ ਸ਼ਰਾਬ ਪੰਜਾਬੀ ਬੰਦੇ ਦਾ ਇੱਕੋ ਹੀ ਪੱਕਾ ਹੈ ਜਿਉ ਉਹਦੇ ਦਾੜੀ ਹੋਵੇ ਚਾਹੇ ਨਾ ਜਾਂ दारू ਪੀ ਲਿਓ ਤੇ ਤੇ ਤੇ ਹੱਥ ਫੇਰ ਨੂੰ ਲੱਗ ਜਾਂਦਾ ਵੀ ਪੀ ਮਾਮੇ ਦੀਆਂ ਦਲੇਰੀ ਭਰੀਆਂ ਗੱਲਾਂ ਦੇਖ ਕੇ ਲਾਲ ਸਿੰਘ ਨੇ ਹੌਸਲਾ ਭਰ ਲਿਆ ਜਿਵੇਂ ਸੁੱਕੀ ਬੇਲ ਨੂੰ ਪਾਣੀ ਆਉਂਦਾ ਜਦੇ ਕਾਮਰੇਡ ਮਾਨਕ ਆਇਆ ਤਾਂ ਲਾਲ ਸਿੰਘ ਦਾ ਜਿਹੜਾ ਜੜਦ ਸੀ ਜਦੋਂ ਗਿਆ ਸੀ ਉਹ ਵੇਖ ਕੇ ਲਾਲ ਸਿੰਘ ਤਰੋ ਤਾਜਾ ਹੋਇਆ ਪਿਆ ਕਾਮਰੇਟ ਆ ਕੇ ਬਿਟਰ ਬਿਟਰ ਭਾਂਤ ਭਾਂਸੇ ਨੂੰ ਵੇਖਣ ਲੱਗਿਆ ਤੇ ਭਾਂਸਾ ਆ ਕੇ ਕਹਿੰਦਾ ਹੈ ਬਈ ਤੂੰ ਸੱਪ ਫੜਨ ਵਾਲੇ ਨੂੰ ਮੇਰੇ ਵੱਲ ਆਏ ਝਾਕਦਾ ਕਾਮਰੇਟ ਆ ਮੈਂ ਤਾਂ ਸਾਥੀ ਲਾਲ ਸਿੰਘ ਵੱਲ ਦੇਖ ਕੇ ਹੈਰਾਨ ਹੈ ਇਬਰਾਨ ਲੱਗਦਾ ਸੀ ਜਦ ਮੈਂ ਗਿਆ ਹੁਣ ਕੁਝ ਤੋਂ ਕੁਝ ਹੋਇਆ ਤਾਂ ਇੱਧਰ ਵੇਖ ਐ ਬੈਠਾ ਢਿੱਲੇ ਆਲਾ ਸਾਦ ਉਹ ਸਾਡੀਆਂ ਸਵਾਦੀਆਂ ਪੁੜੀਆਂ ਤਾਂ ਕੁੱਖਾਂ ਹਰੀਆਂ ਕਰ ਦਿੰਦੀਆਂ ਐ ਇਹ ਹਰਜਮਰਜ ਕੱਠੇ ਹੀ ਕੁਛ ਨਹੀਂ ਬਸ ਫੂਕ ਵਾਲੀ ਬੰਦਾ ਕਾਇਮ ਆ ਹੋਰ ਤੂੰ ਸੁਣਾ ਅੱਜ ਸੱਜਰੇ ਕਿਹੜੇ ਕੂਟੀ ਚੜ ਗਿਆ ਸੀ ਤੂੰ ਦੇਖਿਆ ਘਰ ਦਾ ਸਮਾਨ ਸੀ ਨਾਲ ਸਾਹਿਬ ਕੰਮ ਤੋਂ ਆ ਕੇ ਨਿਕਲ ਨੂੰ ਜੀ ਨਹੀਂ ਸੀ ਕਰਦਾ ਮੈਂ ਕਿਹਾ ਅੱਜ ਪਹਿਲਾਂ ਕੰਮ ਦੇ ਹੀ ਕੋਚਰੇ ਹੋਰ ਤਾਂ ਕੰਮ ਫੇਲ ਹੋ ਜਾਣਾ ਖਾਣ ਪੀਣ ਬਿਨਾ ਕੰਮ ਸਰਦਾ ਹਾਂ ਉਹ ਠੀਕ ਐ ਸਾਡੇ ਵਾਲਾ ਸਮਾਨ ਤੂੰ ਪੀਂਦਾ ਨਹੀਂ ਭਾਨ ਸਿੰਘ ਜਵਾਨੀ ਵਲੇ ਨਹੀਂ ਸੌ ਪੰਨੀ ਹੁਣ ਕੀ ਪੀਣੀ ਆ ਕੇ ਸਾਡਾ ਨਾਂ ਸਮਾਰਿਆ ਕਰ ਕਾਮਰੇਡ ਚਲ ਨਹੀਂ ਆਖਦੇ ਭਾਨ ਸਿੰਘ ਬਾਈ ਪਰ ਸੱਚ ਤਾਂ ਸੱਚ ਐ ਜਦੋਂ ਤੁਸੀਂ ਕਿਸੇ ਨੂੰ ਆਖਦੇ ਅਜੇ ਵੀ ਜਵਾਨ ਐ ਮਤਲਬ ਇਹ ਐ ਤੁਸੀਂ ਅਗਲੇ ਨੂੰ ਕਹਿ ਰਹੇ ਹੋ ਕਿ ਤੂੰ ਬੁਢਾ ਲੱਗਦਾ ਹੁਣ ਤੂੰ ਹੋਰ ਕੋਈ ਗੱਲਬਾਤ ਸੁਣਾਛੱਡ ਹੋਰ ਕੀ ਸੁਣਾਵਾ ਕੁਛ ਨਾ ਦੇ ਜਗ ਬੀਤੀ ਕਿ ਹੱਡ ਬੀਤੀ ਕਾਮਰੇਡ ਵੀ ਕਾਇਮ ਹੋ ਗਿਆ ਔਰ ਸਟਾਮ ਤੇ ਲਿਖ ਕੇ ਦਮਾ ਹੁਣਾਂ ਕਮਲ ਜਿਆ ਮਰੀ ਜਨਾ ਕੋਈ ਤਾਂ ਸੁਣਾ ਥੋੜੀ ਤਾਂ ਕਾਮਰੇਟਾਂ ਦੀ ਉਹ ਗੱਲ ਹੁੰਦੀ ਹੈ ਜਿਵੇਂ ਕਹਿੰਦੇ ਹੁੰਦੇ ਆ ਬਈ ਮਰਾਸੀ ਦਾ ਜੁਆ ਕਰੋ ਤਾ ਵੀ ਕੰਜਰ ਦਾ ਰਾਗ ਚੇਰੋ ਉਹ ਗੱਲ ਥੋੜੀ ਹੈ ਥੋੜੀ ਗੱਲ ਚ ਕੋਈ ਨਾ ਕੋਈ ਤੰਤ ਹੁੰਦਾ ਕੋਈ ਤਾਂ ਸੁਣਾ ਲਾਓ ਵੇ ਅੱਡ ਵੀ ਸੁਣਾਓ ਥੋੜੂ ਜਾਨੂ ਉਹਦੀਆਂ ਸੁਣ ਕੇ ਲਾਲਸਾ ਵੀ ਕਾਇਮ ਹੋ ਗਿਆ ਬਾਈ ਅੱਛਾ ਖੜ ਜਾ ਪਹਿਲਾਂ ਮੈਨੂੰ ਕੰਮ ਕਰ ਲੰਦੇ ਭਾਨ ਸਿਓ ਬਾਮੇ ਨੇ ਬੋਤਲ ਫੇਰ ਧੋਣੋਂ ਕੁੱਕੜ ਵਾਂਗੂ ਫਾਲੀ ਬਰੀ ਦੇਣ ਵਾਲੇ ਗਰਨ ਤੇ ਕੇ ਇੱਕ ਪੈਗ ਹੁਣ ਖੜ ਜਾ ਇੱਕ ਮਿੰਟ ਹੁਣ ਸੜਾ ਡੀ ਐਮ ਕਾਲ 'ਚ ਮੈਂ ਪੜਦਾ ਹੀ ਮੋਗੇ ਤੇ ਇਨਖਲਾਬੀਆਂ ਦਾ ਬਾਵਾ ਰੰਗ ਚੜਿਆ ਹੋਇਆ ਸੀ ਸਾਡੇ ਤੇ ਉਮਰ ਐਹੇ ਜੀ ਸੀ ਪੁਲਿਸ ਸੀ ਲੱਗਦਾ ਕੋਈ ਸ਼ੱਕ ਨਹੀਂ ਕਾਮਰੇਟ ਆ ਬਾਪੂ ਬਾਪੂ ਕਹਿੰਦੇ ਬਹੁਤ ਸਖਾਲੇ ਰਹਿੰਦੇ ਸੀ ਜਦ ਬਾਪੂ ਖਵਾਇਆ ਦੁੱਖ ਪਾਇ ਸਾਡੇ ਗੁਆਂਢ 'ਚ ਲੜਾਈ ਹੋ ਪੀਪਿੰਡ ਅੱਛਾ ਜੱਟ ਕੰਜਰ ਇੰਨੇ ਚਤਰ ਨਾਲੇ ਕੁੱਟ ਗਏ ਨਾਲੇ ਰਿਪੋਰਟ ਪਰਚਾ ਕਰਤਾ ਅੱਛਾ ਰੋ ਮੁੰਡੇ ਤਾਂ ਪੁਲਿਸ ਆਉਣ ਤੋਂ ਇੱਧਰ ਉੱਧਰ ਹੋ ਗਏ ਪੁਲਿਸ ਵਾਲੇ ਬਾਪੂ ਨੂੰ ਲੈ ਗਏ ਉਲਟੀ ਗੰਗਾ ਹੋਰ ਉਲਟੀ ਬਗੰਗਾ ਵਾਗੀ ਯਾਰ ਤਖੜੇ ਦਾ ਸਤੀ ਵਿਹੀ ਅਗਲੇ ਨੇ ਪੁਲਿਸ ਵਾਲਿਆਂ ਨੂੰ ਪੈਸੇ ਚਾੜ ਤੇ ਪੁਲਿਸ ਹੋਈ ਨਿਪੜੀ ਪੁਲਸ ਬਜ਼ੁਰਗ ਨੂੰ ਜਦ ਫੜਕੇ ਲੈ ਗਈ ਬਜ਼ੁਰਗ ਸੀ ਪਤੰਦਰ ਅਮਲੀ ਫੇਮ ਭੂ ਖਾਂਦਾ ਸੀ ਉਹ ਕਿਹੜਾ ਨਸ਼ਾ ਜਿਹੜਾ ਬਜ਼ੁਰਗ ਨੇ ਨਾ ਕੀਤਾ ਹੋਵੇ ਸ਼ਾਮ ਜਿਹੇ ਬਜ਼ੁਰਗ ਦਾ ਬੜਾ ਮੁੰਡਾ ਆ ਕੇ ਮੈਨੂੰ ਕਹਿੰਦਾ ਕਿਆ ਦਾ ਬਾਪੂ ਰੋਟੀ ਬਿਨਾ ਸਾਦੂ ਜੇ ਨਾ ਫੀਮ ਗਈ ਥਾਣੇ ਅੱਜ ਬਾਪੂ ਮਰ ਚੁ ਅੱਛਾ ਜੀ ਹਾਂ ਫੇਰ ਫੇਰ ਕੀ ਮੇਰੀ ਬੇਬੇ ਕੋਲ ਖੜੀ ਦਲੇਰ ਉਹ ਕਹਿਣ ਲਗੀ ਪੁੱਤ ਉਹ ਵੀ ਤੁਰਦਾ ਫਿਰਦਿਆਂ ਨਿਤ ਇੱਥੇ ਦਾਤੀ ਥੋੜਾ ਤਾਰਾ ਚੱਕੀ ਫਿਰਦਾ ਡਰਦਾ ਪੁਲਿਸ ਤੋਂ ਹੈ ਨਹੀਂ ਥਾਣਿਆਂ ਚ ਗੇੜੇ ਕਰਦਾ ਹੈ ਤੇ ਤੂੰ ਮੱਲਾ ਆ ਆਪਣੇ ਤਾਇ ਦਾ ਕੰਮ ਕਰਿਆ ਪੁੱਤ ਲਓ ਜੀ ਮੈਂ ਰੋਟੀ ਬਣਵਾਈ ਪੋਣੇ ਚ ਸਾਈਕਲ ਤੇ ਟੰਗ ਦੀ ਪੱਗ ਜਦ ਮੈਂ ਬੰਦਾ ਹੁੰਦਾ ਸੀ ਬਾਵਾ ساری ਫੀਮ ਮومی ਕਾਗਜ਼ ਚ ਪਾ ਕੇ ਮੈਂ ਕੰਨ ਚ ਦੇ ਕੇ ਉੱਪਰ ਦੀ ਪੱਗ ਦਾ ਲੜਦੇ ਰਿਹਾ ਬੱਲੇ ਤਾਂ ਹੀ ਕਹੀ ਕਾਮਰੇਡਾਂ ਦੇ ਦਿਮਾਗ ਕਾਮਰੇਡਾਂ ਦੇ ਨੇ ਥੋੜੇ ਕਈ ਵਾਰ ਤਾਂ ਸਿੱਧੇ ਚੱਲ ਪੈਂਦੇ ਨੇ ਕਈ ਵਾਰ ਰੋੜੀਏ ਰੇਡੀਓ ਵਾਂਗੂ ਠਫਾ ਜਿਹਾ ਮਾਰਨਾ ਪੈਂਦਾ ਫਿਰ ਤੁਸੀਂ ਕਨੈਕਸ਼ਨ ਫੜਦੇ ਹੋ ਜਾਂ ਤੁਹਾਡਾ ਕਨੈਕਸ਼ਨ ਲੱਗ ਗਿਆ ਫਿਰ ਤੁਸੀਂ ਸਿਰੇ ਸਿੜਦੇ ਹੋ ਗੱਲ ਲਓ ਜੀ ਮੈਂ ਥਾਣੇ ਪਹੁੰਚਿਆ ਤਾਂ ਸੰਤਰੀ ਨੇ ਮੈਨੂੰ ਰੋਕ ਲਿਆ ਵੀ ਕਿਹਨੇ ਮਿਲਣਾ ਮੈਂ ਕਿਹਾ ਹੋ ਜਿਹੜਾ ਬਾਬਾ ਹਵਾਲਾ ਚ ਉਹਨੂੰ ਰੋਕੀ ਦੇਣਾ ਸੰਤਰੀ ਪੁੱਛਦਾ ਕਹਿੰਦਾ ਕੀ ਕਰਦਾ ਹੁੰਦਾ ਕਹਿੰਦਾ ਮੈਂ ਕਿਹਾ ਡੀ ਐਮ ਕਾਲਜ ਮੋਗੇ ਪੜ੍ਹਦਾ ਹਾਂ ਸਾਡੇ ਕਾਲਜ ਦੀ ਚਰਚ ਸੀ ਜੀ ਜੀ ਮੈਨੂੰ ਜਦ ਮੈਂ ਗਿਆ ਮੂਰੇ ਤਾਇਏ ਦੇ ਕੋਲ ਤਾਇਆ ਤਾਂ ਪ੍ਰਾਲ ਹੋਇਆ ਬੈਠਾ ਪੈਰਾਂ ਭਾਰ ਨੱਕ ਚੋਂ ਪਾਣੀ ਅੱਖਾਂ ਚੋਂ ਪਾਣੀ ਮੂਰੇ ਨੂੰ ਝੋੜਾ ਜਾ ਦਵੇ ਪਿੱਛੇ ਨੂੰ ਹੋ ਜਵੇ ਮੈਂ ਕਿਹਾ ਤਾਜੀ ਸੱਸਰੀ ਹਾਲ ਤਾਇਆ ਮੂਰੇ ਸਤਰੀ ਕਾਲਬੀਨਾ ਬੋਲੇ ਭਾਲ ਸਿੰਘ ਜੀ ਲਾਲ ਸਿੰਘ ਸੁਣਦਾ ਹਾਂ ਹਾਂ ਜੀ ਸੁਣਦਾ ਸੁਣਦਾ ਸੁਣਦਾ ਲਾਲ ਸਿੰਘੋਂ ਵੀ ਕਾਇਮ ਸੀ ਸਾਰੀ ਗੱਲ ਇਹ ਸੀ ਵੀ ਲਾਲ ਸਿੰਘ ਨੂੰ ਕਾਇਮ ਕਰਨਾ ਬਸ ਇਹਦੇ ਚ ਤੇ ਅੱਛਾ ਮੇਰੇ ਮੂੰਹ ਚੋਂ ਮੱਖੀ ਨਾ ਉੜਨੋਂ ਬੰਦ ਹੋ ਜਿਓ ਮੈਨੂੰ ਪੂਰਾ ਲਾਲਣਾ ਤੇ ਖੜੀ ਮੜਾ ਗਿਆ ਭਾਂਸੇ ਉੱਠ ਕੇ ਫੇਰ ਕਿਚਨ ਵੱਲ ਨੂੰ ਚਲੇ ਗਿਆ ਲਾ ਕੇ ਗਲਾਸੀ ਆ ਗਿਆ ਲੈ ਤੋਰਗਾ ਹਾਂ ਲਓ ਜੀ ਮੈਂ ਹਾਲੀ ਪਾਸੇ ਆਲੇ ਦਾਲੇ ਦੇਖ ਕੇ ਹਤਾਏ ਨੂੰ ਪੁੱਛਿਆ ਹਾਲ ਇਹ ਮਹੌਲੀ ਦੇਖ ਕੇ ਉਹਨੂੰ ਕਹਤਾ ਆ ਕਿ ਮੈਂ ਆਹ ਉਹ ਕਹਿੰਦਾ ਮੱਲਾ ਕਾਦੇ ਆ ਮੈਂ ਤਾਂ ਮਰ ਜੇ ਅੱਜ ਨਾ ਇੱਥੇ ਮੈਂ ਤਾਏ ਨੂੰ ਹੌਲੀ ਦੇ ਕੇ ਕੰਨ ਚੋਂ ਖਾਜ ਕਰਦੇ ਕੰਨ ਚੋਂ ਕੱਢ ਕੇ ਬੰਨੇ ਤੁਣ ਲੱਗੇ ਨੂੰ ਤਾਏ ਨੇ ਪੰਜਾਂ ਮੈਨੂੰ ਮੋੜ ਦਿੱਤਾ ਕਹਿੰਦਾ ਸ਼ਿੰਗਾਰਾ ਸਿਓ ਨੂੰ ਦੇ ਜੀ ਇਹ ਸ਼ਿੰਗਾਰਾ ਸਾਬ ਕੌਣ ਸੀਗੇ ਭਾਨ ਸਿੰਘ ਹੁਣ ਬਾਬੂ ਬਣਿਆ ਬੈਠਾ ਸੰਤਰੀ ਸੀ ਹੋਰ ਸ਼ਿੰਗਾਰਾ ਸਿਓ ਮਾਸੜ ਲੱਗਦਾ ਸੀ ਮੇਰਾ ਪੜੇ ਤੇ ਖੜਾ ਸੀ ਤੇ ਮੈਂ ਕਿਹਾ ਮੇਰੇ ਮਨ ਚ ਆਇਆ ਵੀ ਪੁਲਿਸ ਵਾਲਿਆਂ ਨੂੰ ਪੈਸੇ ਦੇਣੇ ਕਮਿਊਨਿਜ਼ਮ ਦਾ ਕੰਮ ਨਹੀਂ ਇਹ ਪੈਸੇ ਆਪਣੀ ਤਨਖਾਹ ਲੈਂਦਾ ਪਰ ਸ਼ਿੰਗਾਰਾ ਸਿਓ ਅਰਬ ਕੁੱਕੜ ਵਾਂਗੂ ਬਾਹਰ ਖੜਾ ਝਾਕਦਾ ਸੀ ਵੀ ਕੋਈ ਗੱਲ ਬਣੀ ਨਾਲੇ ਪਰ ਮੇਰਾ ਮਨ ਨਾ ਮੰਨਿਆ ਭਾਂਸੇ ਦੀ ਮੈਂ ਕਿਹਾ ਵੱਢੀ ਨਹੀਂ ਦੇਣੀ ਗੱਲ ਤੁਰਦੇ ਤੁਰਦੇ ਜਦ ਮੈਂ 5 ਰੁਪਏ ਨਾਦ ਤੇ ਸਾਈਕਲ ਚੱਕਿਆ ਪਿੰਡ ਆ ਗਿਆ ਅਗਲੇ ਦਿਨ ਫੇਰ ਉਹੀ ਗੱਲ ਤਾਂ ਇਹਦਾ ਮੁੰਡਾ ਫੇਰ ਕੋਲ ਆ ਗਿਆ ਕਹਿੰਦਾ ਬਈ ਬਾਪੂ ਨੂੰ ਰੋਟੀ ਦੇ ਨਾਲ ਟਾਂਕਾ ਦੇ ਕੇ ਆ ਟਾ ਮੈਂ ਵੀ ਕੋਰ ਕਿੱਲੇ ਵੰਗੂ ਵੀ ਕੱਲ ਮੇਰਾ ਕੰਮ ਸੂਤ ਬਹਿ ਗਿਆ ਤੇ ਅੱਜ ਦੇਖੀ ਤੇ ਫੇਰ ਜਦ ਮੈਂ ਥਾਣੇ ਪਹੁੰਚਿਆ ਅੰਦਰ ਬਣ ਲੱਗਿਆ ਤਾਂ ਮੈਨੂੰ ਕੁਛ ਨਾ ਕਿਹਾ ਜਦ ਮੈਂ ਹਵਾਲਾਤ ਕੋਲ ਪਹੁੰਚਿਆ ਤਾਂ ਸਿਪਾਹੀ ਨੇ ਬੈਲਟ ਲਾ ਲਈ ਫਿਰ ਧੇ ਧੇ ਕੇ ਕੁੱਟੇ ਦੇ ਡਾਂਗ ਤੇ ਡਾਂਗ ਦੋ ਪਿਛੋਂ ਆ ਕੇ ਖੇ ਰਾਤ ਬਾਬੇ ਨੂੰ ਦੇਖੇ ਕੀ ਗਿਆ ਮੈਂ ਕਿਹਾ ਮੈਂ ਵੀ 당 ਭਾਨ ਸਿੰਘ ਜੀ ਵੀ ਇਹਨਾਂ ਨੂੰ ਕਿਵੇਂ ਪਤਾ ਇਹਨਾਂ ਨੂੰ ਟੈਲੀਗ੍ਰਾਮ ਕਿਹਨੇ ਕਰਤੀ ਦੇਖਿਆ ਨਹੀਂ ਕਿਸਨੇ ਬਾਵਾ ਮੂੰਹ ਨੇ ਰੱਦ ਜਾ ਮੈਂ ਫੜਾਈ ਦੇ ਬਲਟ ਤੇ ਬਲਟ ਜਦ ਕੁੱਟਣੋਂ ਨਾ ਹਟ ਮੈਂ ਵੀ ਹਟ ਗਿਆ ਧਾਰ ਲਿਆ ਵੀ ਹੁਣ ਮੰਨਣਾ ਨਹੀਂ ਕਰ ਲੋ ਜਿਹੜਾ ਕੁਛ ਕਰਨਾ ਕਾਮਰੇ ਦੀ ਪੀ ਗੱਲ ਦਾ ਤਾਂ ਮੈਨੂੰ ਪਤਾ ਹੀ ਸੀ ਪਰ ਹੈਰਾਨੀ ਦੀ ਗੱਲ ਇਹ ਹੋਈ ਵੀ ਇਹਨਾਂ ਨੂੰ ਕਿੱਥੋਂ ਪਤਾ ਲੱਗਿਆ ਜਦ ਮੈਂ ਕੁਟਦੇ ਕੁਟਦੇ ਜਾਂ ਮੇਰੇ ਨਾਲ ਗਲਿਆ ਮੈਂ ਕਿਹਾ ਹੋਇਆ ਕੀ ਉਹ ਕਹਿੰਦੇ ਦੇਖੇ ਕੀ ਗਿਆ ਸਾਰੀ ਰਾਤ ਸਾਡਾ ਸਾਰਾ ਥਾਣਾ ਇਹਦੇ ਸੁੱਕੇ ਪਾ ਲਿਆ ਮੈਂ ਕਿਹਾ ਕੀ ਕੀਤਾ ਕਹਿੰਦਾ ਹੀਰ ਦੀ ਛੱਡੇ ਮਿਰਜਾ ਗਾਵੇ ਮਿਰਜਾ ਛੱਡੇ ਦਹੂਦ ਬਾਦਸ਼ਾਹ ਗਾਵੇ ਦਹੂਦ ਬਾਦਸ਼ਾਹ ਕੱਢੇ ਹੀਰੇ ਗਾਉਣ ਲੱਗ ਜੇ ਕਦੇ ਬੱਕਰੇ ਬਰਾਉਣ ਲੱਗ ਜੇ ਕਦੇ ਇੱਕ ਲੱਤ ਤੇ ਦੱchn ਲੱਗ ਜੇ ਸਾਨੂੰ ਤਾਂ ਯਾਰ ਨੇ ਤੇ ਚੜ ਲਿਆ ਸਾਰੀ ਰਾਤ ਇੱਕ ਸਿਪਾਹੀ ਆ ਕੇ ਕਹਿੰਦਾ ਆ ਭਾਈ ਮੈਨੂੰ ਕੁਛ ਨਹੀਂ ਪਤਾ ਜਿਹੜਾ ਉਹ ਮਰਜੀ ਕਰੀ ਚਲੋ ਨਾਲੇ ਵਿੱਚ ਡਾਂਗ ਬਰੇ ਨਾਲੇ ਮੈਂ ਮੰਨਣਾ ਦਾ ਅਖੀਰ ਮੁਰਸ਼ਿ ਆ ਗਿਆ ਸਿਆਣਾ ਸੀ ਉਹ ਕਹਿੰਦਾ ਬੰਦ ਕਰੋ ਆ ਕੀ ਕਰਦੇ ਹਾਂ ਖਬਰਦਾਰ ਪੜਿਆ ਲਿਖਿਆ ਮੁੰਡਾ ਇਹਨੂੰ ਕੀਤਾ ਇਧਰ ਆ ਕਹਿੰਦਾ ਤੁਰੇ ਜਾਂਦੇ ਮੁਰਸ਼ਿ ਨੇ ਮੇਰੇ ਮੈਨੂੰ ਉਠਾਲ ਲਿਆ ਮੋਢੇ ਤੇ ਹੱਥ ਰੱਖ ਕੇ ਨਾਲ ਆਪਣੀ ਜਿਹੜੀ ਗੁੱਟੀ ਸੀ ਉਹਨੇ ਕੀਤੀ ਹੋਈ ਤੇ ਧਾਗੇ ਦੇ ਵਿੱਚ ਹੱਥ ਫਸਾ ਕੇ ਮਾਰ ਆ ਉਹਨੇ ਧਾਗਾ ਆਪਣਾ ਨਰਮ ਕਰ ਲਿਆ ਜਿਹੜੀ ਗਰਦਨ ਆਪਣੇ ਦਾੜੀ ਬੰਨੀ ਹੋਈ ਸੀ ਦਾੜੀ ਵਰਨੀ ਤੋਂ ਉਹਦਾ ਮੂੰਹ ਸੁੱਜਿਆ ਜਾ ਲੱਗਦਾ ਜਿਵੇਂ ਹੁਣੇ ਡੂੰਬਣਾ ਹਟਿਆ ਹੁੰਦਾ ਤੇ ਅੱਖਾਂ ਆਉਂਦੀਆਂ ਜਮੇ ਬੰਦ ਹੋਣ ਨੂੰ ਪਈਆਂ ਸੀ ਖਾਦੀ ਉਹਦੀ ਵੀ ਸੀ ਮੋਢੇ ਤੇ ਮੇਰੇ ਹੱਥ ਰੱਖ ਕੇ ਬੇਟਾ ਤੂੰ ਕਿਉਂ ਘੁੱਟ ਖਾਈ ਜੰਨਾ ਮੈਂ ਕਿਹਾ ਜੀ ਮੈਂ ਕਾਲਜ ਪੜਦਾ ਐਮ ਡੀ ਕਾਲਜ ਤੇ ਮੈਨੂੰ ਇਸ ਤਾਇਆ ਸਾਡੇ ਘਰਾਂ ਚੋਂ ਲੱਗਦਾ ਇਹ ਫੀਮ ਫੂਮ ਖਾਣ ਦਾ ਸ਼ਕੀਨ ਆ ਇਹਦੇ ਜਵਾਕ ਡਰਦੇ ਸੀ ਮੈਨੂੰ ਰੋਟੀ ਦੇਣ ਨੂੰ ਕਹਤਾ ਨਾਲ ਮੈਂ ਫੀਮ ਸੀ ਮੈਂ ਫੜਾ ਗਿਆ ਰਾਤ ਬਸ ਇੰਨਾ ਹੀ ਕੰਮ ਮੋੜੀ ਸੀ ਉੱਚੀ ਦੇ ਕੇ ਹੱਸੇ ਓ ਤੁਸੀਂ ਐਵੇਂ ਕੁੱਟੀ ਜਾਂਦੇ ਹੋ ਗਊ ਪਾਪ ਕਰਦੇ ਹੋ ਇਹ ਕਹਾਣੀ ਕੋਈ ਨਹੀਂ ਬਜ਼ੁਰਗਾਂ ਨੂੰ ਲਿਆਉਂ ਰੇ ਬਜ਼ੁਰਗਾਂ ਨੂੰ ਲੈ ਆਂਦੇ ਬਜ਼ੁਰਗੋ ਤੁਸੀਂ ਸਾਨੂੰ ਦੱਸ ਦਿੰਦੇ ਵੀ ਆਹ ਤੁਹਾਡੇ ਕੋਲ ਨੁਕਸਾ ਹੈ ਸਾਡੇ ਤਾਂ ਪਹਿਲਾਂ ਮਾਲਖਾਨਾ ਭਰਿਆ ਪਿਆ ਭੁੱਖੀ ਨਾਲ ਸਾਰਾ ਤੁਸੀਂ ਆਹ ਜਵਾਕ ਹੋਈਓ ਕਟਾ ਤਰਿਆ ਓ ਜਨਾਬ ਜੇ ਮੈਨੂੰ ਪਤਾ ਹੁੰਦਾ ਤੁਸੀਂ ਸਾਬ ਲੈਣਾ ਮੈਨੂੰ ਮੈਂ ਤਾਂ ਮੁੰਡੇ ਨੂੰ ਕਹਿੰਦੇ ਤੁਸੀਂ ਮੈਨੂੰ ਹੁਣ ਸਾਬ ਲੋ ਮੈਂ ਤਾਂ ਘਰੇ ਹੀ ਜਾਂਦਾ ਮੈਂ ਘਰੇ ਜਾ ਕੇ ਕੀ ਕਰਨਾ ਨਿਤ ਉੱਥੇ ਔਖੇ ਹੋਈਦਾ ਇਹਰਾ ਗਾਹਾਂ ਕੀ ਹੋਇਆ ਬਾਤ ਉੱਚੀ ਉੱਚੀ ਹੱਸ ਕੇ ਭਾਦਾਂ ਗਾਹਾਂ ਨੇ ਮੈਨੂੰ ਜੇਬ ਤੋਂ ਜਿਹੜੀ ਕੰਨ ਚੋਂ ਗਿਰ ਗਈ ਸਿਰ ਝੁਕਾ ਨੇ ਹੱਥ ਚ ਰੱਖੀ ਦਿੱਤਾ ਇਹਨੇ ਹਲਕੇ ਵਾਂਗੂ ਸੱਟੀ ਮੁਰਸ਼ੀ ਕਹਿੰਦਾ ਬਾਬੇ ਨੂੰ ਪਾਣੀ ਵੀ ਦੇ ਦੋ ਸੁੱਕੀ ਪੱਥਰਾਂ ਦਾ ਆ ਦੇ ਮਰ ਤੇ ਮੈਂ ਤਾਏ ਨੂੰ ਪਾਣੀ ਪਾਇਆ ਤੇ ਮੁਰਸ਼ੀ ਹੁਕਮਾਂ ਮਾਰ ਕੇ ਛੱਡ ਦਿਓ ਬਾਬੇ ਨੂੰ ਨਿਰਦੋਸ਼ ਐ ਇਹੋ ਜਿਹੇ ਬੰਦੇ ਨਹੀਂ ਰੱਖਣੇ ਅਸੀਂ ਸਿਪਾਹੀ ਬਾਬੇ ਨੇ ਹਾਵਾਲਾ ਚੋ ਘੜਤਾ ਵਾਹ ਭਾਈ ਬਾ ਫਿਰਦਾ ਬਈ ਜਾਂਦੇ ਨੂੰ ਮੈਂ ਘਰੇ ਆਇਆ ਤਾਇਆ ਤਾਈ ਕੋਲ ਬੈਠਾ ਚਾਹ ਦਾ ਕੱਪ ਫੜਿਆ ਫੌਜੀ ਹੱਥ ਚ ਕੁੰਡੀ ਉਂਗਲ ਖੋਰਾ ਪਾ ਕੇ ਕੱਪ ਚ ਪਾਇਆ ਹੋਇਆ ਤੇ ਨਾਸਾਂ ਕੋਲ ਲਿਜਾ ਕੇ ਚਾਹ ਨੂੰ ਥੱਲੇ ਮੋਲੇ ਚਾਹ ਪਾਈ ਬੈਠਾ ਤਾਇਆ ਤਾਂ ਕਰੇ ਤੇ ਯਾਰ ਮੈਂ ਗਿਆ ਉਹ ਕਹਿੰਦਾ ਤੇਰੇ ਵਰਗੇ ਪੁੱਤ ਹੋਣਾ ਅੱਜ ਮੈਂ ਜਿਹੜੇ 4 ਜੰਮੇ ਨੇ ਉਹਨਾਂ ਤੋਂ ਤੂੰ ਕੱਲਾ ਹੀ ਹੁੰਦਾ ਮੇਰਾ ਤਾਂ ਜੀ ਕਹਿੰਦਾ ਜ਼ਮੀਨ ਤੇਰੇ ਨਾਂ ਲਵਾਦਾ ਮੱਲਾ ਇਹਨਾਂ ਨੂੰ ਕੱਖ ਨਾ ਨਵਾ ਇਹ ਤਾਂ ਪਿੱਛੇ ਨਹੀਂ ਪੌੜੇ ਤੂੰ ਸੱਤ ਬਗਾਨਾ ਹੋ ਕੇ ਵੀ ਪਿੱਛੇ ਪੌੜਿਆ ਨਾਲੇ ਸੱਪ ਦੀ ਛੀ ਤੋਂ ਨੋੜ ਚੱਕਣ ਮੇਰਾ ਮਾਨ ਕਰਕੇ ਗਿਆ ਤਾਇਆ ਉੱਪਰ ਦੀ ਉੱਪਰ ਗੱਲ ਸਿੱਧਾ ਗਿਆ ਲੈ ਤਾ ਬਣ ਗਿਆ ਬੱਬੂ ਕਾਰਡ ਭਾਜਦੇ ਹੋ ਬਲੇ ਬਈ ਬਲੇ ਇਹੋ ਜਿਹੇ ਮਰਦ ਚਾਹੀਦੇ ਨੇ ਕਿਹੜੇ ਅੱਛਾ ਬਈ ਕਾਮਰੇੜਾ ਤੇਰਾ ਤਾਂ ਤਿਆਰੀ ਸੀ ਫਿਰ ਤਾਂ ਜਮਾਂ ਦਸ਼ਮਰਾ ਦੇ ਵਿੱਚ ਜਾ ਕੇ ਕੰਮ ਕਰਿਆ ਆ। ਅੱਛਾ ਅਗਲੀ ਗੱਲ ਮੈਂ ਗਾਹ ਤੈਨੂੰ ਹੋਰ ਸੁਣਾਉਂ। ਮੈਂ ਤਾਂ ਕਹਿਣ ਲੱਗਿਆ ਸੀ ਇੱਕ ਹੋਰ ਤੂੰ ਲਾਲ ਸਿੰਘ ਦੀ ਡਿਊਟੀ ਫੋਰਮੈਨ ਨੂੰ ਕਹਿ ਕੇ ਕੰਮ ਰੜਾ ਆਪਣੇ ਕੋਲ ਲਵਾ ਕੱਲਾ ਨਹੀਂ ਮੰਦੇ ਦਾ ਜੀ ਕਰਦਾ ਨਾਲੇ ਕੱਲੇ ਇਕੱਠੇ ਕੰਮ ਤੇ ਜਾਇਆ ਕਰੋ ਇਕੱਠੇ ਹੀ ਮੁੜ ਕੇ ਆਇਆ ਕਰ। ਕਰਦਾ ਕੱਲ ਨੂੰ ਗੱਲ ਤੂੰ ਚਿੰਤਾ ਨਾ ਕੱਲ ਗੱਲ ਮੇਰੇ ਤੇ ਛੱਡ। ਅੱਗੇ ਵੀ ਸਾਰੀਆਂ ਗੱਲਾਂ ਤੇਰੇ ਤੇ ਛੱਡੀਆਂ। ਤੇਰੇ ਹੁੰਦੇ ਮੈਨੂੰ ਲਾਲ ਸਿੰਘ ਦਾ ਕੋਈ ਫਿਕਰ ਨਹੀਂ। ਮਾਨ ਸਿੰਘ ਭਾਵਕ ਹੁੰਦਾ ਬੋਲਿਆ ਭਾਨਸ ਲਾਲ ਸਿੰਘ ਦਿਲੋਂ ਦਲੇਰ ਹੋ ਗਿਆ। ਮੈਂ ਹੁਣ ਨੀ ਉਹ ਮੈਂ ਹੁਣ ਨਹੀਂ ਉਧਰ ਦਾ ਮਾਮਾ ਜੀ ਲਾਲ ਸਿੰਘ ਨੇ ਵੀ ਜਾਨੂੰ ਖਮਾਰੀ ਜੀ ਚ ਆ ਗਈ ਮੈਂ ਕਿਹਾ ਜਮਾ ਹੀ ਨਹੀਂ ਉਧਰ ਨੰਦੇ ਭਾਣ ਜੇ ਛਿੜੀਆਂ ਦੇ ਦੁੱਧ ਲੈ ਆ ਦੀਏ ਤੈਨੂੰ ਫੇਕਰ ਕਿਹਦਾ ਕਰਦਾ ਮਾਮਾ ਵੇਖ ਗੰਧਾਲੇ ਵਾਂਗੂ ਗੱਡਿਆ ਖੜਾ ਤੇਰੇ ਸਾਹਮਣੇ ਹਾਪੀ ਦੇ ਕੇ ਭਾਣ ਸਿਓ ਮਾਮਾ ਕਾਰ ਵੱਲ ਨੂੰ ਜਾ ਰਿਹਾ ਸੀ ਤੇ ਉੱਠ ਕੇ ਲਾਲ ਸਿੰਘ ਤੇ ਦੋਨੇ ਹੀ ਕਿਚੰਦੇ ਵਿੱਚ ਗੱਠ ਗੁੱਠੇ ਕੱਟਣ ਦੀ ਕਿਆ ਤਿਆਰੀ ਕਰ ਰਹੀ ਸੀ ਰਾਤ ਦੀ ਰੋਟੀ ਦੀ ਗੱਲ ਹੋ ਰਹੀ ਸੀ ਮਾਮਾ ਜਾਂਦਾ ਜਾਂਦਾ ਹੱਥ ਫੇਰ ਰਿਹਾ ਸੀ ਆਪਣੇ ਸਿਰ ਤੇ ਨਾਲੇ ਤੁਰਿਆ ਜਾਂਦਾ ਬੜੀ ਜੰਗ ਜਿੱਤ ਕੇ ਆਇਆ ਹੁੰਦਾ ਤੁਰੇ ਪਿੱਛੋਂ ਦੇਖ ਕੇ ਮਾਨੰਕ ਕਹਿੰਦਾ ਜਿਹਨੂੰ ਕਾਮਰੇਟ ਕਹਿੰਦਾ ਵਾਕਾਏ ਵੇ ਮਾਮਾ ਤੇਰਾ ਟਿੱਲੇ ਵਾਲਾ ਹੀ ਵਪਾਰਕ ਸੰਦੇਸ਼ ਕਿਸੇ ਵਿਸ਼ੇ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਆਪਣੇ ਕੋਲ 10-12 ਮਿੰਟ ਦਾ ਸਮਾਂ 18442471550 1844247 1550 ਹਲੋ ਪਾਜੇ ਫਿਰ ਜੀ ਸਿੰਘ ਜੀ ਸਤਿਕਾਰ ਸਹਿਬ ਆਪ ਤੇ ਅੱਜ ਸੁਰਤੈਨ ਸਤਿ ਸ੍ਰੀ ਅਕਾਲ ਧੰਨਵਾਦ ਸਭਾਂ ਦੇਣ ਦਾ ਧੰਨਵਾਦ ਕਹਾਣੀ ਸੁਣਾਉਣ ਦਾ ਜੀ ਮੈਂ ਇੱਕ ਦੋ ਧੰਨਵਾਦੀ ਸਤਿ ਸ੍ਰੀ ਅਕਾਲ ਇੱਕ ਦੋ ਬੇਨਤੀਆਂ ਕਰਨੀਆਂ ਸੀ ਆਪ ਜੀ ਦੇ ਸਨਮੁਖ ਤੇ ਔਰ ਕਿ ਜਿਹੜੀਆਂ ਇੱਥੇ ਲੋਕਲ ਪਾਰਕਿੰਗ ਚਾਹੇ ਆਪਣੇ ਧਾਰਮਿਕ ਸਥਾਨਾਂ ਦੀਆਂ ਹੋਣ ਚਾਹੇ ਆਹ ਪਾਇਲ ਬਿਜ਼ਨਸ ਸੈਂਟਰ ਹੋਵੇ ਜਾਂ ਹੋਰ ਜਿਹੜੇ ਆਪਣੇ ਪੰਜਾਬੀ ਕਮਿਊਨਿਟੀ ਦੇ ਅਦਾਰੇ ਆ ਜਾਂ ਜਿਹੜੇ ਐਲਿਆਨ ਸਿਟੀ ਸ਼ਰੀ ਦੇ ਵਿੱਚ ਆ ਜਾਂ ਕਿਤੇ ਵੈਨਕੂਵਰ ਵੀ ਇਹਨਾਂ ਦੇ ਵਿੱਚ ਕੋਈ ਵੀ ਦੇ ਨਾਲ ਕੋਈ ਵੀ ਕੰਮ ਨਹੀਂ ਕਰ ਰਿਹਾ ਮੈਂ ਆਪ ਗੋਰੀਆ ਦੇ ਸੁਪਰਸਟੋਰ ਹੋਇਆ ਜਾਂ ਹੋਰ ਪਲਾਜ਼ੇ ਆਈ ਕੀਆ ਜਾ ਹੋਏ ਵਾਲਮਾਰਟ ਹੋਏ ਇਹਨਾਂ ਦੀਆਂ ਪਾਰਕਾਂ ਬਿਲਕੁਲ ਕਲੀਨ ਕਰਕੇ ਕਸਟਮਰਾਂ ਵਾਸਤੇ ਸਭ ਕੁਝ ਰੈਡੀ ਰੱਖਦੇ ਲੂਣ ਪਾਉਂਦੇ ਆ ਪਰ ਇਹ ਸਾਡੇ ਜਿਹੜੀਆਂ ਭਾਈਚਾਰੇ ਦੀਆਂ ਪਾਰਕਾਂ ਵਾ ਇਹਨਾਂ ਚ ਨਾ ਕੋਈ ਲੂਣ ਪਾਉਂਦਾ ਨਾ ਕੋਈ ਕਲੀਨ ਕਰਦਾ ਵਾ ਔਰ ਤੁਰਨਾ ਮਾਰਨਾ ਆਜ ਹੋਇਆ ਬੱਚਕਾਂ ਨੂੰ ਛਿੱਬੀਆਂ ਬੱਚਿਆਂ ਨੂੰ ਇਹਦੇ ਵੱਲ ਜ਼ਰੂਰ ਇਹ ਕਿ ਆਹ ਚਾਹਤ ਵਾਲਾ ਜਿਹੜੇ ਆਪਣੇ ਵਾਲੇ ਹੈਗੇ ਆ ਜਿਨ੍ਹਾਂ ਦਾ ਬਣਾਏ ਹੋਏ ਆ ਜਾਂ ਰੈਂਟਡ ਕੀਤੇ ਜ਼ਰੂਰ ਥੋੜਾ ਜਿਹਾ ਦੇਖੋ ਬਚਾਲੂ ਕਿਨਾਂ ਤੋਂ ਆਪਣੇ ਇਹ ਐਨਕਮ ਹੁੰਦਾ ਹੈ ਕਿ ਜੇ ਕਸਟਮਰ ਦਾ ਨਾਮ ਆੜਾ ਬੋੜਾ ਖਿਆਲ ਕੀਤਾ ਜਾਵੇ ਫਿਰ ਉਹ ਤੇ ਤਿਲਕੇ ਡੈਪ ਹੋਵੇ ਔਰ ਪ੍ਰੋਬਲਮ ਕ੍ਰੀਏਟ ਪਿੱਛੇ ਜਾਏ ਦੋ ਡਿਮਾਂਡ ਵਾ ਔਰ ਗੁਰੂ ਘਰਾ ਦੇ ਵਾਸਤੇ ਵੀ ਸੰਕਤਾ ਦੀ ਡਿਮਾਂਡ ਵਾ ਇਥੇ ਜ਼ਰੂਰ ਧਿਆਨ ਕਰੇਂਦਾ ਤੇ ਔਰ ਸਿਟੀ ਆਫ ਵੀ ਕਰੇ ਜਿਹੜੀਆਂ ਬਜ਼ੁਰਗਾਂ ਵਾਸਤੇ ਬੈਕ ਐਲੀਆ ਦੇ ਉਹਨਾਂ ਵਾਲਾ ਥੋੜਾ ਬੜਾ ਕਿ ਉਹ ਅੱਜ ਫਿਰ ਸ਼ੁਰੂ ਹੋ ਗਈ ਆ ਅੱਜ ਫਿਰ ਕੀ ਆਜੋ ਜਾਣਾ ਤੇ ਇਹ ਆ ਬੇਨਤੀ ਆ ਜੀ ਜੇ ਇਹ ਪ੍ਰਵਾਨ ਕਰ ਲੈਣ ਤੇ ਆਪ ਜੀ ਦਾ ਮਾਧਿਅਮ ਆਪ ਜੀ ਵੀ ਥੋੜਾ ਬੜਾ ਆਇਰਾਂ ਨੂੰ ਕਹੋ ਕਿ ਥੋੜਾ ਬੜਾ ਧਿਆਨ ਦੇਣ ਉਹ ਲੋਕਾਂ ਦੀ ਜਿਹੜੀ ਜ਼ਿੰਦਗੀ ਮਹਾਲਾ ਸਦਾ ਹੀ ਕਮਾਉਂਦੇ ਜੇ ਥੋੜਾ ਬੜਾ ਲਾ ਦੇਣਗੇ ਕੋਈ ਫਰਕ ਨਹੀਂ ਕਿ ਸਦਾ ਚੂਕਣਾ ਟੁੱਟ ਗਿਆ ਸੂਹ ਕਰ ਦੇਣਾ ਫਿਰ ਤੁਰੇ ਫਿਰੇ ਉਹ ਜਿਹੜੇ ਕੱਢਦੇ ਐਨੀ ਵੀ ਨਾ ਲਾਹੋ ਕਿ ਦੁਕਾਨਾਂ ਵੇਚਤੀਆਂ ਲੀਜ਼ ਕਰਤੀਆਂ ਪੈਸੇ ਕਮਾ ਲੇ ਤੇ ਨੋਟਾਂ ਨਾਲ ਘਰ ਭਰ ਲੇ ਖਰਚੇ ਵੀ ਨੇ ਖੈਰ ਪਹਿਲਾਂ ਇਹ ਨਹੀਂ ਮੈਂ ਕਹਿੰਦਾ ਪਰ ਹੁਣ ਉਹਦੀ ਮੇਨਟੇਨੈਂਸ ਕਿੱਥੋਂ ਕਰਨੀ ਹੈ ਸਟ੍ਰਾਟਾ 200-200 ਡਾਲਰ ਇੱਕ-ਇੱਕ ਦੁਕਾਨ ਦਾ ਲਈ ਜਾਂਦੇ ਹੋ ਤੇ ਸਨੋ ਕੀਨੇ ਸਾਫ਼ ਕਰਨੀ ਹੈ ਤੋਂ ਕਿਸੇ ਬੌਬ ਕੈਟ ਵਾਲੇ ਨੂੰ 100 200 ਹੁਣ 500 ਉਹਨਾਂ ਨੂੰ ਵੀ ਖਰਚਣ ਦਿਓ ਉਹ ਵੀ ਚਾਰ ਪੈਸੇ ਕਮਾਉਣ ਤੇ ਉਹਨੂੰ ਸਨੋ ਨੂੰ ਚਕਾਓ ਤੇ ਜਿਹੜੇ ਵਪਾਰੀ ਨੇ ਉਹਨਾਂ ਨੇ ਤੁਹਾਨੂੰ ਲੀਜ਼ ਦਿੱਤੀ ਹੋਈ ਆ ਉਹਨਾਂ ਨੂੰ ਗਾਹਕ ਚਾਹੀਦੇ ਸਭ ਜੀਤ ਸਿੰਘ ਸੰਧੂ ਜੀ ਭਾਈ ਜੀ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਮੈਂ ਬਦੜੀ ਨਹੀਂ ਗੱਲ ਸੁਣਾਉਂ ਤੁਹਾਨੂੰ ਮੇਰਾ ਦੋਸਤ ਸਿੱਸਟੇ ਵਿਆਹੀ ਹੋਈ ਸੀ ਉੱਥੇ ਤੇ ਸੀਰੀ ਸੀ ਉਹ ਅਮਲੀ ਸੀ ਉਹ ਥਾਣੇ ਤੋਂ ਲੈ ਕੇ ਪੁੱਕੀ ਲਿਆਉਂਦਾ ਸੀਗਾ ਤੇ ਉਹ ਇੱਕ ਦਿਨ ਮੈਂ ਗਿਆ ਉੱਥੇ ਤੇ ਉਹ ਉਲਲੀ ਚ ਪਿਆ ਮੈਂ ਪਤਾ ਜੀ ਕਿਵੇਂ ਪਿਆ ਕਹਿੰਦਾ ਕਹਾ ਗੱਲ ਥਾਣੇ ਜਵਾਬ ਦੇ ਕਹਿੰਦਾ ਹੈ ਨਹੀਂ ਮੈਂ ਕਿਹਾ ਮੈਂ ਨੂੰ ਕਹਾ ਮੈਂ ਚਲਾ ਮੈਂ ਬਰਨਾਲੇ ਨੂੰ ਲੈ ਚੱਲਣਾ ਤੇ ਉੱਥੇ ਦਵਾ ਦਿੰਦੇ ਹਾਂ ਪੁੱਕੀ ਮੈਂ ਨਾ ਦੇਖ ਗੱਲ ਹੈਗੀ ਹਾਂ ਕਹਿੰਦਾ ਤੂੰ ਹੈ ਰਾਜਾ ਵਿਕਰਮਾਜੀਤ ਤੇ ਕਹਾਂ ਇਧਰੋਂ ਲੈ ਚੱਲ ਉਧਰੋਂ ਵੇਨਾ ਤੈਨੂੰ ਮੋੜਿਆਂ ਤੇ ਭਾ ਕੇ ਨਾਲ ਲੈ ਕੇ ਆਉਂ ਤੇ ਨਾਲੇ ਉੱਤੇ ਬੂਰੀ ਧਰ ਕੇ ਲਿਓ ਤੇ ਇੱਕ ਗੱਲ ਹੋਰ ਕਰਨੀ ਸੀ ਬਾਈ ਜੀ ਕਰੋ ਜੀ ਕਰੋ ਕਰੋ ਜਿਹੜੀ ਥੋੜੀ ਪੋਰਟ ਥੋਰਟੀ ਹੈ ਉਹਦੀ ਗੱਲ ਕਰਨੀ ਸੀ ਬਾਈ ਜੀ ਜਿਹੜਾ ਮੁੰਡੇ ਦੀ ਡੈਥ ਹੋ ਗਈ ਉਹਦੇ ਬਾਰੇ ਬਹੁਤ ਅਫਸ਼ੋਸ ਹੈ ਸਾਡੀ ਵੀ ਹੋਈ ਸੀ ਐਲਏ ਅਸੀਂ ਪੋਰਟ ਥੋਰਟੀ ਨਾਲ ਸਾਡਾ ਟੱਕਰ ਲੱਗੀ ਸੀ ਤਿੰਨ ਹਫ਼ਤੇ ਜੀ ਤੇ ਅਸੀਂ ਬਿਲਕੁਲ ਪੋਰਟਾਂ ਬੰਦ ਕਰਤੀਆਂ ਸੀਗੀਆਂ ਸਾਡੇ ਨਾਲ ਸਾਰੇ ਮੈਕਸੀਕਨ ਸਪੈਨਿਸ਼ ਲੋਗ ਅਸੀਂ ਸੀ ਰਸ਼ੀਅਨ ਸੀਗੇ ਅਸੀਂ 30 ਕ ਮੁੰਡੇ ਆਪ ਸੀਗੇ ਅਸੀਂ ਤੇ ਅਸੀਂ ਤਿੰਨ ਹਫ਼ਤੇ ਕੰਮ ਨਹੀਂ ਕਰਨ ਦਿੱਤਾ ਜੀ ਨਾ ਹੀ ਉੱਥੇ ਟਰੱਕ ਨੂੰ ਵੜਨ ਦਿੱਤਾ ਜਹਾਜ਼ ਆ ਕੇ ਖੜਕੇ ਸੀ ਤੇ ਉਹਨਾਂ ਨੂੰ ਕਿਰਾਇਆ ਪੈਣ ਲੱਗ ਗਿਆ ਜੀ ਮੇਅਰ ਐਲ.ਐ ਦਾ ਤੇ ਜਿਹੜਾ ਸੈਨੀਟਰ ਸੀਗਾ ਕੈਲੀਫੋਰਨੀਆ ਦਾ ਉਹ ਆਇਆ ਉਹਨਾਂ ਨੇ ਮਿਲਤਾ ਕਰ ਕਰ ਤੁਸੀਂ ਦੱਸੋ ਕੀ ਚਾਹੀਦਾ ਤੁਹਾਨੂੰ ਰੇਟ ਵਧਾਉਣ ਦਾ ਰੌਲਾ ਸੀ ਤੇ ਉਹ ਕਹਿੰਦੇ ਅਸੀਂ ਕਹਿੰਦੇ ਵੀ ਨਾਲੇ ਸਾਨੂੰ ਤੰਗ ਕਰਦੇ ਆ ਇਹ ਬਹੁਤ ਅੰਦਰ ਗਿਆ ਨੂੰ ਕਿ ਆਪ ਚਲੇ ਜਾਂਦੇ ਆ ਉਹਨਾਂ ਦੀ ਯੂਨੀਅਨ ਹੈ ਇਹ ਆਉਂਦੇ ਨਹੀਂ ਅੱਧਾ ਅੱਧਾ ਘੰਟਾ ਬ੍ਰੇਕ ਤੇ ਗਏ ਵੇ ਉਹਨਾਂ ਨੇ ਇਹੋ ਜਿਹਾ ਖਿੱਚੇ ਨਾ ਬਾਈ ਜੀ ਕਿ ਵੀ ਹੁਣ ਤੱਕ ਮਤਲਬ ਕਿ ਵੀ ਹੁਣ ਉਹਨਾਂ ਨੇ ਇਹੋ ਜਿਹਾ ਸਿਸਟਮ ਬਣਾਤਾ ਉਸੇ ਲਿਆ ਤਾਂ ਅਥੋਰਟੀ ਦੇ ਵਿੱਚ ਕਿ ਵੀ ਪੁੱਛੋ ਹੀ ਨਾ ਬੰਦੇ ਕਹਿੰਦੇ ਕਿ ਵੀ ਜਾਣਿਆ ਠਾ ਦੇਣੇ ਬਾਹਰ ਆ ਜਾਂਦੇ ਆ ਤੁਸੀਂ ਆ ਗਿਆ ਤੁਸੀਂ ਕਹੋਗੇ ਵੀ ਸਾਰੇ ਜਾਣੇ ਇਕੱਠੇ ਹੋਣ ਇਹ ਜਦ ਤੱਕ ਪੂਰੇ ਸਾਰੇ ਬੰਦੇ ਨਹੀਂ ਇਕੱਠੇ ਹੁੰਦੇ ਇਕੱਲੇ ਪੰਜਾਬੀਆਂ ਨਾਲ ਨਹੀਂ ਗੱਲ ਬਾਈ ਸਾਰਿਆਂ ਨੂੰ ਰਲਣਾ ਪੈਣਾ ਥੈਂਕ ਯੂ ਧੰਨਵਾਦ ਜੀ ਇਹ ਤਾਂ ਪ੍ਰੋਬਲਮ ਹੈ ਦੂਜਿਆਂ ਨੇ ਕੀ ਲੈਣਾ ਸਾਡੇ ਤਾਂ ਪੰਜਾਬੀ ਨਹੀਂ ਰਲਦੇ ਉਹ ਕਹਿੰਦੇ ਸਾਨੂੰ ਚਾਰ ਪਾਹ ਵਧੀਆ ਮਿਲਦੇ ਆ ਅਸੀਂ ਸਟ੍ਰਾਈਕ ਕਿਉਂ ਜਾਈਏ ਸਾਡੀ ਕੰਪਨੀ ਵਧੀਆ ਸਾਡਾ ਕੀ ਹੈ ਪਰ ਇਉਂ ਨਹੀਂ ਯਾਰ ਜੇ ਇੱਕ ਦੇ ਘਰ ਚੁੱਲਾ ਮਗਦਾ ਦੂਜੇ ਦੇ ਮਗਦਾ ਨਹੀਂ ਫਿਰ ਭਾਈਚਾਰੇ ਵਾਲੀ ਕਹਾਣੀ ਨਾ ਹੋਏ ਸਰ ਜਗਜੀਤ ਸਿੰਘ ਪੱਤੜ ਪਿੰਡ ਪੱਤੜ ਖੁਰਦ ਜ਼ਿਲ੍ਹਾ ਜਲੰਧਰ 400 ਬੀਨੂ ਸੁਰਗਵਾਸ ਹੋ ਗਏ ਨੇ ਤੋਸ਼ ਤੋਸ਼ ਪੱਤੜ ਦੇ ਉਹ ਪਿਤਾ ਜੀ ਸਨ ਲਖਵੀਰ ਪੱਤਣ ਤੇ ਬੱਲੀ ਪੱਤੜੋਣੀ ਉਹਨਾਂ ਦੇ ਦਾਤਾ ਜੀ ਸਨ 10 ਵਜੇ ਐਤਵਾਰ ਨੂੰ ਉਹਨਾਂ ਦਾ ਸੰਸਕਾਰ ਹੋਣਾ ਹੈ ਫਾਈਬਰ ਰਿਵਰ ਤੇ ਵਿੱਚ ਸਾਡੇ ਵਾਰਾ ਨਿਊ ਬਸਟ ਗੁਰਦੁਆਰਾ ਸਾਹਿਬ ਅੰਤਮਰਦਾਸ ਉਸ ਪੱਤੜ 604 842 2800 ਲਖਵੀਰ ਪੱਤਣ 604 418 3060 ਜੇ ਇਸ ਵਾਲਾ ਪ੍ਰੋਗਰਾਮ ਅਖੀਰ ਚ ਪਰਵਾਲਿਆ ਦیدار ਤੁਹਾਡੇ ਸਰਮੁਖ ਬਰ ਪੈਣੀ ਸ਼ੁਰੂ ਹੋ ਗਈ ਸਨੋ ਖਿਆਲ ਨਾਲ ਰਹਿਣਾ ਜੀ ਰੱਬ ਰਾਖਾ ਚੜ੍ਹਦੀ ਕਲਾ